ਗੱਲ ਡਬਰੂ ਡਬ ਕ ਡੌਰੂ ਦਾ ਵੱਜਦਾ ਹੁੰਦਾ ਡਬ ਡਬ ਕਰਕੇ ਜਿਨ੍ਹਾਂ ਦੇ ਅੰਦਰ ਦੁਚਿੱਤੀ ਹੈ ਨਾ ਉਹਨਾਂ ਨੂੰ ਤਾਂ ਡੌਰੂ ਵੱਜਦਾ ਹੁੰਦਾ ਉਹ ਜੇ ਕਥਾ ਵੀ ਕਰਨਾ ਆਪਾਂ ਵਿਰੋਧੀ ਗੱਲਾਂ ਹੁੰਦੀਆਂ ਨੇ ਉਹ ਚ ਵਿਰੋਧੀ ਜਿਹੜੇ ਆਰਟੀਕਲ ਵੀ ਲਿਖਦੇ ਸੀ ਔਰ ਟੀਕੇ ਵੀ ਲਿਖੇ ਸੀ ਇਹ ਚਾਪਾ ਵਿਰੋਧੀ ਕਰਨਾ ਦੋ ਹੀ ਪਾਸੇ ਵਜਦਾ ਡੌਰੂ ਵਾਇਦਿਕਾਲ ਵੀ ਕਰ ਜਾਂਦੇ ਨੇ ਦਰਗਾਹਾਂ ਦੀ ਗੱਲ ਵੀ ਕਰ ਜਾਂਦੇ ਨੇ ਪੁੰਨ ਪਾਪ ਨੂੰ ਘਟ ਵੀ ਜਾਂਦੇ ਨੇ ਪੁੰਨ ਪਾਪ ਨੂੰ ਵੰਨ ਵੀ ਜਾਂਦੇ ਨੇ ਇਹ ਡੌਰੂ ਜਿਹੜਾ ਗੁਰਮੁਖ ਹੈ ਉਹਦੇ ਉੱਤੇ ਡੌਰੂ ਨਹੀਂ ਦਿੰਦਾ ਇਹ ਬਬਰ ਬਬੰਕੇ ਇਹ ਕੋਈ ਗੱਲ ਕਰਦਾ ਹੈ ਦਾਵੇ ਨਾਲ ਗੱਲ ਗੁਰਮੁਖ ਕਰ ਸਕਦਾ ਸੱਚ ਦਾ ਉਹਨੂੰ ਨੌਲੇਜ ਹੁੰਦੀ ਹੈ ਸੱਚ ਦਾ ਉਹਨੂੰ ਗਿਆਨ ਹੁੰਦਾ ਜਿਹਦੇ ਕੋਲ ਸੱਚ ਦਾ ਗਿਆਨ ਨਹੀਂ ਉਹ ਗੱਲ ਦਾਵੇ ਨਾਲ ਹੀ ਕਰਦਾ ਕਦੇ ਵੀ ਉਹ ਗੱਲ ਦਾਵੇ ਨਾਲ ਸੰਤਰੀ ਵੇਉ ਵੇਉ ਕਰਦੇ ਪਤਾ ਹੈ ਵੀ ਸੱਚ ਦਾ ਪਤਾ ਨਹੀਂ ਉਹਨੂੰ ਆਤਮ ਗਿਆਨੀ ਹੈ ਨਹੀਂ ਉਹ ਆਤਮ ਧਿਆਨੀ ਹੈ ਨਹੀਂ ਸੱਚ ਨਾਲ ਜੁੜੇ ਨਹੀਂ ਹੋਏ ਸੱਚ ਦੀ ਸਮਝੇ ਨਹੀਂ ਉਹਨਾਂ ਦੇ ਤਾਂ ਡੌਰੂ ਵੱਜਦਾ ਇੱਕ ਪਾਸੇ ਤਾਂ ਡੌਰੂ ਵੱਜ ਰਹੇ ਨੇ ਸੰਸਾਰ ਵਿੱਚ ਜੋ ਦੂਜੀਆਂ ਬਥਾਰ ਨੇ ਸਾਰੀਆਂ ਉਹਨਾਂ ਦੇ ਸਾਰੀ ਡੌਰ ਜਾਈ ਸ਼ਿਵ ਜੀ ਦੇ ਆ ਪਰ ਡੌਰੂ ਸਾਰਿਆਂ ਦੇ ਅੰਦਰ ਵੱਜਦਾ ਕਲ ਨਾਰਦ ਦੇ ਡੌਰੂ ਵਾਇਆ ਐਡੀ ਹੈ ਇਹ ਨਾਰਦ ਹੋਣ ਵਾਲਾ ਡੌਰੂ ਹੈ ਕਲਪਣਾ ਵੱਜਦੀ ਹੋਰ ਹੀ ਕਿਸੇ ਤੇ ਇੱਕ ਪਾਸੇ ਤਾਂ ਅੰਦਰ ਆਦਮਨ ਦੀ ਆਵਾਜ਼ ਆ ਇੱਕ ਪਾਸੇ ਸਾਡੀ ਕਲਪਨਾ ਇੱਕ ਪਾਸੇ ਸਾਡੀ ਆਪਣੀ ਮਰਜ਼ੀ ਇੱਕ ਪਾਸੇ ਪਰਮੇਸ਼ਰ ਦੀ ਮਰਜ਼ੀ ਹੈ ਡੌਰੂ ਹੈ ਦੋਹਾਂ ਦਾ ਆਪਾਂ ਵਿਰੋਧੀ ਗੱਲਾਂ ਦੇ ਦੋਏ ਡੌਰੂ ਸੰਸਾਰ ਵਿੱਚ ਡੌਰੂ ਵੱਜਦਾ ਉਧਰ ਬਬਰ ਬਵੰਕੇ ਬਬਰ ਬਵੰਕੇ ਸੱਚ ਆਪਣੀ ਦਾਅਵੇ ਨਾਲ ਗੱਲ ਕਰ ਰਿਹਾ ਸੱਚ ਦੀ ਗੱਲ ਡੰਕੇ ਦੀ ਚੋੜ ਤੇ ਹੋ ਰਹੀ ਹੈ ਉਹ ਕੀ ਹੈ ਉਹ ਦਮਾਮ ਡੌਰੂ ਨਹੀਂ ਹੈ ਦਮਾਮ ਚ ਇਕਬੀਰ ਕਹਿੰਦਾ ਗਾਗਾ ਨਾਲ ਦਮਾਮਾਂ ਵਜਿਆ ਉਹ ਦਮਾਮਾਂ ਵਜਿਆ ਡੌਰੂ ਹਟ ਗਿਆ ਦੁਚਿੱਤੀ ਖਤਮ ਹੋ ਗਈ ਪੂਜਾ ਜਿਹੜੀ ਹੈਗੀ ਹੈ ਬੁੱਧਵਲ ਜਿਹੜਾ ਹੈ ਫਰਕ ਜਿਵੇਂ ਕਿਸੇ ਆਦਮੀ ਦੇ ਡੌਲੇ ਫਰਕ ਦੇ ਵਿੱਚ ਆ ਇਹ ਪੂਜਾ ਫਰਕ ਕੇ ਆ ਜਾਂਦੇ ਬੁੱਧੇ ਚ ਬੁੱਧੀ ਮਤਲਬ ਇਹ ਦਾਵੇ ਨਾਲ ਗੱਲ ਕਰਦੀ ਹੈ ਨਾ ਜਿਵੇਂ ਫਕਰਾ ਮਾਰਦੀ ਹੈ ਦਾਵੇ ਨਾਲ ਗੱਲ ਕਰਦੀ ਹੈ ਪੂਜਾ ਵਰਗ ਕੇ ਬੁੱਧੀ ਪੂਰੀ ਤਾਕਤ ਨਾਲ ਗੱਲ ਕਰਦੀ ਹੈ ਪੂਰੇ ਜੋਰ ਹੈ ਸੈਨ ਵਿਮਰਦਨ ਕਾਲ ਅਸੁਰੰ ਪੂਜਾ ਤੇਜ ਵਰਗ ਤੇਜ ਵਰਗ ਤੇਜ ਵਰਗ ਕਿਉਂਕਿ ਤੇਜ ਜਿਹੜਾ ਹੈਗਾ ਜੋ ਜਿਹੜੀ ਹੈਗੀ ਪੂਰਨ ਜੋਤ ਹੈ ਉਹਦੇ ਵਿੱਚ ਪੂਰੀ ਜੋਤ ਹੈ ਤੇਜ ਪੂਰਾ ਤੇਜ ਵਰਗ ਲੰਕੜੀਆ ਫੱਦਾ ਹੈ ਲੰਕੜੀਆ ਫੱਦਾ ਮੂਜੋ ਜੋ ਹਵਾ ਨਿਕਲਦੀ ਹੈ ਸ਼ਬਦ ਨਿਕਲਦਾ ਉਹ ਐਂ ਜਲਦਾ ਵਾਈਬ੍ਰੇਸ਼ਨ ਕਰਦਾ ਜਿਵੇਂ ਬੁਸੀਆ ਵਰਦਾ ਹਰੁਭਾਨ ਜਾਂਦਾ ਹੁੰਦਾ ਰਾਮਚੰਦਰ ਦੇ ਅਗੇ ਜੇ ਮੈਂ ਹਰੁਭਾਨ ਜਾਂਦਾ ਸੀ ਨਾ ਜੰਗ ਚ ਐ ਚੰਡੇ ਦੇ ਪੂਰੇ ਹੋ ਜਾਂਦਾ ਲੰਕੁੜੀਆਂ ਹਨੂਮਾਨ ਨੂੰ ਵੇਨਣੇ ਲੰਕੁੜੀਆਂ ਫੱਦਾ ஆயுத ਅਯੁਧ ਹਥਿਆਰ ਦੇ ਤੀਰ ਤਲਵਾਰਾਂ ਤੋਂ ਵਿੱਚੇ ਬੰਨ ਕੇ ਭੇਜਦੇ ਤੀਰ ਤਲਵਾਰ ਹਥਿਆਰਾਂ ਸ਼ਬਦ ਵਿੱਚੇ ਭੇਜਦੇ ਲੰਕੜੂਏ ਲੰਕੜਿਆ ਹਨੂਮਾਨ ਵਾਂਗ ਬਣ ਕੇ ਬੇਤੀਆ ਤਲਵਾਰਾਂ ਸ਼ਬਦ ਦੇ ਬਾਣ ਬਾਣੀਓ ਬਾਣ ਗੁਰਬਾਣੀ ਇਹ ਬਲਵਾਰਿਆ ਗਿਆਨ ਖੜ ਗਿਆ ਜੋ ਗਿਆਨ ਵਿੱਚ ਜੋ ਸ਼ਬਦ ਦੇ ਵਿੱਚ ਬਾਣੀ ਆ ਬਾਣ ਜੋ ਸ਼ਬਦ ਹੈ ਗਿਆਨ ਖੜ ਗਿਆ ਗਿਆਨ ਖੜਗਣ ਕੀ ਜੀ ਜਿਹੜਾ ਨਾਮ ਹੈ ਨēja ਨēja ਨਾਮ ਨਿਸ਼ਾਨ ਇਹ ਸਾਰੇ ਹਥਿਆਰ ਵਿੱਚ ਭੇਜਦੇ ਗਰੀਬੀ ਐਡੀ ਨਬਰਤਾ ਵਿੱਚ ਉਹਦੇ ਸ਼ਬਦ ਦੇ ਹੋਗਾ ਨਾ ਸ਼ਬਦ ਆਪਣੇ ਆਪ ਚੱਕਰ ਹੈ ਚੱਕਰ ਘਟ ਕੇ ਜਾਂਦੇ ਨੇ ਉਹ ਜਿਹੜੀ ਧੋਨਾ ਸੰਖ ਹੈ ਜੋ ਨੂੰ ਸੁਣਦੀ ਸੰਖ ਹੈ ਸੰਖ ਚੱਕਰ ਗਦਾ ਤਾਂ ਹੀ ਲਿਖਿਆ ਨਾ ਇਸ ਤਰੀਕੇ ਨਾਲ ਇਹ ਤਾਂ ਜਿਵੇਂ ਦੇ ਤਿਆਲੀਰ ਨਾ ਕੋਈਆ ਫਾਦਾ ਆਯੁਧ ਵੱਧਾ ਸੈਨ ਆਯੁਧ ਹਥਿਆਰ ਨੂੰ ਗੰਦੇ ਆਯੁਧ ਨਾਲ ਬਣੇ ਹੋਏ ਨੇ ਉਹਦੇ ਸਾਰੇ ਸੈਨ ਬਿਮਰਦਨ ਕਾਲ ਅਸਰੋਂ ਸਾਰੀ ਸੈਨਾ ਜਿਹੜੀ ਹੈ ਨਾ ਉਹਨੂੰ ਮਾਰਦਾ ਚਲਾ ਜਾਂਦਾ ਹੈ ਸੈਨ ਬਿਮਰਦਨ ਬਿਮਰਦਨ ਮਾਰਦਾ ਰੂ ਇਹ ਵੀ ਇਹਦੀ ਕਿਹਦੀ ਸਨਾਂਵਾਲ ਦੇ ਓਗਰ ਦੀ ਸਨਾਂਵਾਲ ਦੇ ਬੁਰਾਈਆਂ ਦੀ ਸਾਰਾ ਮਾਰਦਾ ਕਾਲ ਅਸਰੁਗ ਕਾਲ ਅਸਰੁਗ ਅਸਰੁਆ ਅਸਰ ਜਿਹੜੇ ਅਸਰ ਨੇ ਜੋ ਵਿਰੋਧੀ ਸੁਰ ਹੈ ਹੁਕਮ ਤੋਂ ਜੋ ਵਿਰੋਧੀ ਹੈ ਵਿਰੋਧ ਕਰਦੇ ਨੇ ਹੁਕਮ ਤੋਂ ਸਾਰਿਆਂ ਦਾ ਕਾਲ ਹੈ ਕਾਲ ਅਸਰੁਗ ਅਸਰ ਜਿਹਨੇ ਹੈ ਸੁਰ ਵਿਰੋਧੀ ਸੁਰ ਹੈ ਜਿਹੜੀ ਉਹਦਾ ਕਾਲ ਬਣ ਕੇ ਨਿਕਲਿਆ ਸ਼ਬਦ ਨੂੰ ਜਿਹਦਾ ਕਾਲ ਬਣ ਕੇ ਨਿਕਲਦਾ ਇਸੇ ਕਰਕੇ ਜਿੰਨੀਆਂ ਬਤਨ ਬਾਕੀ ਉਹਨਾਂ ਦਾ ਕਾਲ ਹੁੰਦਾ ਨਾ ਜਾਣਾ ਪ੍ਰਗਟ ਹੋਣਾ ਸਾਰੀਆਂ ਮੱਤਾਂ ਦਾ ਕਾਰ ਹੈ ਸਾਰੀਆਂ ਮੱਤਾਂ ਦੇ ਵਿੱਚ ਅਸੂਰੀ ਸ਼ਕਤੀ ਕੰਮ ਕਰਦੀ ਹੈ ਸਾਰੀਆਂ ਰਕਤਾਂ ਵਿੱਚ ਮਨਵਤ ਬੰਨ੍ਹਦੀ ਜਿਹੜੀ ਕਲਪਨਾ ਕੰਮ ਕਰਦੀ ਹੈ ਸਾਰੀਆਂ ਮੱਤਾਂ ਇਹ ਦੁਨਿਆਵੀ ਸੁਖਾਂ ਦਾ ਪ੍ਰਚਾਰ ਕਰਦੀਆਂ ਨੇ ਗੁਰਬਾਣੀ ਬਿਲਕੁਲ ਨਹੀਂ ਕਰਦੀ ਗੁਰਬਾਣੀ ਗੁਰਬਾਣੀ ਕਰਦੀ ਹੈ ਪਰਮ ਸੁਖ ਦੀ ਗੱਲ ਦੁਨਿਆਵੀ ਸੁੱਖ ਦੁੱਖ ਨੂੰ ਬਰਾਬਰ ਮੰਨਣ ਦੀ ਗੱਲ ਕਰਦੀ ਹੈ ਦੂਜੀਆਂ ਬੱਤਾਂ ਜ਼ਰੀ ਸੁਖ ਦੀ ਗੱਲ ਕਰਦੀਆਂ ਇਸੇ ਕਰਕੇ ਰਾਜ ਰੁਪਈਏ ਤੇ ਸਾਰੀਆਂ ਬੱਤਾਂ ਉਹ ਨਾਲ ਦੇ ਰੀਸੇ ਪੈ ਗਏ ਰਾਜ ਰੂ ਸਿੱਖੋ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਾਡੀ ਮਤ ਨਹੀਂ ਪੈ ਸਕਦੀ ਰਾਜ ਰੂ ਸਾਡੀ ਵਿਚਾਰ ਸਾਡੀ ਮਤ ਨਿਆਰੀ ਹੋਰ ਕੀ ਹੈ ਨਿਆਰਾ ਕੀ ਹੈ ਤੁਹਾਡੇ ਕੋਲ ਤੇ ਤੁਸੀਂ ਵੀ ਉਸੇ ਰਾਤੁਰ ਪੇ ਰਾਜ ਵਾਲੇ ਵਿਆਹਾਂ ਕੀ ਰਹਿ ਗਿਆ ਤੁਹਾਡੇ ਕੋਲ ਵਿਆਹ ਤਾਂ ਕੁਝ ਬਣਾ ਰਹੇ ਆ ਫਿਰ ਰਾਤ ਉਹੀ ਸੀ ਪੈਨੇ ਤੁਸੀਂ ਪੈਗੇ ਉਹੀ ਸਾਰੀਆਂ ਕਮੀਆਂ ਤੁਹਾਡੇ ਜਾ ਗਈਆਂ ਇਹ ਰਾਹ ਨਹੀਂ ਸੀ ਸਾਡਾ ਸਾਡਾ ਸੀ ਜਿਹੜਾ ਨਾਮ ਪ੍ਰਗਟ ਹੁੰਦਾ ਨੇ ਜਦ ਸਗਲ ਮਕਾੰਤ ਜਿੱਥੇ ਸਾਰੀਆਂ ਬੱਤਾਂ ਦਾ ਅੰਤ ਹੋ ਜਾਂਦਾ ਹੈ ਉੱਥੇ ਕੇਵਲ ਹਰ ਨਾਮ ਨਾਮ ਬੈਜਦਾ ਉੱਥੇ ਉੱਥੇ ਨਾਮੇ ਪਾਰ ਉਤਾਰ ਦਾ ਜਾ ਕੇ ਬੱਤਾਂ ਖਤਮ ਹੋ ਜਾਂਦੀਆਂ ਨੇ ਇੱਥੇ ਜਾ ਕੇ ਉੱਥੇ ਕਾਹਾਂ ਨਾਮ ਲੈ ਕੇ ਜਾਂਦਾ ਉਹੀ ਛੁੱਟਣ ਕਿਵੇਂ ਦੇ ਕਰਿਆ ਜਾਂਦੀ ਹੈ ਉੱਥੇ ਇਹ ਫਾਂਸਰ ਕੀ ਵਿਧੀਆਂ ਬਣ ਕੇ ਰਹਿ ਜਾਂਦੀਆਂ ਨੇ ਸੰਸਾਰ ਦੀਆਂ ਵੱੱਤਾ ਫਾਂਸ ਕਿਉਂਕਿ ਮਾਇਆ ਦਾ ਮੋਹ ਹੈ ਘਟਾਉਦੀ ਹੈ ਦੀ ਲੋਭ ਛਡਾਉਦੀ ਹੈ ਇਹ ਸਾਰੀਆਂ ਵਿਧੀਆਂ ਫਾਂਸਣ ਕਿਆਂ ਬਣ ਜਾਂਦੀਆਂ ਨੇ ਛੁੱਟਣ ਦੀ ਕੋਈ ਵਿਧੀ ਰਹਿ ਜਾਂਦੀ ਹੈ ਉਹ ਗੁਰਮਤ ਇਸ ਕਰਕੇ ਦੇ ਹਥਿਆਰ ਨੇ ਸਾਰੀਆਂ ਵੱੱਤਾ ਨੂੰ ਇਕੱਟਣ ਵਾਲੇ ਹਥਿਆਰ ਨੇ ਦੇਖੋ ਸਾਰੀਆਂ ਵੱੱਤਾ ਵਾਸਤੇ ਇਹ ਕਾਲ ਰੂਪ ਹੈ ਅਦਮ ਨੇ ਅਦਦਾਵਦੀਆਂ ਮੱਤਾਂ ਆਦੀਆਂ ਕਟੀਆਂ ਜਾਂਦੀਆਂ ਕੋਈ ਤਾਂ ਅਦਮ ਲਾਫਜ਼ ਹੁੰਦਾ ਹਾਂ ਸਾਰੀਆਂ ਮੱਤਾਂ ਵਾਸਤੇ ਆਉਂਦਾ ਅਦਮ ਜਰਨਾਲੀ ਭਈ ਬ੍ਰਾਹਮਣੀ ਬ੍ਰਾਹਮਣੀ ਮੱਤਾਂ ਅਦਤੋ ਜਾਵੀ ਜਰਨਾਲੀ ਹੋ ਗਈ ਤਾਂ ਬਨਦੀ ਹੈ ਵਿਧਾਇਕਾਰ ਹੈ ਇੱਕਾ ਜਮਦਾ ਮਰਜ਼ਾਰੀ ਸਾਰੀ ਗੱਲ ਮੰਨਦੀ ਹੈ ਅਸਟਰਾਯੁਦ ਚਮਕਾਏ ਭੂਖਣ ਦਮਕਾਏ ਅਤੀ ਸਿਤ ਚਮਕਾਏ ਫੁੱਕ ਫਣ ਫੁੱਕ ਫਣ ਅਸਟਰਾਯੁਦ ਚਮਕਾਏ ਅੱਠੇ ਹਥਿਆਰ ਹਥਾਂ ਚ ਕੈਵਨੇ ਅਸਟਰਾਯੁਦ ਗੁਣ ਕੈਵਨੇ ਅੱਠ ਹਥਿਆਰ ਨੇ ਅੱਠ ਗੁਣ ਅੱਠ ਹਥਿਆਰ ਨੇ ਅਟਾਇਦ ਚਮਕਾ ਚਮਕਾ ਅੱਠੇ ਗੁਣ ਚਮਕਦੇ ਨੇ ਹੀਰੇ ਨੇ ਨਾ ਹੀਰੇ ਮੱਤ ਬਚਾਰਾ ਤਾਂ ਚਮਕਲੇ ਨੇ ਭੂਖਣ ਦਮਕੈ ਐ ਸਮਝ ਲੋ ਇਹੀ ਭੂਖੜ ਨੇ ਪਾਏ ਹੋਏ ਔਰ ਪਾਇਆ ਹੋਇਆ ਇਹ ਸਗਲ ਗੁਣਾ ਗਲ ਹਾਰੇ ਪਾਇਆ ਹੋਇਆ ਉਹਦੇ ਕੋਈ ਕੋਈ ਤਾਜ ਨਹੀਂ ਕੋਈ ਕੁਛ ਨਹੀਂ ਉਤਮ ਆਇਆ ਬਾਕੀ ਭੋੜਨਾ ਮਾਇਆ ਮਾਇਆ ਤਾਂ ਹੈ ਨਹੀਂ ਅਤੀ ਸਿੱਤ ਝਮਕਾ ਫੂਕ ਫਣੂ ਅਤੀ ਸਿੱਤ ਝਮਕਾ ਬਹੁਤ ਹੀ ਰੋਸ਼ਨੀ ਹੈ ਚਿੱਟੀ ਸਫੇਦ ਗਿਆਨ ਬਿਲਕੁਲ ਚਾਲਨ ਕਰੀ ਜਾਂਦਾ ਹੈ ਅਤੀ ਸਿੱਤ ਸਿੱਤ ਉਹਦਾ ਸੁਭੇਦ ਅਤੀ ਸਿੱਤ ਝਮਕਾ ਦੁਨੀਆਂ ਦੇ ਵਿੱਚ ਚਾਲਨ ਕਰ ਦਿੰਦਾ ਚੰਦੂਲ ਕਰਦਾ ਸਾਰਿਆਂ ਨੂੰ ਚਾਨਣਾ ਦਿਖਾ ਸਾਰੀਆਂ ਵੱਤਾਂ ਨੂੰ ਰੋਸ਼ਨੀ ਕਰਤੀ ਫੂਕ ਫਣੂ ਇਹ ਅਸਲ ਦੇ ਵਿੱਚ ਫੂਕ ਫਣੂ ਕੀ ਆਨਨ ਕਰਦਾ ਫਿਰ ਫੂਕ ਫਨੂ ਠੀਕ ਸੀ ਦਾਵੇ ਨਾਲ ਗੱਲ ਕਰਦਾ ਜਿਹੜਾ ਉਹ ਵੀ ਕਰਦੇ ਨੇ ਦਾਵੇ ਨਾਲ ਗੱਲ ਪਰ ਗੱਲ ਦੇ ਵਿੱਚ ਜਾਨ ਹੈ ਜੀ ਜਾਨ ਹੈ ਜੀ ਇਹ ਫੂਕ ਫੂਕਾ ਦਰੂਆ ਜਿਹੜੀ ਹਵਾ ਇਹ ਫੂਕੇ ਆ ਗਈ ਹੈ ਬੂਕਾ ਕਹੇ ਬਾਓ ਜੇ ਬੂਧੇ ਗੱਲ ਕਹੀ ਹੈ ਉਹਦੇ 'ਚ ਹੀ ਨਹੀਂ ਸ਼ਕਤੀ ਹੈ ਸਾਰੀ ਅਸਲ ਤੇ ਕਹੀ ਹੋਈ ਹੈ ਕਿ ਫੁੱਕ ਫਣਾ ਇਹ ਕਹੀ ਹੋਈ ਗੱਲੇ ਹੈ ਹੋਰ ਕੁਝ ਨਹੀਂ ਹੈ ਉਤੇ ਕਿਹਾ ਬਿੱਟ ਨੂੰ ਬੋਲੀ ਗਈ ਤੂੰ ਕਿਸੇ ਦੇ ਬੁੱਤੋ ਤੂੰ ਹੀ ਬੱਕਰ ਬਣ ਤੂੰ ਬੱਕਰ ਬਣ ਉਹ ਗੱਲ ਕੁਛ ਨਹੀਂ ਹੋਰ ਹੈ ਕਿ ਕਹੀ ਹੋਈ ਗੱਲ ਹੈ ਤੂੰ ਇੱਕ ਕਹੀ ਹੋਈ ਗੱਲ ਹੈ ਬਾਹੋਂ ਹੈ ਹਵਨ ਫੋਕਨ ਫੋਕ ਫੋਕ ਨੂੰ ਕਹਿੰਦੇ ਨੇ ਭਲਾ ਮੋਝ ਨਿਕਲੀ ਫਰਮ ਹੋ ਜਾਂਦਾ ਹੈ ਇੱਕ ਬੂਝੋ ਨਿਕੜੀ ਗੱਲ ਹੈ ਹੋਰ ਕੁਛ ਨਹੀਂ ਸੰਸਾਰ ਵਿੱਚ ਇਹੀ ਚੀਜ਼ ਜਿਹੜੀ ਕਰਨਾਣਾ ਸੋਲਡੀ ਹੈ ਗੁਰਬਾਣੀ ਕਹੇ ਸੇਵ ਕੇ ਜਨਮਨ ਜੋ ਕਹੀ ਜਾਂਦੀ ਹੈ ਉਹ ਗੱਲ ਹੈ ਤੂੰ ਜੈ ਜੈ ਹੋਸੀ ਮੱਖਾਸੁਰ ਮਰਦਨ रामक वरदन दैत जनंग हे मैं कसो बदल तेरी जायजा हो रही है जायजा कादी हो रही है एक की गल है जायजा किमे हो रही है हर वक्तों दी जायजा हुंदी रहदी है ए कोई नहीं कहदा रब दोरे कदे भी जाय गुरमत प्रकट होवे चाहे ना होवे ए जाय है उदी जायजा होसी मैं कसो मरद कदे नहीं कने खाणु दीदा कोई चाहे गुरमत प्रकट होवे चाहे ना होवे भी जाय ਕਦ ਨਹੀਂ ਕਹਨਾ ਮਰਦਾਇਆ ਜਬ ਦਾ ਜੋ ਜੰਦੀ ਮਰਦੀ ਹੈ ਇਹ ਵੀ ਉਹਦੀ ਹੋ ਜਾਇਆ ਕਦ ਨਹੀਂ ਕੋਈ ਕਹਨਾ ਆਤਮਾ ਮਰ ਜਾਂਦੀ ਹੈ ਆਤਮਾ ਹੈ ਨਹੀਂ ਹੈ ਉਹ ਤਾਂ ਗੱਲ ਕੋਈ ਕਹੇ ਹੈ ਹੋਰੀ ਉਹ ਤਾਂ ਗੱਲ ਐ ਨਹੀਂ ਕੋਈ ਕਹਿੰਦਾ ਜਿਹੜਾ ਕਹਨਾ ਆਤਮਾ ਹੈਗੀ ਉਹ ਇਹ ਨਹੀਂ ਕਹਨਾ ਮਰ ਜਾਂਦੀ ਹੈ ਕਹਨਾ ਆਤਮਾ ਮਰ ਕੀ ਨਾ ਕਹ ਇਹ ਨਹੀਂ ਕਹਿਆ ਜੋ ਇਹਨਾਂ ਗੱਲਾਂ ਕਹਾਈਆਂ ਰੇ ਉਹ ਹਮੇਸ਼ਾ ਲੋਕ ਮੰਨਦੇ ਰਹਿੰਦੇ ਰਹੇ ਜਾਇ ਇਹਦੀ ਵਿਆਖਿਆ ਲੋਕਾਂ ਕੋਲ ਹੋਵੇ ਨਾ ਹੋਵੇ ਉਹ ਲੰਘ ਲਾ। ਬੁੱਧੀ ਘਟ ਜਵੇ। ਪਰ ਜੋ ਇਹਨੇ ਰੱਟਾ ਲਵਾਤਾ ਇੱਕ ਵਾਰ ਇਹਨਾਂ ਗੱਲਾਂ ਦਾ ਉਹ ਰੱਟੇ ਨੂੰ ਲੋਕ ਬੰਦੇ ਰਹਿੰਦੇ ਨੇ। ਇਹੀ ਜਾਇਆ ਇਹੋ ਦੀ। ਇਹ ਰੱਟੇ ਦੇ ਆਧਾਰ ਤੇ ਹੀ ਮਹਿਲ ਉੱਤੇ ਰਹੇ ਨਾ ਰਹੇ। ਦਿਓਆ ਖੜੀਆਂ ਰਹਿੰਦੀਆਂ ਨੇ ਇਹਨਾਂ ਨਿਓਲ ਦੇ ਮਹਿਲ ਖੜਾ ਹੋ ਜਾਂਦਾ ਫੇਰ। ਨਿਓ ਆ ਰਹਿੰਦੀਆਂ ਨੇ। ਨਿਓ ਨਹੀਂ ਕੋਈ ਪੱਟ ਸਕਦਾ। ਜੇ ਦਿਵਲ ਪੜਦਾ ਫਿਰ ਤਾਂ ਨਿਸ਼ਾਨ ਚਲਾ ਗਿਆ ਇਹ ਨਾ ਇਹ ਦਿਵਲ ਦੇ ਉੱਤੇ ਮਹਿਲ ਦਵਾਰਾ ਖੜਾ ਕਰਦਾ ਜਿਹੜਾ ਵੀ ਕਰਦਾ ਹੈ ਇਹ ਹੀ ਦਿਵਾਨੇ ਮੋਲ ਮੰਤਰ ਵਿੱਚ ਮੋਲ ਮੰਤਰ ਜਿੱਕੀ ਨਾ ਇਹ ਨੇ ਵਾਰੇ ਚਾਰ ਖੰਦਾ ਨੇ ਉੱਤੇ ਅੱਠ ਨੇ ਚਾਰੇ ਖੋਜਿਆ ਵੀ ਕੋਈ ਛੱਡਿਆ ਕੋਰ ਨੀ ਕੋਈ ਛੱਡਿਆ ਇਹੀ ਮਹਿਲ ਇਹਦੇ ਤੇ ਮਹਿਲ ਪੁਰਾਣਾ ਹੋ ਜਾਂਦਾ ਜਰਜਰਾ ਹੋ ਜਾਂਦਾ ਹੈ गिर ਜਾਂਦਾ ਦੁਬਾਰਾ ਫਿਰ ਖੜਾ ਹੋ ਜਾਂਦਾ ਨਿਵਾ ਨਹੀਂ ਕੋਈ ਹਲਾ ਸਕਿਆ ਜਿੱਥੇ ਬਸ ਇਹੀ ਤੇਰਾ ਚੱਲਿਆ ਇਸੇ ਤੇ ਮਹਿਲ ਖੜਾ ਹੋਲ ਇਸੇ ਤੇ ਸਾਰਿਆਂ ਦੀਆਂ ਬੱਤਾਂ ਖੜੀਆਂ ਨੇ ਇਸੇ ਮਹਿਲ ਤੇ ਬਾਕੀ ਬੱਤਾਂ ਵੀ ਇਸੇ ਮਹਿਲ ਤੇ ਨੇ ਉਹ ਇਹਨੂੰ ਪ੍ਰੂਫ ਕਰ ਸਕਦੀ ਤੇ ਨਹੀਂ ਕਰ ਸਕਦੀ ਉਹ ਗੱਲ ਅਲੱਗ ਹੈ ਮਹਿਲ ਦਾ ਪੂਰਾ ਸਟਰਕਚਰ ਦੱਸ ਸਕਦੀਆਂ ਨਹੀਂ ਤੇ ਦੱਸ ਸਕਦੀਓ ਉਹ ਲੱਗਣਾ ਜਾਂ ਦਵਾਰਾ ਕੋਈ ਮਹਿਲ ਖੜਾ ਕਰ ਦਿੰਦਾ ਨਾਮ ਨੇ ਉਹਦੇ ਉੱਤੇ ਪੂਰਾ ਐਨ ਉਸਾਰ ਕੇ ਨਕਸ਼ਾ ਦਿਖਾ ਦਿੰਦਾ ਫਿਰ ਇਹਨੂੰ ਕਹਿ ਦੇਣਾ ਪ੍ਰਗਟ ਹੋਗੀ ਆਉਹੀ ਪ੍ਰਗਟ ਤੇ ਆਈ ਆ ਨਾਨਕ ਨੇ ਗੁਰਨਾਨਕ ਲਈ ਗੁਰਨਾਨਕ ਦੇ ਧਿਆਨ ਚ ਆਇਆ ਵੀ ਨਕਸ਼ਾ ਆ ਸੀ ਮਹਿਲ ਦਾ ਉੱਪਰ ਜਾ ਕੇ ਨਿਓਂ ਤਾਂ ਮਿਲ ਗਿਆ ਜਿਹੜਾ ਬਣਾਇਆ ਉਹ ਨਾਨਕ ਨੇ ਬਣਾਇਆ ਉਸ ਵੇਲੇ ਗੁਰਨਾਨਕ ਨੇ ਫਿਰ ਬਣਾਇਆ ਖੋਜਿਆ ਜਾਏ ਬਾਣੀ ਚ ਕਬੀਰ ਦੀ ਬਾਣੀ ਸੀ ਹੋਰ ਸੀ ਕਬੀਰ ਨੇ ਵੈਲੀ ਬਾਣੀ ਚ ਖੋਜਿਆ ਬਿਵਾ ਕਬੀਰ ਨੂੰ ਵੀ ਮਿਲੀਆਂ ਹੋਈਆਂ ਸੀ ਬਾੜਾ ਦੇ ਵਿੱਚੋਂ ਨਵਾਲੀ ਗੱਲ ਨਹੀਂ ਸੀ ਮਿਲਦੀ। ਉਹ ਤਾਂ ਸੀ ਗਿਆ ਉੱਪਰਲਾ ਨਕਸ਼ਾ ਨਹੀਂ ਸੀ ਮਿਲਦਾ ਬਾੜਾ ਚ। ਸੱਚ ਕੋਟ। ਉਹ ਤਾਂ ਹੈ ਗਿਆ ਨੇ। ਸਮਾਦੀ ਨਾਲ ਉੱਪਰ ਸਮਾਦੀ ਵਾਲੇ ਵੀ ਕੀ ਧਿਆਨ ਲਾਉਂਦੇ ਨੇ। ਉੱਪਰਲਾ ਨਕਸ਼ਾ ਦਾ ਧਿਆਨ ਲਾਉਂਦੇ ਨੇ। ਨਕਸ਼ਾ ਕਿਹ ਹੈ ਚਾਹੀਦਾ। ਫਿਰ ਕੀ ਟੀਜ ਹੋਈ ਜੀ ਦਾ ਗੋਲ ਇੱਥੇ। ਕਿਹਾ ਜਾ ਮਹਿਲ ਆ ਉਹਦਾ। ਸੋ ਘਰ ਕਿਹਾ ਸੋ ਦਰ ਕਿਹਾ। ਉਹ ਘਰ ਕਿਹਾ ਉਹ ਘਰ ਕਿਹਾ ਨਿਉਂ ਤਾਂ ਹੈ ਗਿਆ ਘਰ ਕਿਹਾ ਜੇ ਤਬਾਹ ਸਰੂ ਸੰਭਾਲ ਲੈ ਘਰਤਾ ਹੈ ਨਹੀਂ ਨਿਉਂ ਹੈ ਗਿਆ ਨੇ ਬਣੋਲਾ ਦਾ ਘਰ ਹੈ ਲਪੜਾ ਦਾ ਘਰ ਕਿੱਥੇ ਹੈ ਕੋਈ ਕਹਿੰਦਾ ਦਿਮਾਗ ਚ ਹੈ ਦੁਨੀਆ ਕਹਿੰਦੀ ਦਿਮਾਗ ਚ ਨਹੀਂ ਦਿਮਾਗ ਚ ਨਹੀਂ ਹੈ ਹਿਰਦੇ ਚ ਹਿਰਦਾ ਹੀ ਘਰ ਹੈ ਦੇਲੇ ਦਿਲ ਚ ਬਸ ਇਥੇ ਰੋਲੇ ਦਿਲ ਦਾ ਸਾਰਿਆਂ ਨੇ ਦਿਮਾਗ ਦਾ ਨਕਸ਼ਾ ਬਣਾਇਆ ਹੋਇਆ ਇਹਨਾਂ ਨੇ ਦਿਲ ਬਣਾਇਆ ਦਿਮਾਗ ਦਾ ਵਾਜ ਬਣਦਾ ਦਿਲ ਪਹਿਲਾਂ ਬਣਿਆ ਹੋਇਆ ਬਾਕੀ ਸਾਰੀਆਂ ਮੱਤਾਂ ਦਿਮਾਗ ਦੀ ਕਾਰਡ ਨੇ ਇਹ ਦਿਮਾਗ ਦੀ ਕਾਰਡ ਨਹੀਂ ਇਹ ਤਾਂ ਦਿਲ ਦੀ ਕਾਰਡ ਹੈ ਜਿਹਨੇ ਦਿਲ ਬਣਾਇਆ ਜਿਹੜਾ ਦਿਲ ਚਲਾਉਂਦਾ ਉਹੀ ਦੱਸਦਾ ਹੈ ਵਿੱਚ ਬੈਠਾ ਨਾ ਦਿਲ ਨੂੰ ਚਲਾ ਰਿਹਾ ਦਿਮਾਗ ਨੂੰ ਵੀ ਉਹੀ ਚਲਾ ਰਿਹਾ ਦਿਮਾਗ ਉਹ ਤੋਂ ਰਾਸ਼ਨ ਜਾਂਦਾ ਸਪਲਾਈ ਜਾਂਦੇ ਆ ਖੁੰਦੇ ਤਾਂ ਦਿਮਾਗ ਚੱਲਦਾ ਸਪਲਾਈ ਬੰਦ ਹੋ ਜਾ ਦਿਮਾਗ ਆਸਮਾਨੀ ਚੱਲੂਗਾ ਦਿਮਾਗ ਤਾਂ ਬਣਿਆ ਹੀ ਉੱਥੋਂ ਆਇਆ ਦਿਲ ਚੋਂ ਹੀ ਦਿਲ ਨਾਲ ਦਾ ਦਿਮਾਗ ਬਣਿਆ ਦਿਮਾਗ ਦਾ ਰੋਜ਼ ਮਰ ਜਾਂਦਾ ਰੋਜ਼ ਆਉਂ ਜਾਂਦਾ ਇਹਦਾ ਕੀ ਹੈ ਇਹਦਾ ਜਮਣਾ ਬਣਨ ਵਾਲੀ ਚੀਜ਼ ਆ ਦਿਮਾਗ ਦਾ ਇੱਥੇ ਤਾਂ ਮੰਦਾ ਨਵਾਸ ਹੈ ਦਿਮਾਗ ਚ ਇਸ ਕਰਕੇ ਦਿਮਾਗ ਦੀ ਕਾਰਡ ਵਾਲੀਆਂ ਬੱਤਾਂ ਸਾਰੀਆਂ ਮਨ ਮੱਤਾਂ ਇਸ ਨੂੰ ਕਹਿੰਦੇ ਨੇ ਤੇਰਾ ਜਿਹੜਾ ਹੈ ਨਾ ਜੈ ਜੈ ਹੁਸੀ ਬਖਾ ਸੁਨ ਮਰ ਇਹ ਤੇਰੀ ਜੈ ਜੈ ਹੋ ਰਹੀ ਆ ਸਾਰੇ ਹੀ ਰਹੇ ਇਸ ਗੱਲ ਨੂੰ ਇੱਕ ਵਾਰ ਭਗਤਾ ਨੇ ਬਣਾ ਲਿਆ ਫਿਰ ਬਨਦੇ ਰਹਿੰਦੇ ਨੇ ਰਿ ਨਕਸ਼ਾ ਆਵਦਾਰੀ ਲੱਗਦਾ ਉੱਪਰ ਸਟਰਕਚਰ ਟਹਿ ਜਾਂਦਾ ਦਿਮਾਗ ਚ ਬਿਸਰ ਜਾਂਦਾ ਸਾਰ ਬਿਸਰ ਜਾਂਦਾ ਟਹਿ ਜਾਂਦੀ ਹੈ ਬਿਸਰ ਜਾਂਦਾ ਹਰ ਬਿਸਰਤ ਸਦਾ ਖਵਾਰੀ ਜਦ ਸੰਸਾਰ ਨੂੰ ਹਰ ਬਿਸਰ ਜਾਂਦਾ ਹੈ ਫਿਰ ਸੰਸਾਰ ਖوار ਹੁੰਦਾ ਫਿਰ ਖਾਰੀਏ ਸੰਸਾਰ ਚ ਆਪਣੇ ਆਪਣੇ ਰਾਹ ਬਹਿ ਜਾਂਦੇ ਨੇ ਝਗੜੇ ਲੜਾਈਆਂ ਇਹ ਉਹ ਬੇਵਲੀਆਂ ਫੇਰਾ ਫੇਰੀਆਂ ਕਛਾਲ ਕਪਟ ਦਰਮੇਂ ਚ ਵੀ ਆਵੜਦੇ ਨੇ ਦਰਮੇਂ ਚ ਵੀ ਆਵੜਦੇ ਖਾਰੀਏ ਫਿਰ ਕੋਈ ਭਗਤ ਪੈਦਾ ਕਰ ਦਿੰਦਾ ਹਰ ਯੁਗ ਯੁਗ ਪਰ ਕੋਈ ਨਾ ਫੇਰਾ ਦੱਸ ਦਿੰਦਾ ਫੇਰ ਟਕਾਹ ਹੋ ਜਾਂਦਾ ਕੋਚਰ ਵਾਸਤੇ ਪਈ ਤਾਂ ਚੱਲਦਾ ਰਹਿੰਦਾ ਕੋ ਤੇਰੇ ਸਿਰ ਤੇ ਕਿਹੜਾ ਕੈਸਾ ਦਾ ਜੋੜ ਹੈ ਨਾ ਸ਼ੁੱਧ ਕੀਤੇ ਹੋਏ ਕਿਸ ਨੇ ਉਹ ਤੇਰੇ ਬਿਰਤੀਆਂ ਜਿਹੜੀਆਂ ਨੰਨ ਅੰਦਰੋਂ ਪੈਦਾ ਹੋਈਓ ਜਿਹੜੀਆਂ ਬੱਜੀਆਂ ਵੀ ਉਹ ਜਿਹੜੇ ਜੋੜਾ ਕੀਤਾ ਹੋਇਆ ਹੈ ਕੋਈ ਮਾਇਆ ਦੀ ਭੁੱਖਾਲੀ ਗੱਲ ਨਹੀਂ ਨਿਕਲਦੀ ਪਾਵੇ ਪਰ ਪੁਕਾਰ ਦੀ ਭੁੱਖਾਲੀ ਗੱਲ ਵੀ ਉਹਦੀ ਖਤਰਨਾਕ ਹੈ ਜਦ ਮਾਇਆ ਦੀ ਭੁੱਖਾਲੀ ਹੈ ਜਿਹੜੇ ਪਰ ਪੁਕਾਰ ਵੀ ਕਰਦੇ ਲੋਕ ਲੰਗੜ ਚਲਾਉਂਦੇ ਨੇ ਨਾ ਉੱਥੋਂ ਵੀ ਮੰਦਾ ਜੋੜਾ ਬੰਨ ਕੇ ਰੱਖਣਾ ਜਦੋਂ ਲਗ ਮੈਂ ਅਕ ਕਰਤਾ ਆਪਲਾ ਕਰਮ ਜਨਮਾਂ ਵਿੱਚ ਫਿਰਦਾ ਜੇ ਚੰਗੇ ਕਰਮ ਕਰੇ ਨਾ ਚੰਗੇ ਕਰਮ ਕਰ ਲੈਣੇ ਉਹ ਵੀ ਇੱਕੋ ਹੀ ਗੱਲ ਆ ਉਹ ਵੀ ਸੰਸਾਰ 'ਚ ਰੱਖਣਗੇ ਬੱਸ ਜਿਉ ਤੂੰ ਚਲਾਇ ਤੇ ਮੈਂ ਚੱਲਾਂ ਸੋਬੀ ਆਪਣੀ ਜਿਹੜੀ ਬੱਤ ਹੈ ਨਾ ਆਪਣੇ ਬੁੱਧੀ ਖਤਮ ਆਪਣੀ ਵਰਜੀ ਖਤਮ ਉਹਨੂੰ ਬੰਨੇ ਰਹਿਣਾ ਜੋੜੇ ਨੂੰ ਅਕੰਗਵਾ ਨਾ ਬਣਾ ਸੋਚਣੇ ਕੁਛ ਨਹੀਂ ਚੰਗਾ ਵੀ ਨਹੀਂ ਸੋਚਣਾ ਸੋਚਣਾ ਹੀ ਬੰਦ ਕਰਨਾ ਚੰਗੇ ਦੇ ਵਿੱਚੇ ਮਾਲਾ ਬੜਾ ਛੁਪਿਆ ਹੋਇਆ ਦਿਨ ਵਿੱਚੇ ਰਾਤ ਛੁਪੀ ਹੁੰਦੀ ਹੈ ਰਾਤ ਦੇ ਦਿਨ ਛੁਪਿਆ ਹੁੰਦਾ ਜੇ ਦਾਨ ਕਰਿਆਗਾ ਦਾਤਾ ਬਣ ਜਾਏਗਾ ਘਰ ਹੋ ਜਾਊਗਾ ਫਲਾ ਉਹਦਾ ਵੀ ਘਰ ਹੋ ਜੋ ਕੰਮ ਕਰਿਆਂਗਾ ਉਦ ਰੰਕਾਰ ਹੋ ਜੂਗਾ ਮੈਂ ਕਛ ਕਰਤਾ ਨਾਲ ਲੱਗ ਜੂਗਾ ਮੈਂ ਕਛ ਕਰਤਾ ਜੇ ਮੈਂ ਕਛ ਕਰਤੇ ਦੀ ਨਾਲ ਲੱਗੀ ਨਾ ਇਕ ਲੈਨ ਜਨਮ ਤੋਂ ਨਹੀਂ ਛੁੱਟ ਸਕਦਾ ਕਰਮਜੋਲ ਚ ਜਾਣਾ ਪੈ ਮੈਂ ਕਛ ਕਰਤੇ ਵਾਲੇ ਨੂੰ ਇਸ ਕਰਕੇ ਮੈਂ ਕਛ ਕਰਤੇ ਤੋਂ ਜੂੜ ਲਈ ਬੰਨ ਕੇ ਰੱਖਿਆ ਹੋਇਆ ਮੈਂ ਕਛ ਕਰਦਾ ਇਹਦੀ ਹਾਂਜੀ ਰੰਮ ਕਪਰਦਨ ਦਾਇਨ ਤੇ ਜਨਮ ਨੂੰ ਜਿੱਤ ਲਿਆ ਹੋਇਆ ਦੈਂਤ ਗੋਣਾ ਮਨ ਇੱਕ ਵਾਰ ਸੇ ਆਮ ਹੈ ਦੇਵ ਹੈ ਦੇਵ ਇੱਕ ਬੋਤ ਦੈਂਤ ਹੈ ਦੇਵ ਦੇ ਉਲਟਾ ਦੈਂਤ ਜਿਹੜੇ ਗੈਨੂੰ ਜਿੱਤਣ ਵਾਲੀ ਮਤਾਂ ਤੂੰ ਮੰਨਤੇ ਤੋ ਬਰਾ ਨਹੀਂ ਜਿੱਤਿਆ ਜਾ ਸਕਦਾ ਕਿਸੇ ਦਾ ਵੀ ਚੰਡਾ ਸੁਰ ਚੰਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਖਿਤੇ ਵੇਖੋ ਚੰਡਾ ਸੁਰ ਚੰਡਣ ਦਾ ਪਹਿਲਾਂ ਵੀ ਆਇਆ ਸੀ ਚੰਣਿਆ ਉਹ ਇਹਨਰ ਉਤਾਂ ਚੰਡਾ ਸੋਤਾ ਚੰਡੇ ਜਾਊਗਾ ਮੁੰਡ ਦੇ ਕਈ ਇਲਾਜ ਨੇ ਮੁੰਡ ਮੁੰਡਣ ਉਹ ਬੇਮੁੰਡਣ ਆ ਗਿਆ ਇਹਦੇ ਨਾਲ ਵਿਹਣਡਲ ਨਹੀਂ ਆਇਆ ਵਿਹਣਡਲ ਇਹਨੂੰ ਬਾਰ-ਬਾਰ ਗੁੱਡੀ ਜਾਂਦੇ ਜਿਵੇਂ ਫਸਲ ਨੂੰ ਬਾਰ-ਬਾਰ ਗੁੱਟਦੇ ਆ ਫਿਰ ਹੋ ਜਾਂਦਾ ਕਾ ਫੁੱਲ ਫੇ ਗੁੱਟਦੇ ਨੇ ਜਿੰਨਾ ਚਿਰ ਫਸਲ ਉਹਨੂੰ ਦਬ ਨਾ ਲਵੇ ਉਹਨੂੰ ਗੁੱਡੀ ਜਾਂਦਾ ਫਿਰ ਫਸਲ ਐਡੀ ਹੋ ਜਾਂਦੀ ਹੈ ਫਿਰ ਪੈਦਾ ਨਹੀਂ ਹੁੰਦੀ ਫਿਰ ਉਹ ਹੀ ਸਾੜ ਦਿੰਦੀ ਹੈ ਜਿੰਨਾ ਜਰ ਫਸਲ ਕਮਜ਼ੋਰ ਹੈ ਕਾ ਹੂ ਉਸ ਨੂੰ ਬਾਰ ਬਾਰ ਗੁੱਡੀ ਚਾਹੀਦਾ ਇਹ ਬੁੱਢਰ ਹੈ ਨਾ ਨਾਲੇ ਜਿਹੜਾ ਰੱਖੇ ਨੂੰ ਵੱਡਦਾ ਹੀ ਰਹੇ ਜਿਵੇਂ ਉਹ ਬਣਾਏ ਹੁੰਦੇ ਨੇ ਨਾ ਪਾਰਕਾਂ ਦੇ ਵਿੱਚ ਘੋੜੇ ਹਾਥੀ ਬੇਲ ਜੇ ਉਹ ਵਿਵਡਾ ਨਗਰੀ ਹੁੰਦੀ ਸ਼ਕਲੇ ਬਦਲਾ ਦੇਣਾ ਉਹ ਕੱਟਦੇ ਕਿਉਂ ਰਹੇ ਨੇ ਤਾਂ ਉਹਦਾ ਰੂਪ ਠੀਕ ਬਣਿਆ ਰਹੇ ਇਹ ਰੂਪ ਬਗਾੜ ਦਿੰਦੀਆਂ ਨੇ ਛਾਵਾਂ ਜੇ ਮਰਜ਼ੀ ਦੀਆਂ ਲਗਰਾਂ ਜਿੱਧਰੋਂ ਮਰਜੀ ਫੈਲ ਜਾਣ ਉਹਦਾ ਰੂਪੇ ਬਗੜ ਜੂ ਸਾਰਾ ਉਹ ਕੱਟਦੇ ਤਾਂ ਹੀ ਰਹੇ ਉਹ ਸ਼ਕਲ ਬਣੀ ਤਾਂ ਉਹਦੀ ਰਹੂਗੀ ਜੇ ਉਹਨੂੰ ਕੱਟਦੇ ਰਹੀਏ ਮਨੂ ਜੇ ਨਾ ਕੱਟਦੇ ਰਹੀਏ ਤਾਂ ਰੂਪੇ ਬਗਾੜ ਦੂ ਸਾਰਾ ਕੋਈ ਤਾਂ ਹੋਰੇ ਕੁਝ ਬਣ ਜਾਊਗਾ ਇਵੇਂ ਮੁੰਡਰ ਘਾਇਨੇ ਨੇ ਪਾਰਖੇ ਚ ਮਾਲ ਨਹੀਂ ਘਟਦਾ ਜਿਹੜੀ ਵੀ ਲਗਰ ਇੰਦਰੋਂ ਜਿਆਦੀ ਦਿੱਤੀ ਜਿੱਥੋਂ ਹੀ ਘਟਦਾ ਤਾਂ ਆਵੇਂ ਮੁੰਡਰ ਕਰਦੇ ਰਹਿਣਾ ਇਹ ਮੁੰਡਾ ਮੁੰਡਾ ਆ ਅੱਛਾ ਪੈਦਾ ਹੁੰਦੀ ਆ ਨਾ ਜਿਹੜੀ ਉੱਥੋਂ ਹੀ ਘਟਦਾ ਫਿਰ ਖੰਡ ਅਖੰਡਨ ਖੂਨ ਖਤੈ ਖੰਡਾ ਖੰਡਨ ਜਿਹੜਾ ਖੰਡ ਸੀ ਨਾ ਟੁਕੜਾ ਸੀ ਉਹਨੂੰ ਅਖੰਡ ਹੋੜ ਬਣਾਤਾ ਹੋਰ ਐਸ ਤਰੀਕਾ ਨਾਲ ਜੋੜਦਾ ਹੋਲੀ ਟੁੱਟ ਸਕਦਾ ਪੰਸੀ ਨਾ ਬੜਾ ਖੰਡੇ ਸੀ ਇਹ ਨਾ ਕੋਕਬੀਰ ਤੋਂ ਰਾਮ ਗਿਆਨ ਉਹ ਐਸ ਤਰੀਕੇ ਨਾਲ ਕਰਤਾ ਹੁਣ ਇਹਨੂੰ ਤੋੜ ਨਹੀਂ ਸਕਦਾ ਕੋਈ ਐਸਾ ਝੜ ਗਿਆ ਤੋੜੀ ਨਾ ਟੁੱਟੇ ਹੋਗੀ ਹੁਣ ਇਹ ਨਾ ਝੁੱਟੇ ਮੈਤੇ ਤੇ ਛੜਦੀ ਛੁਟਦੀ ਨਹੀਂ ਹੈ ਮੈਂ ਤਾਂ ਨਹੀਂ ਛੱਡ ਸਕਦਾ ਕੋਈ ਤੋੜ ਤੋੜ ਵੀ ਨਹੀਂ ਸਕਦਾ ਤੋੜੀ ਨਾ ਟੁੱਟੇ ਐਸੀ ਬਾਦੋ ਖਿੰਚ ਤਣੀ ਖੰਡ ਅਖੰਡਨ ਖੋਲ ਖੰਡ ਅਖੰਡਨ ਖੰਡ ਅਖੰਡਨ ਹੋ ਗਿਆ ਹੁਣ ਇਹਨੂੰ ਖੰਡ ਨਹੀਂ ਕੀਤਾ ਜਾ ਸਕਦਾ ਕਾਨੂੰਨ ਖਲਾਕ ਨਹੀਂ ਕੀਤਾ ਜਾ ਸਕਦਾ ਪਾਵੇਂ ਖੂਨ ਖਤੇ ਹੈ ਬਿੰਦ ਦੀ ਵੀ ਵਢੀ ਚਾਹੇ ਅਸਰ ਲਈ ਬਠ ਖੂਨ ਦਾ ਮਤਲਬ ਹੈ ਆ ਜਿਹੜਾ ਸਰੀਰ ਖੂਨ ਚਾਹੇ ਇਹਦਾ ਹੀ ਹਲੇ ਅਸਰ ਵਾਲਿਆ ਹੋਇਆ ਦੇ ਵਿੱਚ ਹੈ ਤਾਂ ਵੀ ਇਹ ਖੋਲ ਇਹ ਨਹੀਂ ਇਹ ਵੀ ਕੋਈ ਨਾ ਕਰਦੇ ਨਾ ਬਾਹਰ ਸਰੀਰ ਦੇ ਖੂਨ ਆਏ ਸਰੀਰ ਦੇ ਆਸਰੇ ਹੀ ਆ ਜੋ ਖੜੀ ਏ ਇਹਦੇ ਵਿੱਚੇ ਬੋਲਦੀ ਆ ਆਸਰਾ ਤਾਂ ਨਹੀਂ ਸਰੀਰ ਦਾ ਇਹਨੂੰ ਹੁੰਦਾ ਕਦੇ ਵੀ ਸਰੀਰ ਸਮੇਂ ਦੇ ਆਸਰੇ ਹੁੰਦਾ ਆਤਮਾ ਕਦੇ ਕਿਸੇ ਦੇ ਆਸਰੇ ਨਹੀਂ ਆਤਮਾ ਦੇ ਆਸਰੇ ਤਾਂ ਸਰੀਰ ਹੈ ਚਾਹੇ ਸਰੀਰ ਨੂੰ ਵੀ ਕਿਉਂਕਿ ਸਰੀਰ ਵਰਤਣਾ ਜੋ ਹੈ ਬੋਲਣਾ ਜੋ ਹੈ ਲੋੜ ਕਰਕੇ ਸਰੀਰ ਦੇ ਵਿੱਚ ਹੈ ਹੋਰ ਸਰੀਰ ਦਾ ਆਸਰਾ ਕੋਈ ਨਹੀਂ ਇਹਨੂੰ ਸਿਰ ਹੀ ਆਸਰਾ ਜਨਨ ਜਰੇ ਵਿੱਚ ਹੈ ਸਰੀਰ ਚੱਲਦਾ ਸਿਰ ਬੋਲਦਾ ਦੇਖਦਾ ਤੁਰਦਾ ਫਿਰਦਾ ਜੋਤ ਨੂੰ ਕਿਸੇ ਦਾ ਆਸਰਾ ਨਹੀਂ ਉਦੋਂ ਕਦੇ ਵੀ ਸ਼ਬਦ ਦਾ ਹੁੰਦਾ ਜੇ ਹੁੰਦਾ ਆਸਰਾ ਫੇਰ ਵੀ ਸ਼ਬਦ ਦਾ ਆਸਰਾ ਦਾਮਣੀ ਦਮੰਕਣ ਤੁਜਾ ਫਰੰਕਣ ਫਣੀ ਫੁਕਾਰਣ ਜੋਧ ਜਿਤੇ ਧਾਮਣੀ ਦਮੰਕਣ ਧਾਮਣੀ ਜਿਹੜੀ ਹੁੰਦੀ ਹੈ ਨਾ ਬਿਜਲੀ ਨੂੰ ਕਹਿੰਦੇ ਨੇ ਬਿਜਲੀ ਜਮਕਦੀ ਹੈ ਐ ਤੇਰੀ ਜਮਕ ਬੰਦੀ ਹੈ ਧਾਮਣੀ ਦਮਕਣ ਬਿਜਲੀ ਜਮਕਦੀ ਆ ਬਦਲਾਂ ਦੇ ਵਿੱਚ ਤੁਜਾ ਫਰੰਕਣ ਜਿਹੜੀ ਤੇਰੀ ਤੁਜਾ ਹੈ ਨਾ ਧਰਮ ਦੀ ਤੁਜਾ ਚੱਡਾ ਐ ਝੂਲਦਾ ਕਦਾਹੀ ਜਿਹੋ ਹੁੰਦਾ ਸੱਚ ਦਾ ਜਿਹੜਾ ਦੱਸਿਆ ਸਾਰੇ ਮੰਨ ਲੈਣੇ ਇੱਕ ਹੈ ਕਿਸੇ ਨੂੰ ਸਭ ਨੂੰ ਚਾ ਲੈਣਾ ਹੈ ਕਿਸੇ ਨੂੰ ਡੇਰਾ ਨਹੀਂ ਇਸ ਗੱਲ ਦਾ ਜਿਵੇਂ ਸਭ ਨੂੰ ਪਤਾ ਵੀ ਇਹ ਇਤੋਂ ਨਹੀਂ ਹੋਏ ਹੈਗਾ ਇਹਨਾਂ ਦੇ ਤੋਂ ਇਹ ਤੋਂ ਜਿਹੜੀ ਧਰਮ ਦੀ ਤੋ ਤੇਰੀ ਇਹ ਫੰਕਨ ਬਜਰੇ ਹੈ ਘੰਟਾ ਜਿਵੇਂ ਉਹਦਾ ਬਜਦਾ ਹੁੰਦਾ ਨਾ ਫੈਰਾਉਂਦਾ ਕਹਿੰਦੇ ਨੇ ਝੰਡਾ ਫੈਰਾ ਰਿਹਾ ਹੈ ਆਵਾਜ਼ ਆ ਰਹੀ ਹੈ ਇਹ ਝੰਡੇ ਦੀ ਆਵਾਜ਼ ਆ ਰਹੀ ਹੈ ਜਦ ਝੰਡੇ ਦੀ ਆਵਾਜ਼ ਹੈ ਹਾਂ ਚਾਹੇ ਉਹ ਫੜੀਆਂ ਚਾਹੇ ਸ਼ਿਵਜੀ ਦੇ ਚੇਲੇ ਨੇ ਸ਼ੇਬੀਬੀ ਹੈ ਚਾਹੇ ਉਹ ਵੀ ਮੰਨਦੇ ਨੇ ਫਣੀ ਫਗਰਨ ਜੋਧ ਜਿੱਤੇ ਜਿੰਨੇ ਵੱਡੇ ਵੱਡੇ ਜੋਧੇ ਨੇ ਸ਼ਬੀਏ ਤੇ ਉਹ ਵੀ ਇਹੀ ਗੱਲ ਮੰਨਦੇ ਨੇ ਇਹਨਾਂ ਗੱਲਾਂ ਨੂੰ ਉਹ ਵੀ ਮੰਨਦੇ ਨੇ ਗਰਮਾਦਿਆਂ ਨੂੰ ਪਰ ਹੋਰ ਨਹੀਂ ਹੈ ਦੀ ਚਾਹਦੇ ਉਹ ਵੀ ਇਹੀ ਨੇ ਪਰ ਰਾਹ ਹੋਰ ਪੈਗੇ ਸਮਝ ਨਹੀਂ ਉਹਨਾਂ ਨੂੰ ਸਰਤਾਲ ਦੁਸ਼ਟ ਪ੍ਰਕਰਖਣ दुष्ट पहर पहर हरखण दुष्ट मथ मत, मखे मथे सरदार वेपर वेपर खड़ जदों तीरां दी बुछाड़ पेंदी है ना सरदार वेपर खण जदों गुरमत दा प्रचार हुंदा है समझो तीरल दी बारिश हुंदी है सर तील नु कहंदे ਸਰਤਾਰ ਬਿਬਰਖਣ بارش ਕਰਨ ਵਾਲੀਆਂ ਤੀਰਾਂ ਦੀ ਦੁਸ਼ਤ ਪ੍ਰਕਰਖਣ ਅਜੇ ਦੁਸ਼ਤ ਨੇ ਨਾ ਪ੍ਰਕਰਖਣ ਕਰ ਦਿੰਦੀ ਇਹਦਾ ਇੱਕ ਆਕਰਖਣ ਹੁੰਦਾ ਆਕਰਸ਼ਨ ਕਹਿੰਦੇ ਨੇ ਇਹ ਵੀ ਉਹਦੇ ਵਿੱਚ ਹੀ ਹੈ 10 10 ਦੀ ਆਉਂਦਾ ਨਾ ਉਹਦੇ ਚ ਜਦ ਉਦਕਰਖ ਕਰਾ ਕਰਤਾਰਾ ਪਰਜਾ ਤਸਤ ਦੇ ਬਾੜ ਜਦ ਆਕਰਖ ਕਬੂ ਤਬ ਦੇ ਦੇ ਤਸੂ ਉਦਕਰ ਕਹਿੰਦਾ ਦੋ ਚੀਜ਼ ਬਾਹਰ ਕੱਢ ਦੇ ਲਈ ਉਲਟੀ ਕਰ ਦੇ ਆ ਕਰ ਕਹਿੰਦਾ ਫੇ ਉਹਨੂੰ ਆਪਣੇ ਨਾਲ ਮਿਲਾ ਦੇ ਇਹ ਦੋਹਾਂ ਚੀਜ਼ਾਂ ਤੋਂ ਤੀਜੀ ਚੀਜ਼ ਇਹ ਚੀਜ਼ ਪ੍ਰਕਰਖਣ ਪ੍ਰਕਰਖਣ ਖਣਾ ਦੇਣ ਜਿਹੜੇ ਚੜ ਕੇ ਆਏ ਨੇ ਨਾ ਦੁਸ਼ਮਣ ਉਹ ਤੀਰਾਂ ਨਾਲ ਖਣਾ ਖਣਾ ਦੇਣਾ ਫੌਜ ਉਹਨਾਂ ਦੀ ਇਦਰੋਂ ਐਸੀ ਤੀਰਾ ਦੇ ਬਿਛਾੜ ਕਰਨੀ ਸਾਰੇ ਭਾਈਜਾਂ ਨੂੰ ਰਾਹ ਨਾ ਬੜੇ ਉਹਨਾਂ ਨੂੰ ਭੁਜਾ ਦੇਣੇ ਖੁਲਾ ਦੇਣੇ ਸਭ ਦੂਰ ਭੁਜਾ ਦੇਣੇ ਪਰ ਘਰ ਖੜ ਦੇਣੇ ਲੋ ਪੋਸਟ ਪ੍ਰਹਰ ਪਰ ਹਰ ਖਣ ਪੋਸਟ ਪ੍ਰਹਰ ਖਣ ਜਿਹੜੇ ਪੋਸਟ ਦੇ ਜਿਹੜੇ ਹੋਏ ਨੇ ਜਿਹੜੇ ਤੇਰੀ ਖਿਲਾਫ ਤਰੀ ਕਰਦੇ ਸਤੋਖੀ ਨੇ ਪਰ ਹਰ ਖਣ ਦੇ ਅੰਦਰ ਹੋਰ ਆਨੰਦ ਪੈਦਾ ਕਰਨ ਵਾਲੀ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਜਦ ਤੇਰੇ ਤੀਰ ਚੱਲਦੇ ਰਹੋ ਤਾਂ ਹੁੰਦਾ ਨਾ ਖੁਸ਼ ਉਹ ਤਾਂ ਉਹਨਾਂ ਨੂੰ ਤਾਂ ਉਹ ਆ ਰਹੇ ਨੇ ਉਹਦੇ ਦੂਏ ਨੇ ਉਹਨਾਂ ਨੂੰ ਪੈਂਦੀਆਂ ਭਾਜੜਾਂ ਉਹਦੇ ਦੂਜੇ ਨੇ ਵਿਰੋਧੀ ਨੇ ਨਾ ਉਹਨਾਂ ਨੂੰ ਭਾਜੜਾ ਪੈਂਦੀਆਂ ਨੇ ਬਹੁਤੇ ਛੱਡ ਜਾਂਦੇ ਨੇ ਉਹਨਾਂ ਨੂੰ ਵੀ ਇਹਨਾਂ ਦਾ ਸਾਥ ਨਹੀਂ ਦੇਣਾ ਇਹ ਤਾਂ ਕੁੱਟ ਜਦੋਂ ਛੇਤਰ ਪੈ ਕੇ ਆਏ ਨੇ ਦੋਈ ਵਾਰ ਤੁਰਦੇ ਹੀ ਨਾਲ ਉਹ ਇੱਕ ਵਾਰ ਛੇਤਰ ਖਾ ਕੇ ਆਏ ਦੋਈ ਵਾਰ ਤੁਰਦੇ ਹੀ ਨਹੀਂ ਉਹ ਕਰਦੇ ਉਹ ਤੈਨੂੰ ਕਹਿੰਦੇ ਸੀ ਤਾਂ ਇਹਵੇਂ ਚਲੇ ਗਏ ਤੇ ਨਾ ਇਹਨਾਂ ਦੀਆਂ ਗੱਲਾਂ ਜਾ ਕੇ ਇਹਦਾ ਬੰਦੇ ਹੀ ਗਲਤ ਨੇ ਉਹ ਪਾਸਾ ਹੀ ਵੱਲਦੇ ਦੂਏ ਪਾਸੇ ਹੋ ਜਾਂਦੇ ਹੁੰਦੇ ਨਹੀਂ ਰਹੇ ਚੱਡੇਦੇ ਚੱਡੇ ਦੀ ਵਾਰ ਦੇ ਵਿੱਚ ਹੁੰਦੇ ਹੀ ਨਹੀਂ ਦੂਏ ਪਾਸੇ ਹੋ ਜਾਂਦੇ ਸੀ ਜਿਉਂ ਪਤਾ ਲੱਗਦਾ ਸੱਚ ਦਾ ਉਹਦੇ ਨਾਲ ਭਲੇਖਾ ਨਾਲ ਰਲੇ ਹੁੰਦੇ ਨੇ ਦੂਏ ਪਾਸੇ ਹੋ ਜਾਂਦੇ ਸਾਥੇ ਛੱਡ ਜਾਂਦੇ ਨੇ ਇਹ ਖੜੇ ਇਕੱਲੇ ਹੀ ਰਹਿ ਜਾਂਦੇ ਨੇ ਜਿਹੜੇ ਲੀਡਰ ਨੇ ਨਾ ਇਹਨੇ ਜਿਹੜਾ ਖੜਾ ਹੁੰਦਾ ਕੋਈ ਇਕੱਲਾ ਹੀ ਐਂ ਦੇਖਦੇ ਰਹੇ ਫਿਰ ਆਹ ਕੋਈ ਨਾਲ ਰਹਿੰਦਾ ਹੀ ਨਹੀਂ ਰੂਕ ਘੋੜ ਚੂੜ ਨਾਲ ਕੌਣ ਰਹੂਗਾ ਚੂੜ ਨਾਲ ਕੋਈ ਨਹੀਂ ਰਹਿੰਦਾ ਦੋਸਤਾਂ ਨਾਲ ਜੇ ਨਾਲ ਚੂੜ ਨਾਲ ਕਾ ਫਿਰ ਦੀ ਕੋ ਜਾਂਦਾ ਨਾਲ ਜਿੰਨਾ ਜਿਹੜਾ ਚੂੜ ਟੱਕਿਆ ਹੋਇਆ ਉਹਨਾਂ ਚਾਹੇ ਕਿੰਨੀ ਨਾਲ ਲੈਦੇ ਜੇ ਚੂੜ ਰੰਗਾ ਹੋਇਆ ਸਾਰੇ ਛੱਡ ਜਾਂਦੇ ਨੇ ਉਹ ਜਿਹੜੇ ਫਿਰ ਦੂਗੇ ਨਾਲ ਜਿਹੜੇ ਚੂੜ ਦੇ ਆਸਰੇ ਖੜੇ ਨੇ ਤਾਂ ਬਰੇ ਬਰੇ ਹੋਈ ਨੇ ਉਹਨਾਂ ਦਾ ਕੀ ਦੁਸ਼ਟ ਮਥੇ ਦੁਸ਼ਟ ਮਥੇ ਦੁਸ਼ਟਾਂ ਦਾ ਇਸ ਤਰੀਕੇ ਨਾਲ ਤੂੰ ਬਠਦੇ ਨਹੀਂ ਦੁਸ਼ਟਾਂ ਨੂੰ ਕਾਣ ਕਰਦੇ ਨਹੀਂ ਦੁਸ਼ਟਾਂ ਦਾ ਇਸ ਤਰੀਕੇ ਨਾਲ ਜੈ ਜੈ ਹੋਸੀ ਮੈਖਾਸੁਰ ਮਰਦਨ ਭੂਮ ਆਕਾਸ਼ ਤਲ ਤੇਰੀ ਇਸ ਗੱਲੋਂ ਵੀ ਜੈ ਰਹੀ ਹੈ ਕਿ ਭੂਮ ਹੈ ਚਾਹੇ ਧਰਤੀ ਹੈ ਚਾਹੇ ਆਕਾਸ਼ ਹੈ ਚਾਹੇ ਤਲ ਉਰਦ ਅਦੇ ਏ ਤਾਲ ਤਾਲ ਬਤਾਲ ਲੋ ਕੇ ਇਹ ਦਾ ਤੂੰ ਇਹਨਾਂ ਦੇ ਆਸਰੇ ਨਹੀਂ ਤੇਰੇ ਆਸਰੇ ਖੜੇ ਨੇ ਉਲਟਾ ਉਰਦ ਦਾ ਉਲਟਾ ਉਰਦ ਅਦੇ ਉਲਟਾ ਤੂੰ ਇਹਨਾਂ ਦਾ ਆਧਾਰ ਹੈਂ ਉਲਟਾ ਤੇਰੇ ਹੁਕਮ ਦੇ ਆਸਰੇ ਇਹ ਖੜੇ ਨੇ ਸਭ ਕੁਝ ਤੂੰ ਇਹਨਾਂ ਦੇ ਆਸਰੇ ਨਹੀਂ ਤੈਨੂੰ ਕਿਸੇ ਦਾ ਆਸਰਾ ਨਹੀਂ ਹੈ ਨਾ ਤੈਨੂੰ ਧਰਤੀ ਦਾ ਆਸਰਾ ਧਰਤੀ ਸੋ ਤੇਰੇ ਆਸਰੇ ਖੜੀ ਏ। ਦਾਦਾ ਨੂੰ ਆਕਾਸ਼ ਅੰਬਰ ਦਾ ਆਸਰਾ। ਕੌਰ ਪੰਡਿਆ ਅੰਬਰ ਖਾਸੂ ਲੱਗਾ। ਉਹ ਤਾਂ ਦੱਸੋ ਇਹ ਅੰਬਰ ਜਿਹੜਾ ਤਣਿਆ ਪਿਆ ਕਪੜਾ ਖਾ ਦੇ ਆਸਰੇ ਏ। ਹੁਕਮ ਦੇ ਆਸਰੇ ਹੋਗੀ। ਹੁਕਮ ਨਾ ਤਣਿਆ ਖੜਾ ਏ। ਧਰਤੀ ਵਿੱਚ ਕਵੇਂ ਖੜੀ ਏ ਆਕਾਸ਼ ਤਾਲ ਦੇ। ਹੁਕਮ ਨਾ ਖੜੀ ਏ। ਕੁੰਮਤੀ ਕਹਾਂ ਹੁਕਮ ਨਾ ਕੁੰਮਤੀ ਏ। ਇਹ ਗੱਲ ਹੈ। ਇਸ ਕਰਕੇ ਵੀ ਤੇਰੀ ਜੈ ਜੈਕਾਰ ਹੈ ਕਿ ਆ है, ਹੈ ਨਾ ਪਤਾਰ ਦੀਦਾ ਆਕਾਸ਼ ਹੈ ਧਰਤੀ ਦੀਦੀ ਹੈ ਇਹ ਤੇਰੇ ਆਸਰੇ ਆ ਤੂੰ ਇਹਦੇ ਆਸਰੇ ਨਹੀਂ ਕਿਸੇ ਦੇ ਵੀ ਹੈ ਤੈਨੂੰ ਕਿਹਦੇ ਆਸਰੇ ਦੀ ਲੋੜ ਇਸ ਕਰਕੇ ਵੀ ਤੇਰੀ ਜੈ ਜੈਕਾਰ ਹੈ ਜਿਹਨੂੰ ਦੀਦੀ ਆ ਜੈ ਜੈਕਾਰ ਉਹ ਕਰਦਾ ਹੈ ਇਸ ਗੱਲ ਦੀ ਤਾਂ ਜਿਹੜੀ ਜਿਹਨੂੰ ਜੋ ਤੇ। ਧਾਮਣੀ ਪ੍ਰਹਾਸਣ ਸੋ ਛਵੀ ਨਿਵਾਸਣ ਸ੍ਰਿਸ਼ਟ ਪ੍ਰਕਾਸ਼ਨ ਗੂੜ ਤੇਰਾ ਹਸਣਾ ਕੀ ਹੈ? ਧਾਮਣੀ ਪ੍ਰਹਾਸਣ ਐ ਸਮਝਦਾ ਤੇਰਾ ਹਸਣਾ ਆਇਆ ਜਿਵੇਂ ਬਿਜਲੀ ਨਾਲ ਵੀ ਕਈ ਜੱਲਾ ਖੈ ਜਾਂਦਾ ਕਿਸੇ ਤੇ। ਹੱਸੇ ਜੇ। ਨਾਲ ਤਾਂ ਮੁਝਾ ਕੋਈ ਗੱਲ ਸੁਣਾਤੀ ਨਾਲੇ ਗੱਲ ਦੇ ਉਹ ਵੀ ਬਿਜਲੀ ਪਾਤੀ। ਕਾਲੇ ਸੇ ਨਾਲ ਗੱਲ ਬੋਲਣ ਵਾਲੀ ਉਹ ਬਿਲੀ ਉਹ ਪੈਦੀ ਹੈ ਨਾ ਫਿਰ ਉਹ ਕਰਦਾ ਮਜ਼ਾਕ ਦੀ ਹੋਇਆ ਨਾ ਗਲਦਾ ਹੱਸੇ ਦੀ ਹੋਇਆ ਨਾ ਪਰ ਪੈਦੀ ਦਾ ਉਦੋਂ ਵੀ ਹਾਸਾ ਮਜ਼ਾਕ ਵੀ ਬਿਜਲੀ ਪਾ ਜਾਂਦਾ ਹ ਮਜ਼ਾਕ ਦੀ ਗੱਲ ਵੀ ਬਿਜਲੀ ਸੱਜ ਜਾਂਦੀ ਆ ਚੱਲਣ ਕਰ ਜਾਂਦੀ ਆ ਨਾ ਬਿਲੀ ਨਾਲ ਉਹ ਕਰ ਜਾਂਦੀ ਆ ਧਾਮਣੀ ਪ੍ਰਹਾਸਨ ਸੋ ਸਭੀ ਨਿਵਾਸਣ ਇਹ ਛਵੀ ਹੈ ਤੇਰੀ ਉਹ ਹਾਸੇ ਵਿੱਚ ਵੀ ਤੇਰੀ ਛਵੀ ਹੁੰਦੀ ਹੈ ਉਹ ਗੱਲ ਜਿਹੜੀ ਦੱਸੀ ਹੈ ਨਾ ਮੌਕੇ ਦੇ ਹਿਸਾਬ ਨਾਲ ਕਿਹੜੇ ਮੌਕੇ ਕਿਹੜੀ ਗੱਲ ਕਹਣੀ ਗੱਲ ਹੈ ਇਹ ਵੀ ਛਵੀ ਹੈ ਕਿਹੜੇ ਮੌਕੇ ਕਿਹੜੀ ਗੱਲ ਕਹੜੀ ਕਿੱਥੇ ਕਿਹੜੀ ਐਗਜ਼ਾਮਪਲ ਦੇਣੀ ਹੈ ਇਹ ਛਵੀ ਨਹੀਂ ਹੈ ਇਹ ਕੀ ਇਹ ਤਾਂ ਛਵੀ ਹੈ ਤੇਰੀ ਔਰ ਕੀ ਉਦੇ ਵਿੱਚ ਤਾਂ ਤੇਰਾ ਤੇਰੀ ਸ਼ਬੀ ਦਾ ਨਵਾਸ ਹੈ ਮੌਕੇ ਤੇ ਕਿਹੜਾ ਤੀਰ ਚਲਾਉਣਾ ਹੈ ਕਿਹੜਾ ਹਥਿਆਰ ਚਲਾਉਣਾ ਹੈ ਇਹ ਤਾਂ ਕਲਾਕਾਰੀ ਹੈ ਸ੍ਰੇਸ਼ਟ ਪ੍ਰਕਾਸ਼ਨ ਗੂੜ ਗਤੇ ਸ੍ਰਿ ਕਭ ਕੀ ਹੈ ਸ੍ਰਿ ਨੂੰ ਗਿਆਨ ਦੇਣਾ ਪ੍ਰਕਾਸ਼ ਕਰਨਾ ਹੋਰ ਕੋਈ ਨਹੀਂ ਕਭ ਪ੍ਰਕਾਸ਼ਨ ਅੰਦਰ ਆ ਜਾਦੇ ਚਾਨਣ ਕਰਨਾ ਹੋਰ ਕੋਈ ਲੜਾਈ ਨਹੀਂ ਕਰਨੀ ਕਿਸੇ ਨਾਲ ਉਹ ਜਿਹੜੇ ਚਾਣ ਦੇ ਵਿਰੋਧੀ ਨੇ ਉਹਨਾਂ ਨੂੰ ਖੋਹਣਾ ਹੀ ਆ। ਉਹਨਾਂ ਨੂੰ ਰੱਗੇ ਕਰਨਾ, ਬਦਨਾਮੇ ਕਰਨਾ ਉਹਨਾਂ ਨੂੰ। ਤੇ ਰਾ ਕਰਨੇ ਜਿਹੜੇ ਜਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਆਪੇ ਛੱਡ ਦਿੰਦੇ ਨੇ ਉਹਨਾਂ ਨੂੰ। ਚੈਨਲ ਕਰਨਾ। ਸ੍ਰਿਸ਼ਟੀ ਪ੍ਰਕਾਸ਼ਨ ਗੂੜ ਗੱਤੇ। ਇਹੀ ਤੇਰੀ ਗੂੜ ਗੱਤੀ ਹੈ। ਐਸੇ ਗੱਲ ਦੀ ਨਹੀਂ ਸਮਝ ਆ ਰਹੀ ਲੋਕਾਂ ਨੂੰ। ਉਹ ਵਿਰੋਧ ਕਰਨਾ ਹੋ ਰਿਹਾ। ਉਹ ਇਹ ਗੱਲੋਂ ਨਾਮ ਦੇ ਵਿਰੋਧ ਕਰਨ ਲੱਗੇ ਨੇ। ਗੁਰੂ ਕਾਲਾ ਬ੍ਰੋਧ ਕਾਲਾ ਲੱਗ ਜਾਂਦੀ ਹੈ ਦੁਨੀਆ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਨਾ ਹੈਗੀ ਮਨੁੱਖੀ ਬੁੱਧੀ ਨੂੰ ਗੂੜ ਗਤੀ ਕਹਿੰਦਾ ਜਿਹੜੀ ਮਨੁੱਖੀ ਬੁੱਧੀ ਤੇ ਸਮਝ ਤੇ ਪਰੇ ਹੋਵੇ ਗੂੜ ਗਤੀ ਹੁੰਦੀ ਹੈ ਗਿਆਨ ਹੁੰਦਾ ਜਦ ਮਨੁੱਖੀ ਬੁੱਧੀ ਤੇ ਪਰੇ ਹੋਵੇ ਉਹ ਬੇਈਤੀ ਸਮਝਦੇ ਨੇ ਅਸੀਂ ਆਹ ਕਹਿੰਦੇ ਇਹਨਾਂ ਨੂੰ ਸਾਡੀ ਗੱਲ ਕੱਠੀ ਬੇਈਤੀ ਹੋ ਗਈ ਸਾਡੀ ਉਹ ਨਹੀਂ ਦੇਖਦੇ ਤੁਹਾਡਾ ਨੁਕਸਾਨ ਕੰਨਾ ਹੋ ਰਿਹਾ ਲੋਕਾਂ ਦਾ ਤੁਹਾਡੀ ਬੇਵਕੂਫੀ ਨਾਲ ਨੁਕਸਾਨ ਕੰਨਾ ਹੋ ਰਿਹਾ ਉਹਨਾਂ ਨੇ ਪਤਾ ਆਪਣੇ ਹੌਬੇ ਵਿਚਾਰੇ ਹੋ ਦੁਨੀਆ ਦਾ ਨੁਕਸਾਨ ਦਾ ਫਿਕਰ ਨਹੀਂ ਹੈ ਉਹ ਮੇਰਾ ਪਿਆਰ ਆਪਣੀ ਨੂੰ ਕਾਰੀਆਂ ਨੂੰ ਫੇਰੋ ਗੱਲ ਮਾੜੀ ਲੱਗਦੀ ਕਾਰੀ ਟਕਰਾ ਜਾਂਦਾ ਨਹੀਂ ਇੱਥੇ ਗੂੜਕਤ ਹੈ ਇਹਦੂ ਹ ਰਕਤਾਸੁਰ ਆਚਣ ਜੁਤ ਪਰਮਾਚਨ ਨਰਦੈਨ ਰਾਚਨ ਨੂੰ ਧਰਮ ਬ੍ਰਤੇ ਰਕਤਾਸੁਰ ਆਚਨ ਰਕਤਾਸੁਰ ਕੀ ਹੈ ਲੋਭ ਲੋਭੀ ਜਿਹੜਾ ਮਹਾ ਲੋਭੀ ਹੈ ਰਕਤਾਸੁਰ ਹੈ ਉਹ ਰक्त ਖੂਨ ਹੈ ਲੋਭ ਰਤ ਹੁੰਦੀ ਹੈ ਔਰ ਚੂਸ ਲੈਂਦੀ ਹੈ ਜੋਖ ਵਾਂਗੂ ਜਿਵੇਂ ਜੋਖ ਚੂਸ ਲੈਂਦੀ ਹੈ ਚੂਸ ਲੈਣਾ ਪੀ ਲੈਣਾ ਤੂੰ ਲੋਭ ਚੂਸ ਲੈਂਦੀ ਹੈ ਜੇ ਰੋ ਚੰਗੀ ਲੱਗ ਜਾਵੇਂ ਜੀ ਤੇ ਹਿਰਦੇ ਚ ਵਸਦਾ ਹੈ ਨਾ ਹਿਰਦੇ ਚ ਵਸਾਲੇ ਤੇਨੂੰ ਸਾਰਾ ਹੀ ਲੋਭ ਰਤ ਚੂਸ ਜਾਂਦੀ ਆਉਂਦਾ ਆਚਣ ਕੱਲ ਪੀ ਜਾਣਾ ਹੁੰਦਾ ਆਚਮਨ ਚੂੜਾ ਲੈ ਲੈਣਾ ਉਹਨੂੰ ਆਚਮਨ ਕਹਿੰਦੇ ਨੇ ਰਕਤਾ ਜੋਰਾ ਜਿਹੜਾ ਮਹਾਂ ਲੋਭੀਆ ਦਾ ਲੋਭ ਸਾਰਾ ਪੀ ਜਾਂਦੀ ਲੋਭ ਮੁਕਤ ਹੋ ਜਾਂਦਾ ਉਹ ਜੁੱਧ ਪਰਮਾਚਨ ਜੁੱਧ ਪਰਮਾਚਨ ਜੁੱਧਿਆਵਾਂ ਕਰਦੀਆਂ ਬੜੇ ਚੋਰ ਕਰਦੀ ਚਿੰਤਾ ਨਹੀਂ ਜੁੱਦੀ ਤੈਨੂੰ ਜੋ ਤਾਂ ਵੇਸ਼ਾ ਚੌਂ ਰਹਿੰਦਾ ਕਿਉਂ ਜਨਮੇ ਜੰਦ ਵਾਸਤੇ ਹੋਇਆ ਜਾ ਦੱਸੋ ਜੰਬੀ ਜੰਦ ਨੂੰ ਉਹ ਜਾਗਿਆ ਹੀ ਤਾਂ ਜਾਗਣਾ ਜੰਬਣਾ ਦਾ ਇਹਦਾ ਜਾਗਣਾ ਜੰਬਣਾ ਹੁੰਦੀ ਉਹ ਐ ਸੁੱਤੀ ਪਈ ਆ ਜਾਗਦੀ ਹੁੰਦੀ ਐ ਹੋਰ ਕੁਛ ਨਹੀਂ ਹੈ ਜੇ ਦੀ ਮਾਰੀ ਹੈ ਜੇ ਸੁੱਤੀ ਪਈ ਹੈ ਜਾਂ ਜਾਗ ਪਈ ਛੱਡੀ ਹੈ ਜਿਹੜੀ ਮਤ ਜਿਹੜੀ ਗਊ ਮਰੀ ਹੋਈ ਐ ਉਹ ਸੁੱਤੀ ਪਈ ਐ ਅਸਲ 'ਚ ਜਾਂ ਜਿਉਂਦੀ ਉਹਦੀ ਉਹ ਹੀ ਛੱਡੀ ਹੁੰਦੀ ਐ ਉਹ ਛੱਡੀ ਹੋ ਜਾਂਦੀ ਐ ਕਿਵੇਂ ਜਿਉਂਦੀ ਹੁੰਦੀ ਐ ਬਸੜਾ ਮੇਲ ਗਊ ਜਵਾਲੀ ਬਸੜਾ ਮੇਲ ਜਾਂ ਗਿਆਨ ਵੇਣ ਚੱਲਦੀ ਹੋ ਜਾਂਦੀ ਐ ਹੋਰ ਵੇਖਣਾ ਕੀ ਬੈਠਣਾ ਫਿਰ ਕੀ ਦਿੰਦੀ ਐ ਫੇਦ ਦਿੰਦੀ ਐ ਮਰਵਾਣੀ ਰਹਿਦੀ ਐ ਗਾਇ ਦੋਈ ਬਛੜਾ ਮੇਲ ਕਹਿੰਦੇ ਗਾਇ ਜੋਲੀ ਬਛੜਾ ਮੇਲ ਕੇ ਕੌਣ ਪੁੱਜੇ ਗੱਲਾਂ ਨੂੰ ਪੁੱਜੇ ਕੋਲ ਉਹਨੂੰ ਪੁੱਛੇ ਵੀ ਮਰੀ ਹੋਈ ਗਾਂ ਪਈ ਹੋਵੇ ਫਿਰ ਉਹ ਦੁੱਧ ਆਉਗੀ ਉੱਠਦੀ ਸਾਰੇ ਉਹ ਮਰੀ ਪਈ ਉੱਠੀ ਵੜ ਕੇ ਵੀ ਭਰ ਲਈ ਨਾਲੇ ਦੂਵੇ ਨਾ ਤਾਂ ਜਿਉਂਦੇ ਨਹੀਂ ਦਿੰਦੇ ਉਹਨਾਂ ਜਰਾ ਜ ਖਲਦੀ ਰਹੇ ਹਜੂਦਾ ਆ ਰਹੇ ਫੇਰ ਤਾਂ ਦਿੰਦੀ ਨਹੀਂ ਉਹਨੇ ਭਟਕੀ ਭਰਤੀ ਗੱਲਾਂ ਕੀ ਸੀ ਆ ਹਰਤ ਕੀ ਲਾ ਲੇ ਇਹ ਵਿਦਵਾਨ ਦੇਖਣਾ ਹੁਣ ਆਪਣੇ ਅੰਦਰ ਚਾੱਕ ਕੇ ਵੀ ਤੁਸੀਂ ਕੀ ਹੋ ਕੀ ਸਮਝਦੇ ਰਹੇ ਉਹਨਾਂ ਗੱਲਾਂ ਨੂੰ ਹੁਣ ਥਈ ਇਹ ਸਮਝ ਕੇ ਨਾ ਸਾਰੀ ਗੱਲ ਨੂੰ ਚੁੱਪ ਕਰਕੇ ਟਿੱਕੇ ਬੈਜੋ ਸੁਣ ਲੋ ਗੱਲ ਕੀ ਆ ਵੇ ਛੱਤਰ ਦੇਖੇ ਲੋਕ ਬੰਦ ਕਰ ਦਿੰਗੇ ਹੋਰ ਜਿਹਨਾਂ ਨੂੰ ਤੁਸੀਂ ਮਗਰ ਲਾਇਆ ਹੋ ਦੇ ਦਿੰਦੇ ਕਿ ਮੂੰਹ ਛੇਤਰ ਫਿਰ ਆਮਨਾ ਚਪ ਕਰਕੇ ਬਹਿ ਜਾਓ ਬੰਦੇ ਬਣ ਜਾਓ ਬੰਦੇ ਤੁਸੀਂ ਦੇਖ ਲਿਆ ਤੁਹਾਡੇ ਕੋਲ ਜੋ ਸੀ ਗੱਲਾਂ ਹੁਣ ਤੇ ਅਸੀਂ ਦੇਖ ਲਿਆ ਜੋ ਤੁਸੀਂ தਤ ਗੁਰਮਤ ਦਿੰਦੇ ਰਹੇ ਹੋ ਨਾ ਉਹ ਦੇਖ ਲਈ ਅਸੀਂ ਪਹਿਲਾਂ ਇਹਨਾਂ ਨੂੰ ਪੁੱਛੇ ਵੀ ਗੁਰਬਤਨਾ தਤ ਲੱਗਦਾ ਹੁੰਦਾ ਲਫ਼ਜ਼ ਇਹਨੂੰ ਇਹ ਨਹੀਂ ਪਤਾ ਵੀ ਗੁਰਬਤਨਾ தਤ ਸ਼ਬਦੇ ਨਹੀਂ ਲੱਗ ਸਕਦਾ ਬਰਬਗਾਨੀ ਨਾ ਫੋੜਨ ਲੱਭਦੀ ਲੱਗ ਸਕਦਾ ਬਰਬਗਾਨੀ ਨਾ ਫੋੜਨ ਲੱਭਦੀ ਲੱਗਦਾ ਹੁੰਦਾ ਤਦ ਨਾਲ ਗੁਰਮਤ ਨਾਲ ਤਦ ਨਹੀਂ ਲੱਗਦਾ ਹੁੰਦਾ ਕਦ ਗਿਆਨ ਨਾਲ ਤਾਂ ਲੱਗਦਾ ਗੁਰਮਤ ਨਾਲ ਇੰਨੀ ਗੱਲ ਦਾ ਨਹੀਂ ਪਤਾ ਉਹ ਜੇ ਕੀ ਬਰਾਹਣ ਹੈ ਨਾ ਮਹਾਮੂਰਖ ਮਹਾਮੂਰਖ ਸਕੇ ਉਹ ਦੱਸਣਗੇ ਵੀ ਗੁਰਮਤ ਕੀ ਹੈ ਗੁਰਮਤ ਚ ਕੀ ਰੁਖਸ ਪੈ ਗਿਆ ਤੁਸੀਂ ਰੋਗ ਸਬਾਧ ਹੋਗੇ ਉਹ ਜੇ ਮੈਂ ਬੁਢੀ ਨੂੰ ਆਵਾਜ਼ ਵੱਲ ਗਈ ਸੀ ਨਾ ਉਹਨੇ ਚੁੱਝ ਵੱੜਦੀ ਸੀ ਪਰ ਫੰਗ ਘਟਦੇ ਸੀ ਇਹ ਤਾਂ ਬਿਮਾਰ ਖੁੱਪ ਘਟਦੀ ਇਹਦੇ ਇਹਨੂੰ ਗਰਮੀ ਲੱਗਦੀ ਹੈ ਇਹਦੀ ਚੁੱਝ ਖਾਂ ਖਾਊਗੇ ਮੈਂ ਚੁੱਝ ਘਟਦੀ ਹੈ ਉਹਨੇ ਵੀ ਆ ਵੀ ਵੜ ਦੋ ਆ ਵੀ ਵੜ ਦੋ ਆ ਵਿੱਚੋਂ ਕੱਢ ਦੋ ਆ ਕੱਢ ਦੋ ਬਸ ਹੋਰ ਹੋਰ ਇਹਨਾਂ ਕੀ ਗੱਲ ਤੁਸੀਂ ਆਪਣਾ ਬੈਠੋ ਆਰਾਮ ਨਾਲ ਟਿਕ ਕੇ ਸਿਰ ਰਹੋ ਨਹੀਂ ਇਸ ਦੇ ਜੋ ਤੁਹਾਡੇ ਇਨਾ ਇਨਾ ਦੇ ਮਤਲਬ ਦੀ ਸਿੱਖੀ ਨਹੀਂ ਸਿੱਖੀ ਦੇ ਚੱਲਣਾ ਤੁਹਾਡੇ ਵਾਸਤੇ ਗੱਲ ਨਹੀਂ ਹੈ ਚੁੱਪੇ ਕਰ ਜੋ ਚੰਗੀ ਗੱਲ ਹੈ ਬੇਇਤੀ ਬਹੁਤੀ ਹੋਊਗੀ ਬੇਇਤੀ ਹੋਊਗੀ ਹਰ ਰੋਜ ਹੋਰ ਕੁਝ ਨਹੀਂ ਹੋਊ ਰੋਜ ਬੇਇਤੀ ਹੋਣੀ ਔਲ ਅੱਗੇ ਵੀ ਹੋਈ ਸੀ ਜਦੋਂ ਗੁਰਮਤ ਪ੍ਰਗਟ ਹੋਦੀਆਂ ਨਾ ਇੰਨੇ ਟਿਕਾਣੇ ਬੇਇਤੀ ਉਸਦੀ ਹੁੰਦੀਆਂ ਰੋਜ ਪਹਿਲਾਂ ਵੀ ਹੁੰਦੀ ਰਹੀ ਹੈ ਹੁਣ ਵੀ ਹੋਊਗੀ ਜੇ ਕੋਰ ਮਾਂ ਦਾ ਰੂਪ ਸਹੀ ਪਰਗੜਾ ਹੁੰਦਾ ਤਾਂ ਕੱਲੀ ਰੋਜ ਹੈ ਵੇਚਦੀ ਹੁੰਦੀ ਇਹਨਾਂ ਦੁਕਾਨਾਂ ਦੇ ਮੂੰਹ ਕાળા ਹੀ ਹੁੰਦੇ ਹਰ ਨਿਆਸਾ ਸਾਡੇ ਕਹਿੰਦਾ ਨਾ ਸੱਜਣਾਂ ਦੇ ਘਰ ਹੁਣ ਸ਼ਾਦੀਆਂ ਹੋ ਜਾਂਣਾਂ ਦੁਕਾਨਾਂ ਦੇ ਮੂੰਹ ਕਾਲੇ ਜਿਹੜੇ ਤਾਂ ਸੱਜਣ ਨੇ ਗੁਰੂ ਦੇ ਪਿਆਰੇ ਉਹਨਾਂ ਦੇ ਘਰ ਖੁਸ਼ੀਆਂ ਹੋਣੀਆਂ ਹੋਣੀਆਂ ਨੇ ਸ਼ਾਦੀਆਂ ਹੋਣੀਆਂ ਨੇ ਦੁਕਾਨਾਂ ਦੇ ਮੂੰਹ ਕਾਲੇ ਹੋਣੇ ਹੋਰ ਕੀ ਹੋਣ ਜਿਹੜੇ ਆਜੇ ਨੰਦਕਨਾਨ ਦੇ ਮੂੰਹ ਕાળા ਹੀ ਹੋਣੇ ਨੇ ਔਰ ਕਤੇ ਹੋਰ ਕੀ ਆਉਣਾ ਸੀ ਜੁਧ ਪਰਮਾਚਨ ਨਿਰਧੈ ਨਰਾਚਨ ਨਿਰਧੈ ਨਰਾਚਨ ਨਿਰਧੈ ਨਿਰਧੈਤਾ ਦਰਦਾਇਤਾ ਦੇ ਨੇੜੇ ਨਹੀਂ ਜਾਂਦੀ ਨੂੰਦੈ ਨਰਾਚਨ ਬਿਲਕੁਲ ਦਿਰਦੈ ਤੋਂ ਉਹਦੇ ਚ ਨਹੀਂ ਰਜਦੀ ਨਾ ਅਲੱਗਾ ਰਾਚਨ ਅਲੱਗਾ ਨਾ ਰਾਚਨ ਹਾਂ ਦਿਰਦੈ ਨਾ ਰਾਚਨ ਰਹਦਾਇਤਾ ਦੇ ਨਾਲ ਨਹੀਂ ਰਜਦੀ ਮਿਸੀ ਬਿਲਕੁਲ ਵੀ ਰਹਦਾਇਤਾ ਨੂੰ ਜੜੇ ਨਹੀਂ ਆਉਣ ਦਦੀ ਦਿਆਲੇ ਕਰ ਜਾਂਦੀ ਕੋਈ ਦੇਣਾ ਹੀ ਦੇਣਾ ਗੱਲਾਂ ਨਿਰਦਾਇਤਾਂ ਦੀਆਂ ਲੱਗਦੀਆਂ ਨੇ ਅਕਤੂਬਰ ਨੇ ਆਲੀ ਕਟਣ ਵਾਲੀ ਉਹ ਇਹ ਨਿਰਦਾਇਤਾ ਨਹੀਂ ਹੈ ਨਿਜੇ ਵਰਛੇ ਨਿਜੇ ਵਰਛੇ ਉਹ ਉਹਦਾ ਨਾਸ ਕਰਦ ਨਹੀਂ ਹੈ ਉਹ ਨਿਰਦਾਇਤਾ ਦੀ ਗੱਲ ਨਹੀਂ ਹੈ ਇਹ ਤਾਂ ਭਲਾ ਕਰਦੀਆਂ ਸਾਰਿਆਂ ਦਾ ਧਰਮ ਅੰਮ੍ਰਿਤ ਕਿਉਂਕਿ ਭਰਤੀ ਧਰਮ ਵਾਲੀ ਹੈ ਧਰਮ ਵਾਲੀ ਬਰਤੀ ਦਿਆ ਦਿਆ ਹੁੰਦੀ ਹੈ ਨਿਰਦਇਤਾ ਦਾ ਕੀ ਹੁ ਭਰਤੀ ਦਾ ਤੇ ਨਹੀਂ ਧਰਮ ਵਾਲੀ ਹੈ ਹਰ ਵਕਤ ਉਥੇ ਨਿਰਦਇਤਾ ਦਾ ਕੀ ਕੋ ਉਹ ਨਿਰਦਇਤਾ ਤਾਂ ਬਸੇ ਲਫਜ਼ ਨੇ ਇਹ ਵਰਤੇ ਹੋਏ ਔਗਲਾਂ ਦੇ ਖਿਲਾਫ ਔਗਲਾਂ ਨੂੰ ਤਾਂ ਹੁਣ ਮਾਰ ਰਹੀ ਹੈ ਨਾ ਇਹ ਔਗਲਾਂ ਦੇ ਖਿਲਾਫ ਵਰਤਿਆ ਹੋਇਆ ਲਫਜ਼ ਸਾਰੇ ਔਗੜ ਤਾਂ ਔਗਲਾਂ ਨਾਲ ਤਾਂ ਫਿਰ ਐਵੇਂ ਹੀ ਹੁੰਦੇ ਕੁਈ ਸਰਕਾਰ ਹੁੰਦੀ ਹੈ ਸਰਕਾਰ ਕੋ ਨਿਰਦੇਹੀ ਹੁੰਦੀ ਹੈ ਪਰ ਉਹ ਡਾਕੂਆਂ ਖਾਤਰ ਜੇ ਦਿਆ ਕਰੇ ਡਾਕੂਆਂ ਦੇ ਵੀ ਅਤਵਾਦੀਆਂ ਦੇ ਵੀ ਫਿਰ में मिलूगा ਸੁੱਕੇਵੇਂ ਮਿਲੂਗਾ ਓਏ ਉਹਨਾਂ ਤੇ ਜਿਹੜੀ ਛੇਤਰਪਰੇਟ ਹੁੰਦੀ ਆ ਜਾਂ ਫਾਸੀ ਦਿੰਦੇ ਰਿਹਾ ਜੋ ਵੀ ਸਜ਼ਾ ਦਿੰਦੇ ਨੇ ਉਹ ਮਜਬੂਰੀ ਆ ਸਰਕਾਰ ਦੀ ਜਿਹੜੀ ਠੀਕ ਹੈ ਮੈਂ ਹਣ ਉਹਦਾ ਲੋ ਸਾਰੇ ਉਹਨੂੰ ਸਮਝਾਉਣ ਵਾਸਤੇ ਦਿੰਦਾ ਘੜੀਏ ਘੜੀਏ ਮਾਰੀਏ ਇਹ ਜਿਹੜੀ ਘਾੜਤ ਘੜੀ ਜਾਂਦੀ ਆ ਉਹਦੇ ਵਿੱਚ ਘੁੱਟ ਪੈਂਦੀ ਹੁੰਦੀ ਐ ਉਹਨਾਂ ਨੂੰ ਵੱਧਾ ਬਣਾਉਂਦੀ ਐ ਪੁਲਿਸ ਪੁਲਿਸ ਨਿਰਦਈ ਨਹੀਂ ਹੁੰਦੀ ਚਲੋ ਘੁੱਟ ਮਾਰਦੇ ਮਾਰਦੇ ਕੋਈ ਪਰਫੀ ਜਾਂਦਾ ਉਹ ਗੱਲ ਅਲੱਗ ਐ ਕੋਈ ਵੱਖਰੀ ਗੱਲ ਐ ਕਿਸੇ ਨੂੰ ਗੁੱਸਾ ਆ ਗਿਆ ਕਿਤੇ ਕੋਈ ਚੀਜ਼ ਬੱਚੇ ਸਕੂਲਾਂ ਵਿੱਚ ਬਾਸਾਂ ਦੇ ਮਰ ਜਾਂਦੇ ਨੇ ਬੱਚੇ ਆਪਣੇ ਬੱਚੇ ਮਰ ਜਾਂਦੇ ਨੇ ਆਦਮੀ ਆਖਰ ਆਦਮੀ ਆਦਮੀ ਜੇਨੂੰ ਗੁੱਸੇ ਜਾਇਆ ਜਾਦਾ ਗਰੋਹ ਦਾ ਆ ਗਿਆ ਕਿ ਦੇਖੋ ਸੁੱਤਰ ਤਾਂ ਸੱਟ ਲੱਗੀ ਪਰ ਕਿ ਵਾਤੀ ਦੇ ਨਾਮ ਪਰ ਦੀ ਪਸਟਾਲ ਵਿੱਚ ਜੋ ਹੋਣਾ ਸੀ ਹੋ ਗਿਆ ਦੇ ਹਰਦਾਇਤਾ ਨਾ ਮਾਰਦਾ ਕੋਈ ਇਸ ਤਰੀਕੇ ਨਾਲ ਹਰਦਾਇਤਾ ਨੂੰ ਪਤਾ ਲੱਗ ਜਾਂਦਾ ਕਿਹੜੇ ਹਰਦਾਇਤਾ ਉਹਨਾਂ ਨਾਲ ਸਰਕਾਰ ਸਖਤੀ ਪੂਰੀ ਕਰਦੀ ਹੈ ਜਿਨ੍ਹਾਂ ਨਾਲ ਕੁਦਰਤੀ ਹੋ ਜਾਂਦਾ ਉਹਨਾਂ ਨਾਲ ਅਦਾਲਤ ਵੀ ਧਰਮੀ ਵਰਤ ਲੈਂਦੀ ਹੈ ਵੀ ਇਹ ਨਹੀਂ ਸੀ ਚਾਹੁੰਦਾ ਕਰਨਾ ਵੀ ਇਹ ਤੇ ਹੋ ਗਿਆ ਪਸਟਾਉਂਦਾ ਵੀ ਹੈ ਉਹ ਤੇਬੀ ਦਾ ਲਗ ਨਾ ਵੀ ਸ੍ਰੋਣਤ ਅਚੰਤੀ ਅਨਲ ਵਿਵੰਤੀ ਜੋਗ ਨਾ ਖੋਲੂ ਸ੍ਰੋਣਤ ਅਚੰਤੀ ਅਚੰਤੀ ਆਚਮਨ ਕਰ ਜਾਂਦੀ ਹੈ ਉਹੀ ਜਿਹੜਾ ਹੈ ਨਾ ਲੋਭ ਲੋਭ ਰੱਥ ਚੂਸ ਜਾਂਦੀ ਦਾ ਨੋਏ ਕਿ ਉੱਥੇ ਹੈ ਨਾ ਲੋਭ ਰਤ ਜਾਏ ਹਾਂ ਲੋਭ ਰਤ ਵਿੱਚ ਇਹ ਤਨ ਸਭੋ ਰਤਾ ਹੈ ਰਤ ਬਿਨ ਤਨ ਨਾ ਹੋਏ ਇਹ ਤਾਂ ਸਰੀਰ ਆ ਹੋ ਗਿਆ ਨਾ ਰਤ ਪਰ ਲੋਭ ਨੂੰ ਰਤ ਕਿਹਾ ਹੋਇਆ ਹੈ ਨਾ ਦੇ ਵਿੱਚ ਇੱਥੇ ਵੀ ਲੋਭ ਰਤ ਲੈਣਾ ਹੈ ਰਖਤ ਵਿੱਚ ਲੋਭੀ ਹੈ ਅਸਲ ਛੋ ਵਾਹ ਲੋਭੀ ਵਾਹ ਪਖੰਡੀ ਵੀ ਹੁੰਦਾ ਹੈ ਮਾਪ ਘਟੀਆਂ ਨੂੰ ਲੋਭ ਹੀ ਆ ਗਿਆ ਹੋਇਆ ਜਿਹੜਾ ਬਹੁਤ ਹੀ ਕੋਟਲ ਨਹੀਂ ਦੀਆ ਕੋਟਲ ਨਹੀਂ ਦੀਆ ਹੋਵੇ ਨਾ ਲੋਭ ਹੀ ਹੁੰਦਾ ਹੋ ਕੋਟਲ ਗਾਂਠ ਜਦ ਖੁੱਲੇ ਦੇਵ ਨੇ ਲੋਭ ਕਰਕੇ ਕੋਟਲ ਨਹੀਂ ਦੀ ਇਹਨਾਂ ਦੀ ਲੋਭ ਨੇ ਲੋਭ ਹੈ ਇਹ ਆਦਮੀ ਦੀ ਮਜਬੂਰੀ ਹੈ ਲੋਭ ਹੋਣਾ ਸਾਰੇ ਆਦਮੀਆਂ ਦੀ ਮਜਬੂਰੀ ਹੈ ਲੋਭ ਹੋਣਾ ਕਿਆ ਦਾ ਆਜੂ ਇਹਨਾ ਚੀਜ਼ਾਂ ਨੂੰ ਛੱਡਦਾ ਫਿਰ ਉਹ ਸੰਸਾਰੀ ਦੀ ਨੀਂਦ। ਫਿਰ ਉਹ ਸੰਸਾਰੀ ਦੀ ਨੀਂਦ। ਫੇ ਤਾਂ ਕਰ ਦੇ ਵੀ ਬਰਾਬਰ ਸੰਬੰਧ ਦੇ ਨੂੰ। ਵੀ ਐ ਡੇ ਉਹ ਤਾਂ ਦਾ ਰਿਸ਼ਤਿਆਂ ਨਹੀਂ ਲੈਂਦਾ ਹਰਦੋਂ ਭੁੱਖੇ ਮਾਰਦਾ ਇਹਨੇ। ਤਨਖਾਹਾਂ ਅੱਜ ਕੱਲ ਕੀ ਬਣਦਾ। ਉਹ ਵੀ ਕਰਨ ਲੱਗ ਜਾਂਦੇ ਨੇ। ਰਿਸ਼ਤੇਦਾਰ ਕਹਿੰਦੇ ਕੋਈ ਬਣਾ ਲੈਂਦਾ ਮੂਰਖਾ। ਮੂਰਖਾ ਕਹਿੰਦੇ ਨਾ ਨੂੰ। ਇਹਨੇ ਮੂਰਖਾ ਨੂੰ ਕੁਝ ਨਹੀਂ ਬਣਾਇਆ। ਉੜ ਜੇਦਾ ਇਮਾਨਦਾਰ ਬੰਦਾ ਤਾ ਮੂਰਖ ਕਹਿੰਦਾ ਦੁਰੀਏ ਦਾ ਲੋ ਮੂਰਖ ਕਹਦੀਏ ਜੇ ਗੁਰੂਵਾਲਾ ਨੂੰ ਮੂਰ ਰਖਦਾ ਫੇ ਤਾਂ ਮੂਰਖ ਕਹੁੰਦਾ ਜੇ ਗੁਰੂਵਾਲਾ ਨੂੰ ਪਿੱਠ ਕਰਦਾ ਫੇ ਸਿਆਣਾ ਕਹੁੰਦਾ ਸੰਸਾਰ ਦਾ ਤੈ ਕੱਪ ਸੰਸਾਰ ਨੂੰ ਰੱਖੇ ਕਿਨਾਰਾ ਘਰ ਨੂੰ ਰੱਖੇ ਕਿਧਰ ਰੱਖੇ ਜਦੋਂ ਨਰਾਕਾਰ ਨੂੰ ਰੱਖਦਾ ਛੱਡ ਦਿੰਦਾ ਸੰਸਾਰ ਨੂੰ ਫਿਰ ਉਹ ਸੰਸਾਰੀ ਨਹੀਂ ਰਹਿੰਦਾ ਜੇ ਲੋਭ ਤਿਆਗਦਾ ਫਿਰ ਉਸ ਸਾਰੀ ਨਹੀਂ ਰਹਿੰਦਾ ਉਹਦੇ ਨਾਲ ਲੱਗਣ ਲੱਗ ਜਾਂਦੇ ਨੇ ਨਾਲ ਦੇ ਵੀ ਉਹਦੇ ਅਫਸਰ ਵੀ ਲੱਗਦੇ ਨੇ ਵੀ ਇਹ ਕਿਥੋਂ ਆ ਬੜਿਆ ਸਾਡੇ ਕੋਕੜੂ ਨਾ ਖਾਵੇ ਨਾ ਖਾਣ ਦਵੇ ਥੱਲੇ ਵਾਲੇ ਵੀ ਲੱਗਦੇ ਨੇ ਉਹਦਾ ਓਖਾ ਹੋ ਜਾਂਦਾ ਵਿਚਾਰੇ ਦਾ ਉਹਨੂੰ ਚੱਲਣਾ ਓਖਾ ਹੋ ਜਾਂਦਾ ਉਹਨਾਂ ਦੇ ਨਾਲ ਚੱਲਣਾ ਓਖਾ ਹੋ ਜਾਂਦਾ ਉਹਦਾ ਇਹ ਜਿਹੜੇ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਉਹਦੇ ਜੋੜ ਲਾਉਦਾ ਉਨਾਂ ਦੀ ਜੋੜਾਉਣਾ ਜਿਹੜਾ ਲੋਭ ਛੱਡੇ ਉਹ ਛੱਡੇ ਉਹਦਾ ਜੋੜ ਕੇ ਵੀ ਆ ਜੂਗਾ ਉਹਦਾ ਤਾਂ ਫਿਰ ਬੈਰ ਜਿਹੜਾ ਨਾ ਗੋਲੀ ਜਿਹੜੀ ਗੋਲੀ ਦਾਗੀ ਹੋ ਜਾ ਉਹ ਬੈਰ इजीली ਚਲਦੀ ਹੈ ਵੈਰ ਉਹ ਦੋਈਆਂ ਗੋਲੀਆਂ ਦਾ ਕੱਢ ਦਿਓ ਵਿੱਚੋਂ ਇਹ ਜਿਉ ਬੋਝ ਹੈ ਜੀ ਇਹ ਦੋਈਆਂ ਨੇ ਹਨਲ ਕੀ ਮੂਹ ਦੇ ਵਿੱਚੋਂ ਕੀ ਨਿਕਲਦੀ ਹੈ ਅਗ ਅਗ ਕਿਹੜੀ ਬ੍ਰਹਮਾਗਨ ਬ੍ਰਹਮਾਗਨ ਸਹਾਜੇ ਪਰਜਾਲੀ ਪ੍ਰਭ ਗਿਆਨ ਦੇ ਵਿੱਚ ਜਿਹੜਾ ਤੇਜ ਹੈ ਨਾ ਪ੍ਰਚੰਡਤਾ ਹੈ ਜਿਹੜੀ ਪ੍ਰਭ ਗਿਆਨ ਦੀ ਉਹ ਅਗ ਹੈ ਸੇਖ ਵੀ ਆਉਂਦਾ ਇਹ ਗੱਲਾਂ ਦਾ ਸੇਖਾ ਦਾ ਹੁੰਦਾ ਅਗ ਤੇ ਵੀ ਸੇਖ ਹੁੰਦਾ ਇਹ ਗੱਲਾਂ ਜੋ ਸੱਚ 'ਚੋ ਸੇਕ ਵੀ ਬਹੁਤ ਆਉਂਦਾ ਹੈ ਕਈਆਂ ਨੂੰ ਸੇਕ ਬਹੁਤ ਲੱਗਦਾ ਤੇ ਸੇਕ ਬਿਨਾ ਕੱਚਾ ਪੱਕਾ ਵੀ ਨਹੀਂ ਹੁੰਦਾ ਜਿਹਦਾ ਸੇਕ ਆ ਗਿਆ ਬੁਰਾ ਲੱਗ ਗਿਆ ਉਹ ਤਾਂ ਭੱਜ ਜਾਂਦਾ ਪਰੇ ਰਹਿ ਜਾਂਦਾ ਕੱਚਾ ਜਿਹੜਾ ਸੇਕ ਦੇ ਡੇੜੇ ਨੂੰ ਹੋ ਕੇ ਬਹਿ ਗਿਆ ਪੱਕ ਵੀ ਜਾਂਦਾ ਇਟ ਕੱਚੀ ਕੱਚੀ ਆ ਪੱਕ ਫਿਰ ਚਾਹੇ ਸਾਰੀ ਬਰਸਾਦ ਪਈ ਜਾਵੇ ਉਹ ਕੁਝ ਨਹੀਂ ਹੁੰਦਾ ਨਹੀਂ ਤਾਂ ਵੀ ਪਾਣੀ ਖਾਰ ਦਿੰਦਾ ਉਹ ਪਾਣੀ ਖਾਰ ਦਿੰਦਾ ਹ ਹ ਅਨਲ ਵਿਵੰਤੀ ਜੋਗ ਜੇਅੰਤੀ ਖੜਕ ਧਰੇ ਅਨਲ ਵਿਵੰਤੀ ਆ ਫਿਰ ਜੋਗ ਜੇਅੰਤੀ ਆ ਫਿਰ ਜਿਹੜਾ ਜੋਗ ਹੈ ਨਾ ਜਿਹੜਾ ਵਿਛੜਿਆ ਹੋਇਆ ਆਪਣੇ ਭੂਲ ਨਾ ਉਹ ਜੋਗ ਨੂੰ ਫਿਰ ਜਿੱਤ ਲੈਂਦਾ ਫਿਰ ਜੁੜ ਜਾਂਦਾ ਯੋਗੀ ਯੋਗ ਦੀ ਪ੍ਰਾਪਤੀ ਕਰ ਰਹੇ ਨੇ ਨਹੀਂ ਪ੍ਰਾਪਤੀ ਹੋ ਰਹੀ ਸਮਾਧੀ ਨਾਲ ਯੋਗ ਪ੍ਰਾਪਤ ਕਰ ਰਹੇ ਨੇ ਨਹੀਂ ਹੋ ਰਿਹਾ ਬਾਹਲਾ ਨਾਲ ਕਰਲੇ ਨਹੀਂ ਹੋ ਗਿਆ ਪਰ ਗੁਰਮਤ ਨਾਲ ਯੋਗ ਪ੍ਰਾਪਤੀ ਹੋ ਜਾਂਦੀ ਹੈ ਯੋਗ ਜੇ ਕਾਮਯਾਬੀ ਮਿਲ ਜਾਂਦੀ ਹੈ ਆਪਣੇ ਮੂਲ ਨਾਲ ਜੁੜਨ ਵਿੱਚ ਕਾਮਯਾਬੀ ਮਿਲ ਜਾਣੀ ਯੋਗ ਜੇ ਹੰਗਤਾਰੇ ਖੜੇ ਦਤਰੇ ਤੇਰਾ ਰੂਪ ਕੀ ਹੈ ਤੇਰੀ ਦੇਹ ਕੀ ਹੈ ਤੈਨੂੰ ਕੀ ਗਈ ਤੂੰ ਖੜਗਾ ਗਿਆਨ ਖੜਗਾ ਤੜ ਕੀ ਹੈ ਤੇਰੀ ਖੜਗ ਆਤ ਉਹ ਕਿਹੜੀ ਖੜਗ ਪੀਰੀ ਦੀ ਤਲਵਾਰ ਹੈ ਔਰ ਇਹ ਪੀਰੀ ਦੀ ਤਲਵਾਰ ਆ ਉਹ ਹੈ ਹੁਣ ਇਹ ਪੀਰੀ ਦੀ ਆ ਤਲਵਾਰ ਸੀ ਉੱਥੇ ਵੀ ਹੈਗੀ ਹੈ ਮੱਤ ਗੁਰ ਆਤਮ ਦੇਵ ਦੀ ਖੜਗ ਦੇਖੋ ਖੜਗ ਲਵਤੇ ਵਰਤੇ ਖੜਗੇ ਉੱਤੇ ਵਰਤੇ ਮੱਤ ਗੁਰ ਆਤਮ ਦੀ ਜਿਹੜੀ ਗੁਰਮਤ ਹੈ ਨਾ ਆਤਮ ਹੈ ਜਣਾ ਆਤਮ ਦੇਵ ਹੈ ਨਾ ਗੁਰ ਅੰਦਰ ਦੇਵਾ ਵੱਤ ਕੋ ਰਾਤਮ ਦੇਵ ਦੀ ਖੜਗ ਜੋਰ ਦੀ ਕਾਇਆ ਫੜ ਸਭ ਕੁਝ ਦਿੰਦੀ ਹੈ ਤੇ ਘੜੀਏ ਸੁਰਤ ਮਤਮਨ ਬੁੱਧ ਤੇ ਘੜੀਏ ਸੁਰਾਂ ਸਿੱਧਾਂ ਸਭ ਕੱਢ ਦਿੰਦੀ ਹੈ ਕੱਢ ਕੇ ਕਾਬਲ ਬਣਾ ਦਿੰਦੀ ਹੈ ਫਿਰ ਟਾ ਜਾਂਦਾ ਆਪਣੇ ਬੂਲ ਦੇ ਨਾਲ ਉਹਦਾ ਸੁਭਾਅ ਸਭਾ ਦੇਵ ਦੇ ਸੁਭਾਅ ਵਰਗਾ ਫਿੱਟ ਹੋ ਜਾਂਦਾ ਹੈ ਸੱਚਖੰਡ ਦੇ ਗੁਰਮਤ ਅਨਸਾਰ ਉਹਦਾ ਸੁਭਾਅ ਬਣ ਜਾਂਦਾ ਹੈ ਗੁਰਮਤ ਦੇ ਘੜਿਆ ਨਹੀਂ ਹੋਇਆ ਹੈ ਘੜਿਆ ਜਾਂਦਾ ਮਾਣ ਐ ਚੱਲਦਾ ਗੁਰਮਤ ਦੇ ਵਿੱਚ ਰਵਾ ਹੋ ਕੇ ਚੱਲਦਾ ਬਿਲਕੁਲ ਸੁਗੰਧਾ ਸੁਗਨ ਨਾਲ ਚੱਲਦਾ ਖੜਗ ਧਰੇ ਖੜਗ ਧਰੇ ਇਹ ਖੜਗ ਧਾਰਨ ਕਿਹਦਾ ਕਿ ਅਗੇ ਖੜਗ ਧਾਰੀ ਹੋਈ ਆ ਉਹ ਖੜਗ ਗਾਹ ਨੂੰ ਧਾਰੀ ਹੋਈ ਆ ਖੜ ਲੋਹੇ ਦੀ ਹੋ ਜੂ ਲੋਹੇ ਦੀ ਪਾਈ ਹੋਈ ਕਿਸੇ ਬੱਦੇ ਰ ਖੜਗ ਰੂਪੇ ਤੂੰ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਪਾਪ ਬਨਾਸਨ ਧਰਮ ਕਰੇ ਤੇਰੀ ਇਸ ਕਰਕੇ ਵੀ ਜਾਇਜਾ ਹੋ ਰਹੀ ਹੈ ਮੈਂ ਖਸਮਰਦਨ ਪਾਪਾਂ ਦਾ ਨਾਸ ਕਰਦੀ ਹੈ ਸੰਸਾਰ ਚੋਂ ਧਰਮ ਪੈ ਲਗਰਦੀ ਸੰਸਾਰ ਚੋਂ ਪਾਪ ਖਤਮ ਕਰਕੇ ਪਾਪ ਕਰਮਾਂ ਦਾ ਨਾਸ ਕਰਕੇ ਧਰਮ ਕਰੇ ਪੁੰਨ ਕਰਮ ਪੈ ਆ ਧਰਮ ਨਾਲ ਲੋਕਾਂ ਨੂੰ ਪ੍ਰੇਰ ਕੇ ਲਾਦਦੀ ਹੈ ਪਾਪ ਛਡਾ ਦੇਦੀ ਹੈ ਲੋਕਾਂ ਦੇ ਇਸ ਕਰਕੇ ਵੀ ਜਾਇਜਾ ਹੈ ਦੇਖੋ ਕਿੰਨੇ ਅਲੱਗ ਅਲੱਗ ਦੇ ਵਿੱਚ ਅਲੱਗ ਅਲੱਗ ਗੁਣ ਦੱਸੇ ਹੋਏ ਗੁਰਮਤਿ ਨੇ ਇਹ ਕੀਤੇ ਨੇ ਲੋਕਾਂ ਹੀ ਕੀਤੇ ਨੇ ਮਤਨ ਨੇ ਘਰ ਨੇ ਹੋਰ ਕੀ ਕੀਤਾ ਭਗਤਾਂ ਨੇ ਕੀ ਕੀਤਾ ਇਹ ਕੁਝ ਕੀਤਾ ਹੁਣ ਇਹ ਤਾਂ ਪਤਾ ਲੱਗੂ ਜਿਹੜਾ ਦੁਰਗਾ ਚੰਡੀ ਕੀ ਨੂੰ ਗਾਇਦਲ ਹੁਣ ਜਿਹੜਾ ਇਹ ਕੋਈ ਸਮਝ ਨਹੀਂ ਆਇਆ ਚੱਡਾ ਤੂੰ ਹੋਰੇ ਚੱਕ ਲਿਆ ਡੋਰੂ ਹੋਰੇ ਵਜਾ ਲਿਆ ਤੇ ਇੱਥੋਂ ਪਤਾ ਲੱਗੂ ਲੋਕਾਂ ਨੂੰ ਕਿ ਕਿੰਨੇ ਕੁ ਲਾਇਕ ਤੇ ਇਹਨਾਂ ਲਾਇਕ ਇਹਦਾ ਲਾਇਕ ਕਿੰਨੇ ਲਾਇਕ ਨੇ ਸਿੱਖੋ ਲਾਇਕ ਨਾ ਤੇ ਨਲਾਇਕ ਨੇ ਲੈਕਿਨ ਨਲਾਇਕੀ ਦਾ ਤਾਂ ਹੁਣ ਪਤਾ ਲਗੂ ਨੋ ਉਹ ਐਲਲ ਵੀ ਕੱਲਣੀ ਹੋਰ ਗੱਲ ਆ ਹੋਰ ਗੱਲ ਆ ਇਹ ਸਭ ਨੂੰ ਔਕੀ ਪੜ੍ਹਾਈ ਆ ਇਹ ਤਾਂ ਨਹੀਂ ਸਮਝ ਆਉਂਦੀ ਸਾਰੀ ਦੁਨੀਆ ਦੀਆਂ ਚਾਹੇ ਪੜ੍ਹਾਈ ਪੜ੍ਹ ਲਵੇ ਤਾਂ ਨਹੀਂ ਸਮਝ ਆਉਂਦੀ ਇਹ ਤਾਂ ਕਿਰਪਾ ਨਾਲ ਸਮਝ ਆਉਂਦੀ ਆ ਕਾ ਰੂਹ ਕਿਸੇ ਦੇ ਸਮਝ ਹੈ ਇਹ ਨਹੀਂ ਆਉਂਦੀ ਕਿਸੇ ਦੇ ਸਮਝ ਇਹ ਤਾਂ ਕਰਪਾਣ ਵਾਲੇ ਸਮੂ ਚਲਦੀ ਹੈ ਜਿਹਨੂੰ ਚਾਹੇ ਦੇ ਦੇਵੇ ਕਰਤੇ ਹੱਥ ਮੜਿਆਈਆਂ ਚਾਹ ਭਾਵੇਂ ਤਾਂ ਦੇ ਇਹ ਤਾਂ ਉਹਦੇ ਹੱਥ 'ਚ ਹੈ ਇਹ ਨਹੀਂ ਦਦਾ ਆਉਣ ਵਾਲੇ ਸਮੇਂ ਦੇ ਵਿੱਚ ਨੂੰ ਜਿਹੜੇ ਤੁਸੀਂ ਪਾਪ ਕਰਨੇ ਹੁਕਮ ਦਾ ਵਿਰੋਧ ਕਰਨਾ ਹੀ ਬੰਦ ਕਰ ਆ ਗਾਉਗੇ ਨੂੰ ਕਹਿੰਦੇ ਆਹ ਪਾਪੋਂ ਤੇ ਹੁਕਮ ਦਾ ਵਿਰੋਧ ਹੁਣ ਜਿਹੜਾ ਔਲ ਵਾਲੇ ਸੁਬੇ ਦੇ ਵਿੱਚ ਹੁਕਮ ਦਾ ਵਿਰੋਧ ਕਰਨਾ ਬੰਦ ਹੋ ਗਿਆ ਦਿਵਾਰਲ ਖਤਮ ਹੁਕਮ ਦਾ ਵਿਰੋਧ ਨਹੀਂ ਦੁਸ਼ਟ ਪ੍ਰਜਾਰਣ ਜਿਹੜੇ ਦੁਸ਼ਟ ਪਹਿਲਾਂ ਨਹੀਂ ਜਿਹੜੇ ਅੰਦਰ ਆ ਗਾਉਗ ਪਹਿਲਾਂ ਪਏ ਜਿਹੜੇ ਦੁਸ਼ਟ ਜਿਹੜਾ ਸੁਭਾਅ ਪਹਿਲਾਂ ਪਿਆ ਹੈ ਜਿਹਦੇ ਕਰਕੇ ਦੀ ਸਪਰੇ ਕਰ ਦਦੀ ਸ੍ਰਿਸ਼ਟੀ ਉਭਾਰਨ ਸੁੱਧ ਮਤੇ ਸ੍ਰਿਸ਼ਟ ਸਾਰੀ ਸ੍ਰਿਸ਼ਟ ਨਾਲੇ ਇਹ ਤੇਰਾ ਦੇਖੋ ਕੱਲੇ ਸਿੱਖਾਂ ਦੀ ਗੱਲ ਨਹੀਂ ਆਉਣ ਇਹ ਸ੍ਰਿਸ਼ਟੀ ਉਭਾਰਨ ਸਾਰੀ ਸ੍ਰਿਸ਼ਟੀ ਦਾ ਹੀ ਕਰ ਰਹੀ ਹੈ ਤੂੰ ਇਹ ਜਰਾਸੀ ਲਖਜੋਨ ਦੇ ਵਿੱਚ ਹੋ ਰਿਹਾ ਸਾਰਾ ਕੁਝ ਕੱਲੇ ਆਦਮੀ ਨੇ ਢੀਕਾਂ ਲੈ ਆਣੇ ਹੁਣੇ ਹੁਕਮ ਸਭ ਦੇ ਅੰਦਰ ਹੈ ਸ੍ਰਿਸ਼ਟੀ ਦੇ ਵਾਰ ਨੂੰ ਸਾਰੀ ਸ੍ਰਿਸ਼ਟੀ ਤੇ ਲਿਆ ਰਹੀ ਹੈ ਸ਼ੁੱਧ ਮਤਿ ਆਦਮੀ ਦੀ ਜੋਤ ਤੱਕ ਨੇ ਤੂੰ ਸ਼ੁੱਧ ਮਤ ਤਸ ਸ਼ੁੱਧ ਮਤ ਉਹ ਹੈ ਉਹ ਨਹੀਂ ਤੇਰੇ ਗੁਰ ਮਤ ਸ਼ੁੱਧ ਮਤ ਹੈ ਸ਼ੁੱਧ ਜਿਹਦੇ ਵਿੱਚ ਲੋਬ ਉਹ ਇਹ ਚੀਜ਼ਾਂ ਬਿਲਕੁਲ ਨਾ ਮਲੀਨਤਾ ਹੋਵੇ ਹੀ ਨਾ ਬਲਦੀ ਮਲੀਨਤਾ ਦੇ ਵਾਸਤੇ ਕੋਈ ਜਗ੍ਹਾ ਹੀ ਨਾ ਹੋਵੇ ਸ਼ੁੱਧ ਹੈ ਸ਼ੁੱਧ ਬਤੇ ਫੜਿਆਰ ਫੁਕਾਰ ਨਹੀਂ ਬਾਗ ਬੁਕਾਰ ਨਹੀਂ ਸ਼ਸਤਰ ਸਾਧ ਮਤੇ ਫੜਿਆਰ ਫੁਕਾਰਣੀ ਫੜਿਆਰ ਫੁਕਾਰ ਵੀ ਸਕਦੀ ਆ ਉਹਦਾ ਕਹਿੰਦਾ ਨਾ ਝੂਠੀ ਗੱਲਾਂ ਆਇਓ ਜੋ ਆਇਓ ਜੋ ਏ ਸੱਚ ਕਹਿੰਦੀ ਹੁੰਦੀ ਆ ਵੀ ਐ ਕਰੇਗਾ ਤਾਂ ਐ ਹੋ ਇਹ ਵੀ ਫੁੱਕਾਰੀ ਆ ਇਹਨੂੰ ਫੁੱਕਾਰਾ ਝੂਠਾ ਜਿਹੜਾ ਇਹ ਵੀ ਗੱਲ ਹੈ ਕੋਈ ਐ ਗੱਲ ਬਈ ਲੈ ਜੀ ਸਾਧ ਬਥੇਰੇ ਦੇਖੇ ਨੇ ਐਂੀਆਂ ਗੱਲਾਂ ਕਰਦੇ ਕੀ ਹੋ ਜੂਗਾ ਇਹਦਾ ਫੁੱਕਾਰਾ ਸੱਚਾ ਹੁੰਦਾ ਝੂਠਾ ਨਹੀਂ ਹੁੰਦਾ ਫਨੀਰ ਫੰਕਾਰ ਨਹੀਂ ਇਹਦੇ ਚ ਵੀ ਫੁੱਕਾਰੇ ਹੈਗੇ ਨੇ ਪਛਤਾਣਾਂ ਬੂੜਿਆ ਫੁਕਾਰਾ ਹੀ ਹੈ ਪੜ੍ਹਿਆ ਕਵਣ ਕੁ ਮਤ ਤੁਮ ਲਾਗੇ ਬੁੱਢੋ ਕੇ ਪਰਵਾਰ ਸਕਲ ਸੁਨ ਆਪ ਨੂੰ ਇਹ ਫੁਕਾਰਾ ਹੀ ਹੈ ਜੇ ਪੜ੍ਹਾਈ ਨੂੰ ਫੁਕਾਰਾ ਸਮਝਦਾ ਰਹਾ ਤਾਂ ਵੀ ਪੜ੍ਹਦੇ ਨੂੰ ਕਬ ਛੱਡਿਆ ਨਹੀਂ ਪੜ੍ਹਾਈ ਨਾਲ ਫੁਕਾਰਾ ਸਮਝਿਆ ਇਹ ਝੂਠਾ ਤਾਂ ਹੀ ਤਾਂ ਬਣਿਆ ਨਹੀਂ ਜੇ ਸੱਚਮਣ ਲੈਂਦਾ ਛੱਡਣ ਨੂੰ ਜਿਹੜਾ ਇਹਨੂੰ ਮੂੰਹ ਕਾ ਕਹ ਬਹੁਤ ਸਮਝਦੇ ਨੇ ਨਾ ਉਹ ਤਾਂ ਖੇ ਚਰੇ ਜਾਂਦੇ ਨੇ ਫਿਰ ਫੁਕਾਰੇ ਇਹਦੇ ਵਿੱਚ ਵੀ ਹੈਗੇ ਨੇ ਇਹਨਾਂ ਕਿਹੋ ਜਿਹੇ ਹੈ ਨਹੀਂ ਇਹ ਚ ਵੀ ਹੈਗੇ ਨੇ ਪਰ ਉਹ ਸੱਚੇ ਨੇ ਝੂਠੇ ਨਹੀਂ ਹਣ ਉਹ ਝੂਠੇ ਨਹੀਂ ਹਣ ਅਲਰਟ ਕਰਨ ਵਾਲੇ ਨੇ ਅੰਨਾ ਸੌ ਜਾਂਦਾ ਉਹਨੂੰ ਆਹ ਤੇਰੇ ਮੂਰੇ ਖੂ ਹੈ ਜੇ ਨਾ ਮੰਨੂਗਾ ਫਿਰ ਤੇ ਡਿਗੂਗਾ ਹੀ ਉਹਨੂੰ ਤੇ ਨਹੀਂ ਕੋਈ ਨਹੀਂ ਜੇ ਨਾ ਮੰਨੂਗਾ ਫਿਰ ਉਹਨੇ ਡਿਗਣਾ ਹੀ ਨਿਕੜੇ ਕਟ ਕਟ ਮੈਂ ਹਰ ਜੂ ਬਸੇ ਸਤਨ ਕਿਉਂ ਪੁਕਾਰ ਕਿਉਂ ਕਰਕੇ ਕਹਿਣਾ ਪਿਆ ਲੋਕ ਨਹੀਂ ਸੀ ਮੰਦੇ ਘੜ ਬਿਚ ਲੋ ਤੇ ਦਿਮਾਗ ਚ ਬਸਦਾ ਤਾਂ ਰੌਲਾ ਪਾਉਣਾ ਪਿਆ ਸੁਣਿਆ ਸਾਡੇ ਸਿੱਖ ਵਿਦਵਾਨਾਂ ਨੇ ਨਹੀਂ ਸੁਣਿਆ ਹੋਰ ਤੇ ਹੋਰ ਤੇ ਸਿੱਖ ਵਿਦਵਾਨਾਂ ਨੇ ਨਹੀਂ ਸੁਣਿਆ ਆ ਜਿਹੜੇ ਸਾਨੂੰ ਬੱਤਾ ਦਿੰਦੇ ਨੇ ਇਹਨਾਂ ਨੇ ਖੁਦ ਨਹੀਂ ਸੁਣਿਆ ਐਵੇਂ ਦਿਮਾਗ ਦੇ ਵਿੱਚ ਦਸੂਦਾਰ ਬਣੇ ਬੈਠੇ ਨੇ ਤਾਹੀ ਤਾਂ ਦਿਮਾਗ 'ਚ ਬੈਠੇ ਨੇ ਹੈ ਕਿੱਦਾਂ ਦਿਮਾਗ ਛੱਡ ਕੇ ਦਿਲ ਚਾਏ ਨਾ ਉਦੋਂ ਪਤਾ ਲੱਗੂ ਉਦੋਂ ਦੁਨੀਆ ਬਦਲੂਗੀ ਇਹਨਾਂ ਦੀ ਇਹ ਤਾਂ ਆਪਣੇ ਦਿਮਾਗ ਨੂੰ ਕੋਈ ਸਮਝ ਦੇਣੇ ਵੀ ਨੇ ਫੋਕਾ ਰਹੇ ਸਮਝਿਆ ਇਹਨਾਂ ਗੱਲਾਂ ਨੂੰ ਕੁਰਬਾਨੀ ਦਿਉਨ ਨੂੰ ਹਾਂ ਬਾਗ ਬੁਕਾਰ ਨਹੀਂ ਬਾਗ ਸੱਚ ਉਹ ਕਾਰ ਨਹੀਂ ਦੀਏ ਬਾਗ ਬੁਕਾਰ ਦੀਏ ਅਸਲ ਵਿੱਚ ਤਾਂਵੇਂ ਨੂੰ ਗੱਲ ਕਰਦੀ ਹੈ ਪੋਲੀ ਗੱਲ ਨਹੀਂ ਹੈ ਕੋਈ ਸੱਚ ਹੈ ਗੱਲ ਜੇ ਬਾਗ ਭੋਲਦਾ ਹੋਵੇ ਦੇਖੋ ਸਭ ਫੁਕਾਰਦਾ ਹੋਵੇ ਤੁਹਾਨੂੰ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿਆ ਉਹ ਕਹਿੰਦਾ ਵੀ ਮੇਰੇ ਡਰੇ ਨਹੀਂ ਮੈਨੂੰ ਰੋਸ ਹੈ ਤੁਸੀਂ ਉੱਥੇ ਖੜੇ ਰਹੋ ਤੁਹਾਨੂੰ ਕੁਝ ਨਹੀਂ ਕਹਿੰਦਾ ਉੱਥੇ ਖੜਾ ਰਹੋ ਜੋ ਤੁਰਨ ਲੱਗੂ ਤੁਸੀਂ ਬਗਰ ਨਾ ਜਾਓ पर जे बाघ दी आवाज ना सुणी है ना सुन के फिर चुप कर रही है वो आप ऐदा हुंदा आओ स अपनी बणले बाघ आ, आ पेन ढोंदा जेडे सब ने पहले फुकारा दी मारदा हुंदा ए भी गल हां है जे दब पहर आ जे फिर ओ गल अलग दाव जाए सब लंग मारदा हुंदा नहीं मारदा ਪਰ ਜੇ ਉਤੇ ਹੱਥ ਆ ਜਾਏ ਫੜਿਆ ਜਾਵੇ ਕਬਾਰ ਲੱਗੀਏ ਟਗਬਾਰ ਤੇ ਲੰਗਣ ਉਤੇ ਵੀ ਨਾ ਗਿਆ ਆਦਮੀ ਨੇ ਕੁਝ ਨਹੀਂ ਕਰਨ ਉਹ ਆਉਂਦਾ ਡਾਉਟ ਬਾਗ ਦਾ ਸ਼ਕਾਰੀ ਜਨ ਮਰ ਬਾਗ ਬਕਾਰ ਨਹੀਂ ਬਾਗ ਬਾਗ ਵਾਂਗੂ ਬੋਲ ਤੇਰਾ ਬਾਗ ਬੋ ਨਿਕਲਦਾ ਬਾਗ ਡਰ ਕੇ ਨਹੀਂ ਬੋਲਦਾ ਹੁੰਦਾ ਬਾਗ ਬਾਗ ਵੀ ਇੱਕ ਸ਼ੇਰ ਦਾ ਹੀ ਲੋ ਵਾਹ ਸ਼ੇਰ ਦੀਓ ਕਿਸ ਬਗ ਸ਼ੇਰ ਤਾਂ ਨਹੀਂ ਕਿਹਾ ਹੋਇਆ ਥੇ ਸ਼ੇਰ ਤਾਂ ਗਿਆਨ ਨੂੰ ਕਿਹਾ ਹੈ ਸ਼ਸਤਰ ਪ੍ਰਹਾਰ ਨਹੀਂ ਸਾਧਮਤੇ ਸ਼ਾਸਤਰ ਪ੍ਰਹਾਰ ਦੀ ਸ਼ਾਸਰਾਂ ਦਾ ਪ੍ਰਹਾਰ ਬੁਕਾਰ ਉਹਦੇ ਵਿੱਚ ਹੀ ਸ਼ਾਸਰਾਂ ਦਾ ਪ੍ਰਹਾਰ ਜਿਵੇਂ ਬਾਗ ਦਾ ਬੋਲਣਾ ਜਿਹੜੇ ਜਾਨਵਰ ਨੇ ਉਹਨਾਂ ਤੇ ਸ਼ਾਸਤਰ ਸਮਝੋ ਚੱਲ ਗਿਆ ਜੰਗਲ ਦੇ ਜਾਨਵਰਾਂ ਤੇ ਬਾਗ ਦੀ ਆਵਾਜ਼ ਕਿਸ ਤਰ੍ਹਾਂ ਹਥਿਆਰ ਚੱਲ ਗਿਆ ਬਹੁਤ ਦਾ ਫਿਆਦ ਚਲ ਗਿਆ ਬਹੁਤ ਦਾ ਮੈਸੇਜ ਹੈ ਭਾਗਦੀ ਆਵਾਜ਼ ਮਿਰਗਾਂ ਦੇ ਵਾਸਤੇ ਛੋਟੇ ਜਾਨਵਰਾਂ ਵਾਸਤੇ ਬੋਲਦਾ ਸੁਣਿਆ ਉਹ ਭਜਦੇ ਨਹੀਂ ਫਿਰ ਬਜਦੇ ਨਹੀਂ ਉੱਥੋਂ ਵੀ ਤੋਂ ਬਚੋ ਇਹ ਜਿਹੜੇ ਬੁਕਾਰ ਨੇ ਅੰਦਰ ਸਾਡੇ ਇਹਨਾਂ ਵਾਸਤੇ ਬੋਲਦਾ ਸੁਣਿਆ ਆਵਾਜ਼ ਗੁਰਮਤ ਇਹਨਾਂ ਦੀ ਬਹੁਤ ਹੈ ਸ਼ਸਤਰ ਪ੍ਰਹਾਰ ਨਹੀਂ ਸਾਧਮਤੇ ਸ਼ਸਤਰ ਨਾਲ ਦੀ ਨਾਲੇ ਪ੍ਰਹਾਰ ਹੈ ਸ਼ਸਤਰਾਂ ਦਾ ਸਾਧਮਤੇ ਸਾਧਮਤੇ ਬਤਾ ਕੈਸਾ ਸਾਧ ਬਤਾਏ ਸ਼ੁੱਧ ਬਤਾਏ ਸ਼ੁੱਧ ਮਤਾਈ ਸਾਧ ਮਤਾ ਹੁੰਦਾ ਭਲਾ ਕਰਨ ਵਾਲਾ ਮਤਾ ਸਾਰਿਆਂ ਦਾ ਸਾਰਿਆਂ ਦਾ ਸ਼ੁਭਚਿੰਤਕ ਐ ਸਾਧ ਮਤਾ ਸ਼ੁਭਚਿੰਤਕ ਹੁੰਦਾ ਸਭ ਦਾ ਸਹਿਤੀ ਸੁਨਾਹਣੀ ਅਸ਼ਟ ਪ੍ਰਵਾਹਣੀ ਬੋਲਨ ਬਾਣੀ ਤੇਜ ਅਤੁੱਲੰ ਸਹਿਤੀ ਸਹਿਤੀ ਸੁਨਾਹਣੀ ਸਹਿਤੀ ਤਲਵਾਰ ਦਾ ਲੋ ਸਹੈਤੀ ਤਲਵਾਰ ਪਰਵਾਰ ਤਾਂ ਨਹੀਂ ਹੁੰਦੀ ਕੋਈ ਕਹਿੰਦੇ ਸਹੈਤੀ ਉਹ ਹੈ ਲਵਯੋ ਤਲਵਾਰ ਵਰਗੀ ਤੇਰੇ ਪੰਜ पांच ਆਏ ਤੇ ਜਿਹੜੀ ਉਹ ਚਾਹ ਬਿੰਗੀ जी ਸੀ ਉਹ सहती ਸਹੈਤੀ सहती ਸਹੈਤੀ ਸੁਣਾ ਹੁੰਦੀ ਸਹੈਤੀ ਵੀ ਹੱਥ ਚ ਸਹੈ ਹੱਥੀ ਅਸਲ ਦੇ ਵਿੱਚ ਹੈ ਤੂੰ ਆਪ ਹੈ ਤਲਵਾਰ ਹੈ ਸਾਹ ਹੱਥੇ ਤੇਰਾ ਹੱਥੇ ਹੀ ਸਭ ਕੁਝ ਹੈ ਸੋਇਬ ਦਾ ਹੱਥੇ ਹੀ 칼ਮਾ ਹੱਥੇ ਹੀ ਤਲਵਾਰ ਹੈ ਹੱਥੇ ਸਭ ਕੁਝ ਹੈ ਹੁਕਮਾਤਾ ਆ ਹੁਕਮ ਹੈ ਹੱਥੇ ਸੁਨਾਹਣੀ ਸੁਨਾਹਰੀ ਸੁਨਾਹ ਦੀ ਤੇਰੇ ਸਜੋਈ ਪਾਈ ਹੋਈ ਹੈ ਸਨੋਕਾ ਸਜੋਕਾ ਦੀ ਪਾਈ ਹੈ ਸਜੋਈ ਪਾਈ ਹੈ ਸਤੋਖ ਦੀ ਸਤੋਖ ਦੀ ਸਜੋ ਹੈ ਜਿਹੜੇ ਦੁਸ਼ਮਣਾਂ ਦੇ ਤੀਰ ਨਾ ਮਾਇਆ ਦੇ ਉਂ ਨਹੀਂ ਲੱਗਦੇ ਉਹ ਤਾਂ ਤਾਂ ਮਾਇਆ ਦੇ ਤੀਰ ਲੱਗੂਗਾ ਦੋਸਾ ਨਾ ਆਊਗਾ ਫਿਰ ਲੋਭ ਨਾ ਆਊਗਾ ਲੋਭ ਨਾ ਆਊਗਾ ਮੋਹ ਨਾ ਆਊਗਾ ਕ੍ਰੋਧ ਨਹੀਂ ਆਉਂਦਾ ਕ੍ਰੋਧ ਆਪਣਾ ਹੀ ਹੁੰਦਾ ਕ੍ਰੋਧ ਅੰਦਰੋਂ ਪੈਦਾ ਹੁੰਦਾ ਕ੍ਰੋਧ ਬਾਹਰੋਂ ਵੀ ਹੁੰਦਾ ਕ੍ਰੋਧ ਅੰਦਰੇ ਹੋਵੇ ਵੀ ਅੰਦਰ ਇਹ ਤਾਂ ਦੋਵੇਂ ਬਹੀਦੇ ਬਾਹਰੋਂ ਜਿਹੜਾ ਆਉਣਾ ਉਹ ਗੱਲ ਹੋ ਰਹੀ ਅੰਦਰੋਂ ਅੰਦਰੋਂ ਹੋ ਰਹੀ ਜੇ ਕ੍ਰੋਧ ਤੇ ਤੁਹਾਡਾ ਜੇ ਤੁਹਾਡਾ ਹੱਕar ਹੈ ਨਹੀਂ ਕਰਦਾ ਖਤਰਾ ਨਹੀਂ ਲੈ ਤੁਹਾਨੂੰ ਕਰਦਾ ਤੁਹਾਡੇ ਆਪਣੇ ਕਾਬੂ ਚ ਹੈ ਉਧਰ ਹੀ ਪੈਦਾ ਹੋਣੇ ਲੋਗ ਇਹ ਲੋ ਬਾਰਾ ਹੋਣੇ ਅੰਦਰੋਂ ਪੈਦਾ ਹੋਣੇ ਮੈਸੇ ਲੋਬ ਦੇ ਬਾਰੋਂ ਪੈਦਾ ਦਰੋਂ ਜੇ ਇਹਦਾ ਮੈਸੇਜ ਲਿਖ ਕਰਕੇ ਅੰਦਰ ਭੜ ਗਿਆ ਸਿਰ ਹੋ ਗਿਆ ਉਹਦਾ ਮੈਸੇਜ ਦਾ ਜੇ ਤਾਂ ਉਹਨੇ ਕਿਹਾ ਤਾਂ ਕਿੰਨੇ ਪੈਸੇ ਲੈਂਦਾ ਜੇ ਤਾਂ ਉਹਨੇ ਕਿਹਾ ਵੀ ਲੈਣੇ ਚਾਹੀਦੇ ਨੇ ਫੇਰ ਤਾਂ ਗਿਆ تیر ਵੱਜ ਗਿਆ ਉਹਦਾ ਪਾਰ ਹੋ ਗਿਆ ਲੋਭ ਹੀ ਬੁਣਾਤਾ ਜੇ ਨਾਲ ਸੁਣ ਤੋ ਕਹਿਣਾ ਫੇਲੋ ਵੀ ਨਹੀਂ ਬਣਾਉਂਦੇ ਬਣਨੇ ਨਾ ਬਣਨੇ ਇਹ ਦੋ ਨਾ ਲੋਭ আর મો ਇਹ ਦੋ ਚੀਜ਼ਾਂ ਦਾ ਹੀ ਖਤਰਾ ਰਹਿ ਜਾਂਦਾ ਹੈ ਲੋਭ ਹੀ ਕਬਜ਼ਾ ਤਾਂ ਹੀ ਇਹ ਪਰਬ ਪਰਬੇ ਬੇ ਪੈਦਾ ਹੁੰ ਪਰ ਬਾਨੋ ਵੀ ਪੈਦਾ ਹੋ ਸਕਦਾ ਪਰਬ ਕੋਈ ਪਾ ਵੀ ਸਕਦਾ ਪਰਬ ਗਿਆ ਭੋਪਾਗਾ ਇਹ ਪੈ ਸੇ ਜੀ ਜਨ ਪੈ ਹੈ ਜਿਤ ਪੈ ਵਾਲੋ ਨਹੀਂ ਪੈਦਾ ਹੁੰਦੀ ਪੈ ਬਾਰੋ ਵੀ ਪੈਦਾ ਹੁੰਦੀ ਓਕੇ ਹੈ ਨਾ ਜੇ ਡਰ ਆਜਵੇਂ ਬਹੁਤ ਡੇਡਾ ਡਰੇ ਤਾਂ ਫਿਰ ਡਰ ਲੱਗਦਾ ਜੇ ਮੌਨ ਤੋਂ ਡਰ ਜਵੇ ਨਾ ਜਦੋਂ ਹੱਥੀ ਦੇ ਬੁਰੇ ਸੱਟੇ ਜੇ ਡਰ ਜਾਂਦਾ ਦਿਵਾਂ ਜੇ ਡਰ ਜਾਂਦੇ ਇਹ ਚੀਜ਼ਾ ਭਰੂ ਹੁੰਦੀ ਹੈ ਪਹਿ ਵੀ ਬਾਹਰੋਂ ਦਿਖਾਈ ਜਾਂਦੀ ਹੈ ਲੋਹ ਵੀ ਬਾਹਰੋਂ ਦਿਖਾਇਆ ਜਾਂਦਾ ਵੋ ਵੀ ਬਾਹਰੇ ਹੁੰਦਾ ਜੇ ਸੁਬਤ ਹੋ ਤਾਂ ਅੰਦਰ ਦੀ ਫਿਰ ਵੱਢਦੇ ਸੰਤੋਖੀ ਬਣਦਾ ਇਹ ਸੁਣਾਉਣ ਤੇ ਤੀਨ ਨਿਵਾਹ ਆਦੇ ਅਸ਼ਟ ਪਦ ਮੈਂ ਆਦੇ ਖਿਆਲ ਨੇ ਅਸ਼ਟ ਪ੍ਰਵਾਹਣੀ ਅਸ਼ਟ ਪ੍ਰਵਾਹਣੀ ਅੱਡੇ ਪਾਸਿਆਂ ਨੂੰ ਹਥਿਆਰ ਚੱਲਦੇ ਨੇ ਅੱਡੇ ਪਾਸੇ ਤੋਂ ਜਿਹੜਾ ਵੀ ਲੋਭ ਆਇਆ ਉਧਰ ਵੀ ਤੀਰ ਚੱਲਦੇ ਨੇ ਖਰਾਬ ਸਭ ਤੀਰ ਚੱਲਦੇ ਨੇ ਉਧਰ ਬੋਲ ਨਿਵਾਹਣੀ ਬੋਲ ਨਿਵਾਹਣੀ ਬੋਲ ਕੀ ਨਿਵਾਹਣੀ ਵਾਹ ਦੀ ਪਕੜੀ ਸਿਰ ਦੀ ਵਾਹਨ ਛੋੜੀਏ ਬੋਲ ਨਿਵਾਹਣੀ ਤੇ ਬਾਦਰ ਬੋਲੇ ਤਰਪੇ ਇਹ ਤਰੋ ਨਾ ਛੁੱਟਿਆ ਅਗਲ ਹੈ ਉਹ ਮੂਲ ਨਵਾਣੀ ਆ ਜੇ ਬੋਲਤਾ ਕਿ ਜਾਓ ਕਾਇਦੋ ਸਾਡਾ ਗੁਰੂ ਆ ਇੱਕ ਉਹਨੂੰ ਤੁਸੀਂ ਮੁਸਲਮਾਨ ਬਣਾ ਲਓ ਸੀ ਸਾਰੇ ਬੜ ਜੋ ਗਏ ਨਾ ਫਿਰ ਉੱਥੇ ਉਹ ਬੋਲ ਨਵਾਣੀ ਉਹਦੇ ਬਾਤ ਲਿਖਿਆ ਹੋਇਆ ਰਖ ਦੇ ਤਾਂ ਉਹ ਕਾਇਦਾ ਵੀ ਚੰਗਾ ਤੂੰ ਜਿਹੜਾ ਬੈਜੋ ਟੇਕੇ ਚੁੱਪ ਕਰਕੇ ਜੇ ਬੰਦ ਗਏ। ਕੋਲ ਬੋਲ। ਅਸੀਂ ਆਪੇ ਹੁਣ ਸਾ ਉਹਨਾਂ ਨੂੰ ਦੇਖ ਲਾਂਗੇ ਜਿਹੜੇ ਨੇ। ਇਹ ਜਿਹੜੇ ਬੋਲਦੇ ਨੇ ਨਾ ਵੱਲ ਵੱਲ ਕਰਦੇ ਨੇ। ਇਹਨਾਂ ਨਾਲ ਹੁਣ ਆਪੇ ਸਲਝਾਂਗੇ ਜੇ ਤੁਸੀਂ ਚੁੱਪ ਕਰਕੇ ਬੈਜੋ ਰਾਮ ਲੱ। ਇਹੀ ਤਾਂ ਕਹਿਣ ਗਏ ਤੇ ਇਹਨਾਂ ਨੂੰ। ਅਕਾਲ ਤਖਤੇ ਪਰ ਉਹਨਾਂ ਨੇ ਉਦੋਂ ਉਹਨਾਂ ਦੀ ਕਮਜ਼ੋਰੀ ਸੀ ਰੰਗ ਰੰਗ ਦੀ ਆਪਣਾ ਡਰ ਸੀ ਉਹਨਾਂ ਨੂੰ ਅਸਲ ਦੇ ਵਿੱਚ ਆਜੋ ਆਪਣੀ ਜਿੱਦਾ ਬਚਾਉ ਸੀ ਉਹਨਾਂ ਨੂੰ ਵੀ ਅਸੀਂ ਕਿ ਜੇ ਸਾਡੀ ਇੱਦਾਂ ਹੀ ਬੱਜੂਗੀ ਉਹ ਚਲੋ ਕਮਜ਼ੋਰੀਆਂ ਆਪਣੀਆਂ ਨੇ ਉਹਨਾਂ ਦੀ ਪਰ ਜਦ ਹੁਣ ਉੱਤੋਂ ਪਾਣੀ ਸਿਰ ਤੋਂ ਡੋਗਣਾ ਦੇਖਿਆ ਉਹਨਾਂ ਨੂੰ ਕਾਇਬੀ ਦੱਸਿਆ ਸੀ ਅੱਜ ਆਪੇ ਜੱਕਲਣਾ ਨੇ ਤੁਹਾਨੂੰ ਨਹੀਂ ਪੁੱਛਣਾ ਸੱਚ ਨੂੰ ਬੋਲਣ ਬਾਤ ਹੈ ਕੇ ਤਾਂ ਲੈਣ ਦੀ ਲੋੜ ਨਹੀਂ ਹੁੰਦੀ ਜਦ ਸਾਡੇ ਸਭ ਲੋਕਾਂ ਦਾ ਖਾਸ ਬ ਸੱਚ ਗੇਡਰ ਨਹੀਂ ਹੁੰਦਾ ਸੱਚ ਨੂੰ ਪ੍ਰਗਟ ਹੋਣ ਬਾਅਦ ਕਿਸੇ ਤੋਂ ਮਜ਼ਦੂਰੀ ਲੈਣ ਦੀ ਨਾ ਲੋੜ ਅੱਜ ਤਾਂ ਹੋਈ ਹੈ ਨਾ ਕਹਲ ਹੋਈ ਫਖਤ ਬੋਲੇ ਨੇ ਕਿਸੇ ਤੋਂ ਮਜ਼ਦੂਰੀ ਲਈ ਸੀ ਕੁਨਾਲਕ ਬੋਲੇ ਕਿ ਤਾਂ ਮਜ਼ਦੂਰੀ ਲਈ ਸੀ ਕਿਸੇ ਤੋਂ ਮਜ਼ਦੂਰੀ ਲਈ ਗਈ ਸੀ ਮਜ਼ਦੂਰੀ ਤਾਂ ਦਿਖਾਦੀ ਹੈ ਜਦ ਤਾਂ ਉਹ ਬੁਲਾਉਂਦਾ ਤਾਂ ਬੋਲਦਾ ਮਜ਼ਦੂਰੀ ਬਣਾਦਾ ਬੋਲ ਨਹੀਂ ਸਕਦਾ ਮਜ਼ਦੂਰੀ ਤਾਂ ਦਰਗਾਹੋਂ ਮਿਲਦੀ ਹੈ ਇੱਥੇ ਕੌਣ ਰੋਕ ਦੂ ਇਹਨੂੰ ਮਜ਼ਦੂਰੀ ਤੋਂ ਇੱਥੇ ਤਾਂ ਰੋਕਣ ਵਾਲੇ ਹੁੰਦੇ ਨਹੀਂ ਸਮਾ ਇਹਨੂੰ ਰੋਕਣ ਵਾਲੇ ਤਾਂ ਹੁੰਦੇ ਨੇ ਉਹਰੇ ਵੀ ਬੋਲਣੇ ਦੇਣਾ ਸੀ ਮਜ਼ਦੂਰੀ ਤਾਂ ਨਾਲ ਨਹੀਂ ਇੱਥੇ ਕੋਈ ਹੁੰਦਾ ਆਪਰ ਛੱਡ ਜਾਂਦੇ ਉਹਨੇ ਦੇਵਤੇ ਅਜੇ ਸਮਝਦਾ ਤਾਂ ਨਾ ਬਤਾਈ ਦੀ ਪਰ ਇਹਨਾਂ ਦੇ ਨਾਮ ਤਨ ਅਸੀਂ ਕੀ ਕਰੀਏ ਇਹ ਤਾਂ ਦੋ ਇੱਕੋ ਜਿਹੇ ਨੁਕਸਾਨ ਜੋ ਹੋ ਰਿਹਾ ਸੱਚ ਨੂੰ ਬਟਾ ਲੱਗ ਰਿਹਾ ਸੱਚ ਜਿਹੜਾ ਇੱਕ ਬੋਲੀ ਜਾਂਦਾ ਤੂੰ ਜਵਾਬ ਨਹੀਂ ਦੇ ਰਿਹਾ ਤਾਨੂੰ ਇਹਦਾ ਝੋੜ ਵੀ ਸੱਚ ਪੜ ਜੂਗਾ ਲੋ ਪਬਲਿਕ ਤੇ ਜੋ ਅਸਰ ਹੋ ਰਿਹਾ ਉਹ ਟਾਈਮ ਲੇ ਦਿੱਤਾ ਨਾ ਤਦ ਉਸਾਰਾ ਤਦ ਉਸ ਨਾਲ ਇਹਨਾਂ ਨੇ ਬਣਾ ਲਿਆ ਸੁਖਸਾਨਾਂ ਨਾਲ ਪਹਿਲਾਂ ਦੀ ਛੇੜੀ ਲੜਾਈ ਇਹਨਾਂ ਕੋਲ ਕੋ ਜਵਾਬ ਹੈ ਨਹੀਂ ਸੀ ਦੇਣ ਨੂੰ ਪਤਾ ਸੀ ਆਪਾਂ टैम ਕਰਕੇ ਜੋਗ ਟਾਈਮ ਤੇ ਠੀਕ ਟਾਈਮ ਤੇ ਹੀ ਛੇੜਾ ਛੇੜਿਆ ਸੀ ਠੀਕ ਹੈ ਟਾਈਮ ਸੀ ਇਹ ਤੋਂ ਪਹਿਲਾਂ ਬੋਲ ਨਿਵਾਹਣੀ ਤੇਜ ਅਤੁੱਲੰ ਤੇਜ ਅਤੁੱਲੰ ਤੇਜ ਕਰ ਲੈ ਗਿਆਨ ਕਰਨਾ ਗਿਆਨ ਨੂੰ ਨਾਪ ਸਕਦਾ ਨਾਪ ਤੋਂ ਤਾਂ ਪਰਿਆ ਗਿਆਨ ਇਹ ਕਿਹਨੂੰ ਲੇ ਕੋ ਨਾਪ ਸਕਦਾ ਨ ਆਪਣਾ ਵਾਲਾ ਹੈਗਾ ਹੁਣ ਆ ਜਵੇ ਨਾਪ ਲਵੇ ਗੁਰਬਾਣੀ ਦੱਸ ਦੋਵੇ ਨਾਪ ਕੇ ਓਹੋ ਆ ਪਈ ਹੈ ਨੂੰ ਨਾਪ ਕੇ ਦੱਸ ਦੋਵੇ ਵੀ ਕੀ ਹੈ ਕਿੰਨਾ ਗਿਆਨ ਹੈ ਇਹ ਤੋਂ ਹੈ ਤੋ ਲੈ ਰਹਿੰਦਾ ਜੈ ਜੈ ਹੋਸੀ ਮਖਾਸੁਰ ਮਰਦਨ ਊਮ ਆਕਾਸ਼ ਹੋਸੀ ਮਖਾਸੁਰ ਮਰਦਨ ਐਸ ਕਰਕੇ ਵੀ ਤੇਰੀ ਜੈ ਜੈਕਾਰ ਹੋ ਰਹੀ ਹੈ ਊਮ ਆਕਾਸ਼ ਪਤਾਲ ਪਤਾਲ ਜਲੰ ਔਰ ਜਲ ਦੇ ਵਿੱਚ ਹਰ ਜਗ੍ਹਾ ਤੂੰ ਮੌਜੂਦ ਹੈ ਤੇਰੇ ਕਾਰਨ ਜਲ ਜਲ ਹੈ ਇਸ ਵਕਤ ਜਦੋਂ ਟਾਇਰ ਰਸੀ ਕਿਤਨੀ ਨਾ ਹੋਰ ਕੁਝ ਬਣ ਜਾਣਾ ਪੋਵ ਜਨਜਰ ਤੇਰਾ ਹੁਕਮ ਆ ਨਾ ਤੇਰੀ ਮਰਜ਼ੀ ਆ ਉਹਨਾਂ ਜਰ ਪੋਵ ਪੋਵ ਜਾਂ ਤਾਂ ਢੋਰ ਖਿੱਚ ਲਈ ਇਹਦਾ ਕੁਝ ਹੋਰ ਇਹ ਬੜੀ ਜੁੜ ਅਕਾਸ਼ ਤੂੰ ਤੇਰੀ ਮਰਜ਼ੀ ਹੈਗਾ ਇਹ ਰਹਿਣਾ ਇਹਦੀ ਅਕਾਸ਼ ਇਹਦੀ ਰਹਿਣ ਜ਼ਾਰੇ ਤੇਰੇ ਬੱਚੇ ਮਿਲ ਜਾਣ ਤੇ ਤੇਰੀ ਮਰਜ਼ੀ ਨਾਲ ਇਹ ਸਭ ਕੁਝ ਹੁਕਮ ਤੇ ਮਰਜ਼ੀ ਨਾਲ ਇਹ ਸਭ ਕੁਝ ਹੁਕਮ ਨੇ ਪੈਦਾ ਕੀਤਾ ਹੁਕਮ ਜੇ ਲਈ ਰੋ ਜਾਂਦਾ ਇਹ ਤਾਂ ਤੇਰੀ ਮਰਜ਼ੀ ਨਾਲ ਹੈ ਸਭ ਕੁਝ ਦੀਦਾ ਸਭ ਕੋ ਜੋ ਹੈ ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਧਕਾਰਨ ਧਰਪ ਮਥੇ ਚਾਚਰ ਧਰਪ ਮਥੇ ਆਪਣੀ ਤਲਵਾਰ ਨੂੰ ਚਮਕਾਉਂਦੀ ਹੈ ਜੰਦ ਦੇ ਵਿੱਚ ਬੁੱਧੀ ਦਾ ਪ੍ਰਦਰਸ਼ਨ ਕਰਦੀ ਹੈ ਜੰਦ ਦੇ ਵਿੱਚ ਚਾਚਰ ਚਮਕਾਰਨ ਚਾਚਰ ਬੁੱਧੀ ਹੁੰਦੀ ਹੈ ਚਰਚਾ ਕਰਨ ਵਾਲੀ ਜਿਹੜੀ ਚੀਜ਼ ਹੈ ਉਹ ਚਾਚਰ ਕਹਿੰਦੇ ਚਰਚਾ ਕਹਿੰਦੇ ਨਾਲ ਕਰਦੀ ਹੈ ਜੀਬ ਅਕਲ ਨਾਲ ਅਕਲ ਦੇ ਪ੍ਰਦਰਸ਼ਨ ਕਰਦੇ ਆ ਤੂੰ ਜਲਦੀ ਚਮਕ ਹੁੰਦੀ ਆ ਤਾਂ ਅਕਲ ਚਮਕਦੀ ਐ ਅਕਲ ਦੀ ਚਮਕ ਜਿਹੜੀ ਹੈ ਨਾ ਅਕਲ ਦੀ ਰੋਸ਼ਨੀ ਜਿਹੜੀ ਹੈ ਪ੍ਰਗਟ ਹੁੰਦੀ ਐ ਤੇਰੀ ਚਮਕਾਂ ਜਮਕਦੀ ਐ ਚਿਚੁਰ ਹਾਰਨ ਅਜਿਹੇ ਚਿਚਰ ਐ ਵੱਡੇ ਵੱਡੇ ਨੇ ਸਮਝਦੇ ਨਹੀਂ ਆਪ ਤੋਂ ਫਟਾ ਕੇ ਸਾਨੂੰ ਆਪਣੇ ਉਹ ਫਿਰ ਉਹਨਾਂ ਨੂੰ ਹਾਰ ਦੇ ਅੰਦਰ ਤੂੰ ਤੂੰ ਨਾ ਪਿਆ ਹੋਇਆ ਜਿਵੇਂ ਤੂੰ ਆ ਨੂੰ ਤੂੰ ਆਉਂਦਾ ਤੂੰ ਆ ਕਰਮ ਦੇ ਸੁੱਦੀ ਏ ਉਹਨੂੰ ਤੀਲੀ ਦਿਖਾਦੀ ਆਪੇ ਜਲ ਜਾਂਦਾ ਤੀਲੀ ਜਾਣ ਕੇ ਤੂੰ ਹਿਸੜਦਾ ਆਪੇ ਜਲ ਜਾਂਦਾ ਸਾਰੇ ਭਾਈ ਨਾਲ ਪਰਪਤਾਏ ਜਾਣਾ ਥੋੜੀ ਜੀ ਤੀਲੀ ਸੜਣੀ ਵਿੱਚ ਜਿਹੜੀ ਬ੍ਰਹਮਿਆ ਅਗਿਆਨ ਦੀ ਪ੍ਰਚੰਡਤਾ ਹੈ ਨਾ ਉੱਥੇ ਜਦੋਂ ਕਬੀਰ ਕਹਿੰਦਾ ਵੀ ਅਗ ਕਿੱਥੋਂ ਲੈ ਆਂਦੀ ਸੁਪਾਰਕ ਲੈ ਕੇ ਆਦੋ ਤੇ ਟੋਪ ਚਲਾਈ ਹੈ ਨਾ ਜਾਂ ਗੋੜਾ ਗਿਆਨ ਚਲਾਇਆ ਕਹਿੰਦਾ ਬ੍ਰਹਮ ਅਗਨ ਸਹਜੇ ਪਰ ਇੱਕੋ ਚੋੜ ਸਜਾਇਆ ਬ੍ਰਹਮਗਨ ਲਾਇਆ ਤੂੰ ਜਲ ਗਿਆ ਤੂੰ ਇਹ ਗਿਆ ਉਹ ਨੇਰਾ ਹੀ ਜਨਮ ਵਿੱਚ ਬਦਲ ਗਿਆ ਯਤੋਂਾ ਜਲਦਾ ਹੈ ਡਾਕੂਮੈਂਟ ਦੇ ਦਿੰਦੇ ਨੂੰ ਸਗੋਂ ਧੂਆ ਹੀ ਚਾਨਣ ਪੈਦਾ ਕਰ ਦਿੰਦੇ ਕੈਸ ਦਾ ਧੂਆ ਹੁੰਦਾ ਕਿਸੇ ਸਟੋਬ ਦਾ ਧੂਆ ਹੁੰਦਾ ਥਿੱਲੀ ਦਿਖਾ ਦੋ ਫੜਕ ਜਲ ਜਾਂਦਾ ਰੋਸ਼ਨੀ ਪੈਦਾ ਕਰ ਦਿੰਦਾ ਇਹਨਾਂ ਦਾ ਜਿੰਨਾ ਧੂਆ ਪੈਦਾ ਕੀਤਾ ਹੋਇਆ ਸਾਰਾ ਰੋਸ਼ਨੀ 'ਚ ਬਦਲ ਦਿੰਦਾ ਬਦਲਿਆ ਜਾਂਦਾ ਫਟਾਫਟ ਜਿਹੜਾ ਜਿਹੜਾ ਸੁਣੀ ਜਾਂਦਾ ਫੜ ਜਾਂਦਾ ਸਭ ਦਾ ਇਹਾਂ ਦੀ ਬੋਲਤੀ ਬੰਦ ਹੋ ਜਾਣੀ ਤੇ ਧੂਆ ਬੰਦ ਹੋ ਜਾਣਾ ਹੋਰ ਆਉਣ ਤੇ ਜਿਹੜਾ ਛੱਡਿਆ ਹੋਇਆ ਜਲ ਜਾਣੇ ਬਾਕੀ ਤੇ ਪਾਣੀ ਪੈ ਜਾਣੇ ਵੀ ਪੈ ਜਾਣੇ ਬਾਕੀ ਤੇ ਵੀ ਨਾ ਉਹ ਉਹ ਨਿਕਲਣਾ ਜਾਂ ਹੋ ਜਾਂਦਾ ਫਿਰ ਨਿਕਲਦਾ ਇਹਨਾਂ ਦੇ ਧੋਨੇ ਬੁਝ ਜਾਣੇ ਨੇ ਜੇ ਮੈਂ ਨਾਲ ਕੋਲ ਤੇ ਬੁਝ ਗਿਆ ਤਾਂ ਪੈ ਗਿਆ ਸਾਰੇ ਜੋਗੀਆਂ ਦੇ ਉਹ ਧੋਲੇ ਨਹੀਂ ਜਿਹੜੇ ਮਾਰਦੇ ਨੇ ਵਕਲ ਉਹ ਬੁਝ ਗਿਆ ਸੀ ਸਭ ਕੁਝ ਗੱਲਾਂ ਹੀ ਮਾਰ ਤੇ ਬੰਦ ਹੋ ਗਏ ਤੇ ਇਹਨੇ ਫੁਕਾਰੇ ਮਾਰ ਦੇਦੇ ਨੇ ਉੱਥੇ ਨਾਨਪੋਲ ਤੇ ਬੈਠੇ ਜੇ ਕੋ ਨਾਨਕ ਦੀਆਂ ਸੁਣੀਆਂ ਗੱਲਾਂ ਉਹ ਫੁਕਾਰੇ ਬੰਦ ਹੋ ਗਏ ਤੂੰ ਇਹ ਬੁਝ ਗਏ ਹੋਰ ਕੀ ਹੁੰਦਾ ਜੀ ਦਰਪ ਮਥੇ ਜੰਡਾ ਕਰ ਨਹੀਂ ਹੁੰਦੇ ਇਹਨਾਂ ਦੇ ਹੁੰਦੇ ਕੀ ਹੋਣਾ ਹੋਰ ਕੀ ਜਿਹੜਾ ਇਹਨਾਂ ਦੇ دہشت ਪਾਈ ਹੋਈ ਨਾ دہشت دہشت ਪਾਉਂਦੇ ਨੇ ਇਹ ਆਪਣੇ ਗਿਆਨ ਦੀ ਵੀ ਇਹ ਰਾਜੀ ਹੈ ਉਹ ਤਾਜੀ ਹੈ ਇਹ ਤਾਂ ਗੁਰੂ ਦੇ ਖਿਲਾਫ ਹੈ ਤਾਂ ਗੁਰੂ ਤਾਂ ਐ ਕਰਨ ਲੱਗੇ ਰਹੇ دہشت ਸਾਡੇ ਗੁਰੂ ਨੂੰ ਇਹ ਜ ਆਪਣਾ ਲੱਗੇ ਨੇ ਤੂੰ ਗੁਰੂ ਵਾਲਾ ਕਾਤੇ ਹੋ ਗਿਆ ਉਹਦਾ ਦੇਖ ਲੈ ਸੀਸੇ ਤਾਂ ਆਪਣਾ ਕਹਿ ਜਾ ਉਗਰੂ ਨਾਲ ਤੇਰੀ ਸ਼ਕਲ ਮਿਲਦੀ ਆ ਜੇ ਸ਼ਕਲ ਨਾ ਮਿਲੇ ਤਾਂ ਪਹਿਲਾਂ ਕਹਿੰਦਾ ਕਿਹਦਾ ਮੁੰਡਾ ਸ਼ਕਲ ਤੇ ਦੇਖ ਲੈਂਦਾ ਫਲਾਣੇ ਦਾ ਹੈ ਜੇ ਮੜਗਾ ਹੀ ਨਾ ਵੜੇ ਕਿ ਮੰਨ ਲੂ ਕੋਈ ਕਿਵੇਂ ਮੰਨੂ ਕੌਣ ਮੰਨੂਗਾ ਪੁਲਿਸ ਪੁਲਿਸ ਦਾ ਆਦਮੀ ਆ ਵਰਦੀ ਦੇ ਪਛਾਣਿਆ ਜਾਊਗਾ ਪੁਲਿਸ ਕਈ ਸੁਪਿਆਂ ਦੀ ਇਕੱਠੀ ਹੈ ਵਰਦੀ ਆ ਡਾ ਡਾ ਆਪਣੇ ਆਪਣੀ ਵਰਦੀ ਦੇ ਪਛਾਣਿਆ ਜਾਊਗਾ ਪੰਜਾਬ ਪੁਲਿਸ ਦਾ ਬੰਦਾ ਆ ਵੀ ਹਰਿਆਣਾ ਪੁਲਿਸ ਦਾ ਬੰਦਾ ਆ ਜੇ ਦਿੱਲੀ ਪੁਲਿਸ ਦਾ ਬੰਦਾ ਆ ਯੂਪੀ ਪੁਲਿਸ ਦਾ ਬੰਦਾ ਤੈਨੂੰ ਕੌਣ ਪਿਛਾੜੂਗਾ ਤੇਰਾ ਤਾਂ ਨਾ ਦੋ ਦੋ ਦਾ ਨੀ ਆ ਨਾ ਅੰਗਰੇਜ਼ ਨੇ ਲੱਤਾ ਤਾਂ ਥੱਲੇ ਥੱਲੇ ਰੇਜ ਬਣ ਗਿਆ ਪੈਟ ਪਾਲੇ ਬੂਟ ਪਾਲੇ ਉੱਤੋਂ ਉੱਤੋਂ ਉਹ ਵਿਚਾਰ ਲੈ ਸਾ ਵੀ ਹਿੰਦੁਸਤਾਨ ਦਾ ਹੈ ਦੀ ਇਹ ਤਾਂ ਪੁਰਾਣਾ ਉਸ ਵੇਲੇ ਇੱਕ ਕੈਕ ਮੀਜ ਵੀ ਉਦੋਂ ਦਾ ਸਾਬਾ ਬਰਾਨੀ ਕਿਹਦਾ ਲਿਆਂਦਾ ਕਰਦੋ ਇਹ ਬਣਿਆ ਇਹਦਾ ਤਾਂ ਪਤਾ ਹੀ ਕੁਝ ਨਹੀਂ ਹੈ ਸ਼ਕਲ ਦਾ ਕਰਦੋ ਆਈ ਹੈ ਇਹ ਜਿਹੜਾ ਤੇਸ ਹੈ ਇਹਦਾ ਤਾਂ ਕੋਈ ਬਣ ਗਿਆ ਪਤਾ ਹੀ ਨਹੀਂ ਹੈ ਕਿਹਦਾ ਹੈ ਗੁਰੂ ਵਾਲਿਆਂ ਦਾ ਜਿਹੜਾ ਮੋਰ ਹੋਰੇ ਹੁੰਦਾ ਇਹਨਾਂ ਨੂੰ ਪਤਾ ਹੋਵੇ ਦੱਸਣ ਕੀ ਦੇ ਗੁਰੂ ਕੌਣ ਆ ਤੁਹਾਡਾ ਤੁਹਾਡਾ ਗੁਰੂ ਨਾਲ ਕਿਸਬਤ ਹੈ ਤੁਸੀਂ ਗੁਰਵਾਲੇ ਕਿਵੇਂ ਹੋ ਕੀ ਸਬੂਦਾ ਤੁਹਾਡੇ ਕੋ ਗੁਰਵਾਲੇ ਤੁਸੀਂ ਕਹੇ ਤੇ ਨਹੀਂ ਇਹ ਤਾਂ ਹੋ ਸਕਦਾ ਗੁਰਵਾਲਾ ਰਾਜੇ ਦਾ ਤਾਂ ਹਰੇ ਮੁੰਡਾ ਬਣ ਜਾਊਗਾ ਕੋਈ ਰਾਜਾ ਭਾਈ ਜੀ ਨੂੰ ਰਾਜਵਾਲ ਦਾ ਤਾਂ ਹਰੇ ਮੈਂ ਵੀ ਰਹਿ ਗਿਆ ਮੈਂ ਵੀ ਰਹਿ ਗਿਆ ਕਿ ਕੋਸਤਾ ਕਰੂਗਾ ਅਜੇ ਕੋ ਜੈਨਾਲ ਮਹਤਉਂਦੀ ਹੈ ਅਦਿਨੇ ਆ ਕੇ ਉਹਨੂੰ ਬੜ ਦਿੰਦੇ ਇਸਾ ਨੂੰ ਉਹ ਕਹ ਲੂਣਾਂ ਬਰਾਬਰ ਖੜਾ ਹੋ ਬੋੜ ਦਊ ਥੋੜੇ ਪਰਜਾਣ ਦੀ ਬਾਣ ਦੇ ਦੇ ਘਰ ਤੇਰੇ ਕੋ ਕਿਸਬੂਤ ਤੂੰ ਸੇਖਾਂ ਸਬੂਤ ਪੇਸ਼ ਕਰ ਸਬੂਤ ਪੇਸ਼ ਕਰੋ ਅਸੀਂ ਸੇਖਾਂ ਸਿੱਖੀ ਦਾ ਸਬੂਤ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਹੋਰ ਸਿੱਖ ਮਤਸਬ ਬੁੱਧ ਤੇ ਤੁਹਾਡੀ ਬੁੰਦਰ ਸ਼ਾਬਾ ਤੇਰੇ ਪਰਮੇਸ਼ਰ ਦੀ ਬੁੱਧ ਹੈ ਸਿੱਖੀ ਜੇ ਹੈਗੀ ਕਿਸੇ ਕੋ ਦਿਹਾਉ ਘਤੇ ਇਤਨਾਂ ਦੇ ਵਿੱਚ ਵਾਲੀ ਇਹ ਸ਼ਬਦ ਸਿੱਖ ਮਤ ਸਭ ਬੁੱਧ ਤੇ ਮਾਰੀ ਇਹ ਪਰਮੇਸ਼ਰ ਦੀ ਬੁੱਧ ਹੈ ਜਿਹੜੂ ਸਮਝ ਲਈ ਉਹ ਸਖਰ ਬਰਨਾ ਹੈ ਇਹਦੇ ਸੇ ਕੋਈ ਵੀ ਬਾਤ ਕੋਈ ਪਰਮੇਸ਼ਰ ਹੈ ਅਸੀਂ ਸਿੱਖ ਉਹ ਕਹਾ ਗੱਲ ਕਰੇ ਦਸ ਗ੍ਰੰਥ ਦੀਆਂ ਹੋਰ ਕਿਸੇ ਗ੍ਰੰਥ ਦੀ ਇਹ ਕੋਈ ਬੁੱਧੀ ਹੈਗੀ ਪਹਿਲਾਂ ਦਿਖਾਵੇ ਤੇਰੇ ਕੋਲ ਹੈ ਸਾਡੀ ਬੜ ਹੈ ਤੇਰੇ ਕੋਲ ਫੇਰ ਗੱਲ ਕਰੇਗਾ ਸਾਡੇ ਵਾਲੀ ਦੇਖ ਲੋ ਆਪਣਿਆਂ ਨੂੰ ਦਿਖਾ ਦੋ ਸਾਵਤ ਕਰੋ ਜੱਜ ਲਿਆ ਕੇ ਸੁਪਰੀਮ ਕੋਰਟ ਚਲਦੇ ਆਪਾਂ ਭਾਈ ਝਗੜਿਆਂ ਦੇ ਫੈਸਲੇ ਕੌਣ ਕਰੂਗੀ ਸੁਪਰੀਮ ਕੋਰਟ ਤਾਂ ਹੀ ਮੈਂ ਕਹਿੰਦੀ ਸੁਪਰੀਮ ਕੋਰਟ ਤੇ ਜੱਜ ਹੋਣੇ ਚਾਹੀਦੇ ਨੇ ਸਾਨੂੰ ਫੈਸਲਾ ਕਰ ਦੋ ਤੇ ਸਾਨੂੰ ਕੌਣ ਖੁਦ ਸਾਨੂੰ ਕੌਣ ਖਾੜੂ ਦੋ ਸੱਦਕੇ ਫੈਸਲਾ ਕਰ ਲੋ ਉਹਨੂੰ ਕੀ ਪਤਾ ਸਿੱਖੀ ਕੀ ਹੈ ਜਿਹੜੇ ਬੰਦੇ ਨੂੰ ਗਿਆਨ ਹੈ ਨਹੀਂ ਉਹ ਕਹਿੰ ਕਹਿ ਸਕਦਾ ਮੈਂ ਵਿਦਵਾਨ ਸੱਦੂ ਲਬਦਵਨ ਲੋਗਾਂ ਨੇ ਤੇ ਲੋਗਾਂ ਫੈਸਲਾ ਕਰੂਗਾ ਫੈਸਲਾ ਨਹੀਂ ਹੁੰਦੇ ਹੁੰਦੇ ਤਾਂ ਹੀ ਨਹੀਂ ਹੁੰਦੇ ਤੁਹਾਡੇ ਸੁਪਰੀਮ ਕੋਰਟ ਕਰੂਗੀ ਫੈਸਲਾ ਸਿੱਖੀ ਕੀ ਹੈ ਸੁਪਰੀਮ ਕੋਰਟ ਹੈਗੀ ਆ ਅਜ ਅਜ ਸਿਆਣੇ ਨੇ ਹੋ ਉੱਥੇ ਤੂੰ ਲੈ ਜਾਂਦੇ ਅਸੀਂ ਲੈ ਜਾਾਂਗੇ ਉੱਥੇ ਸੁਪਰੀਮ ਕੋਰਟ ਚ ਸੁਪਰੀਮ ਕੋਰਟ ਫੈਸਲਾ ਕਰੇਗੀ ਆਹ ਹੁਣ ਉਹ ਕੁੜੀ ਦਾ ਫੈਸਲਾ ਹਾਈ ਕੋਰਟ ਨੇ ਕੀਤਾ ਨਹੀਂ ਹੈ ਜਿਹੜਾ ਸੇਕਾ ਹੈ ਸੈਟਾਲੀ ਦਾ ਫੈਸਲਾ ਗਿਆ ਨਹੀਂ ਹਾਈ ਕੋਰਟ ਚ ਸਿੱਖੀ ਦਾ ਫੈਸਲਾ ਵੀ ਜਾ ਸਕਦਾ ਹੈ ਸੁਪਰੀਮ ਕੋਰਟ ਚ ਹਾਈ ਕੋਰਟ ਚ ਸਿੱਖੀ ਕੀ ਹੈ ਆਪਰੇ ਨੂੰ ਸਿੱਖ ਕੌਣ ਕਹਾਵੇ ਕੌਣ ਨਾ ਕਹਾਵੇ ਕੱਲੂ ਇਹਦਾ ਸਿੱਖੇ ਬਦਲ ਜਾਣਗੇ ਸਾਰੀ ਸਾਡੀ ਸਾਰੀ ਸਿੱਖੇ ਬਦਲ ਦੇਣਗੇ ਤੂੰ ਇਹਦੀ ਰੱਖਿਆ ਕਰਨ ਕਰੂ ਇਹਦੀ ਰੱਖਿਆ ਵੀ ਸਰਕਾਰ ਕਰੂਗੀ ਜੇ ਵਿਚਾਰ ਤਾਂ ਥੋੜੀ ਬਦਲ ਜੜੀ ਹੋਵੇ ਸਰ ਨੂੰ ਕੁਝ ਵੀ ਹੋਰ ਨਹੀਂ ਬਚਾਇਆ ਜਾਏ ਬਚਾਰ ਤਾਂ ਨਹੀਂ ਬਦਲੀ ਜਾ ਸਕਦੀ ਜਿਹੜਾ ਰਾਤ ਖਰਾਬ ਹੋ ਗਏ ਫਿਰ ਕੌਣ ਦਖਲ ਦੇ ਸਰਕਾਰੇ ਦੂਰ ਏਦਾਂ ਕੋਈ ਕਰੂਗਾ ਵੀ ਇਹ ਜੋ ਕੱਢ ਦੋ ਬਾਣੀ ਕੱਢ ਦੋ ਖੂਨ ਖਰਾਬਾ ਹੋ ਜਾਊਗਾ ਫੇੜੀ ਕਹਦੇ ਨਾ ਬਰਦਾਸ਼ਤ ਕਰ ਲਈਏ ਗੱਲ ਜਿਸ ਦੀ ਵਰਜੀ ਨਹੀਂ ਤੇ ਜਲਦੀ ਗੁਰੂ ਦੀ ਵਰਜੀ ਹੈ ਕੋਈ ਨਹੀਂ ਦਖਲ ਦੇ ਸਕਦਾ ਇਤਹਾਸ ਦੇ ਵਿੱਚ ਤੁਸੀਂ ਜੋ ਵਰਜੀ ਕਰਦੇ ਰਹੋ ਗੁਰਬਾਣੀ ਜਿੱਨੇ ਕੋਈ ਕਰ ਸਕਦਾ ਕੁਝ ਇਤਾਰ ਰੁੱਤ ਪਿਤਾ ਮਾਤਾ ਨਾਲ ਕੋਈ ਸੰਬੰਧ ਨਹੀਂ ਇਹਦਾ ਜੋ ਵਰਜੀ ਕਰਦੇ ਰਹੇ ਗੁਰਬਾਣੀ ਜਿੱਨੇ ਕੋਈ ਦਖਲ ਦੇ ਸਕਦਾ ਨਾ ਆਜ ਕੇ ਨਾ ਦੱਸੂਗਾ ਇਹ ਦਖਲ ਦੇਊਗਾ ਪਹਿਲਾਂ ਦਿਖਾਊਗਾ ਤੇਰੇ ਕੋ ਸਾਡੀ ਬੜਕੀ ਹੈ ਕਿ ਜਹਾੜ ਤੇ ਤੂੰ ਕਹਿੰਦੇ ਤੈਨੂੰ ਗੁਰਮਤਿ ਸਮਝ ਵੀ ਹੈ ਬੇਸਮਝੀ ਨਾ ਕਿਸੇ ਨੇ ਕਹਿਦਾ ਦਖਲੀ ਬਣ ਲੋ ਦਾੜੀ ਪ੍ਰਦੰਤੇ ਜੋਗ ਜੇਨਤੇ ਮਨੁਜ ਮਦਨ ਜੁੜੇ ਹੋਏ ਵਿਚ ਜਗ੍ਹਾ ਨਹੀਂ ਹੁੰਦੀ ਆ ਇਹਨੇ ਜੜੇ ਸਾਰੇ ਚਮਕਦੇ ਜੋਗ ਜੀਅੰਤ ਜੋਗ ਜੀਅੰਤ ਜੋ ਕੀ ਹੈ ਸਰੀਰ ਦੀ ਗੱਲ ਨਹੀਂ ਹੈ ਸਰੀਰ ਤੇ ਦੀ ਇਹ ਗੋਲ ਦੇ ਇਹ ਗੋਣਾ ਦੀ ਗੱਲ ਹੈ ਸਰੀਰ ਨਾਲ ਤਾਂ ਬੰਦੇ ਕੋਈ ਨਹੀਂ ਸਰੀਰ ਦੇ ਨਾਲ ਜੜਾ ਨਹੀਂ ਹੁੰਦੀ ਸਰੀਰਿਆਂ ਨਾਲ ਜੜਾ ਦੀ ਗੱਲ ਨਹੀਂ ਇਹ ਹੁਕਮ ਦੀ ਗੱਲ ਹੈ ਮਹਾਂ ਦਾੜ ਦਾੜਨ ਸੁਸੋਭ ਕੋ ਪਾਰਮ ਜਨ ਚਰਮਗ ਜੀਵ ਜਗ ਮੇ ਹਜ਼ਾਰ ਉਹਦੀ ਗੱਲ ਆ ਤੇ ਨਾਲ ਹੀ ਪ੍ਰਦੰਤੇ ਯੋਗ ਰਿਅੰਤੇ ਪ੍ਰਦੰਤੇ ਆ ਮਨੁਜ ਮਥੰਤੇ ਮਨੁਜ ਜਿਹੜੇ ਹੈ ਹੈਗੇ ਨਾ ਸਮਝੋ ਹੰਕਾਰੀ ਇਹ ਗੱਲੋ ਵਿਰੋਧੀ ਪਰਮਦੇ ਵਿਰੋਧੀ ਸੱਚ ਦੇ ਵਿਰੋਧੀ ਦੇ ਜਿਹੜੇ ਗੂੜ ਕਥੇ ਅਨਕ ਉਹ ਬਨੂਦਾ ਮਦਰਾ ਖੰਦੇ ਵਿੱਚ ਮਨਮੁਖ ਹੈ ਗੁਰੂਦਾਸ ਮਾਨੈ ਨਾ ਮਨੁਜ ਮਥਨ ਤੇ ਜਿਹੜੇ ਮਨਮੁਖ ਨੇ ਆਪਣੇ ਭਾਂ ਚੱਲਣ ਵਾਲੇ ਗੂੜ ਕਥੇ ਉਹਨਾਂ ਦਾ ਉਹਨਾਂ ਨੂੰ ਬਦ ਦਿੱਤੀ ਤੂੰ ਗੂੜ ਕਥ ਹੈ ਕਥਾ ਕਥਾ ਹੈ ਹਰ ਕਥਾ ਗੂੜ ਕਥ ਹੈ ਗੁਰਬਾਣੀ ਕਥਾ ਹੀ ਹੈ ਕਹੇ ਸਭ ਤੋਂ ਉੱਤਮ ਹਰ ਕੀ ਕਥਾ ਇਹ ਗੂੜ ਕਥੇ ਹੈ ਇਹ ਕਥਾ ਨੂੰ ਸਮਝਣਾ ਮਨੁੱਖੀ ਬੁੱਧੀ ਦੀ ਬੁੱਧੀ ਤੋਂ ਪਰੇ ਹੈ ਇਹ ਕਥਾ ਨੂੰ ਇਹ ਕਥਾ ਸਮਝਣ ਵਾਲੀ ਕੀ ਬੁੱਝਣ ਵਾਲੀ ਹੈ ਕਥਾ ਸਮਝਣ ਵਾਲੀ ਤਾਂ ਹੈ ਹੋਰੀ ਬੁੱਝਣ ਵਾਲੀ ਹੈ ਕਰਮ ਪ੍ਰਨਾਸ਼ਣੀ ਚੰਦ ਪ੍ਰਕਾਸ਼ਣੀ ਸੂਰਜ ਪ੍ਰਦੇਸ਼ਣੀ ਪ੍ਰਤੇਜਣੀ ਅਸ਼ਟਭੁਜੇ ਹਾਂ ਚੰਦ ਕਰਮ ਬਰਨਾਸ਼ਨੀ ਕਰਮ ਪਰਨਾਸ਼ਨੀ ਜਿਹੜੇ ਕਰਮ ਨੇ ਜਿਹੜੇ ਕਰਮਾਂ ਨੂੰ ਮੰਨਦੇ ਨੇ ਉਹਨਾਂ ਦਾ ਨਾਸ ਕਰ ਦਿੰਦੀ ਐ ਕਾਹ ਕੋਣ ਤੇਰੇ ਸਤਿਗੁਰਾ ਜੇ ਕਰਮ ਨੋ ਨਾਸ ਕੋਣ ਕਹ ਰਿਹਾ ਸਧਨਾ ਜੀ ਰਿਹਾ ਸਧਨਾ ਨੇ ਕੰਮ ਨਹੀਂ ਛੜਿਆ ਆਪਣਾ ਉਹ ਕਹਿਣਾ ਉਹਨ ਭਰੇ ਜੇ ਇੰਨਾ ਗਿਆਨ ਹੈ ਕਰਮ ਦਾ ਫਿਰ ਅਸਰੇ ਨਹੀਂ ਹੁੰਦਾ ਮੈਂ ਕਰਦਾ ਹੀ ਨਹੀਂ ਕੁਛ ਕਾਹ ਕੋਣ ਤੇਰੇ ਸਤਿਗੁਰਾ ਜੇ ਕਰਮ ਨਾਸ ਕਰਮ ਨੂੰ ਨਾਸ ਕਰ ਦੇਣ ਵਾਲੀ ਕਰਮ ਛੱਡਣ ਦੀ ਲੋੜ ਨਹੀਂ ਹੈ ਕਰਮ ਹੁੰਦਾ ਹੀ ਕਰਮ ਦਾ ਅਸਰ ਹੀ ਨਹੀਂ ਹੁੰਦਾ ਜੇ ਮੈਂ ਕੁਝ ਕਰਤਾ ਹੀ ਨਹੀਂ ਕਰਮ ਪ੍ਰਕਾਸ਼ਨੀ ਇੱਕ ਕਰਮ ਦਾ ਪ੍ਰਕਾਸ਼ करती है, ਇੱਕ ਕਰਮ ਦਾ ਨਾਸ ਕਰਦੀ ਹੈ ਜਿਹੜਾ ਦਾ ਕਰਮ ਮੰਨਿਆ ਹੈ ਪੜਤ ਨੇ ਉਹਦਾ ਤਾਂ ਕਰਦੀ ਹੈ ਨਾਸ ਕਰਮ ਪ੍ਰਨਾਸ਼ਨੀ ਚੰਦ ਚੰਦ ਜਿਹੜੇ ਮਨ ਸੁਣਦੇ ਨੇ ਮਨ ਬੁੱਧੀ ਤੂੰ ਗਿਆਨ ਪੈਦਾ ਕਰਦੀ ਹੈ ਮਨ ਬੁੱਧੀ ਚ ਰੋਸ਼ਨੀ ਪੈਦਾ ਕਰਦੀ ਹੈ ਪ੍ਰਕਾਸ਼ ਸੂਰਜ ਪ੍ਰਤੇਜਣੀ ਸੂਰਜ ਪ੍ਰਤੇਜਣੀ ਜਿਹੜੇ ਚਿੱਤ ਹੈ ਚਿੱਤ ਦੇ ਵਿੱਚ ਤੇਜ ਪੈਦਾ ਹੁੰਦਾ ਪਰ ਜਿਹੜੀ ਹੈ ਦੇਖੋ ਗਿਆਨ ਬੁੱਧੀ ਦਾ ਪ੍ਰਚੰਡਤਾ ਚਿੱਤ ਦੀ ਦੇਖਣੂ ਅੱਖ ਦੇ ਦੇਖਣੂ ਜਿਹੜੀ ਚੀਜ਼ ਹੈ ਉਹ ਗਿਆਨ ਹੁੰਦੀ ਹੈ ਮਹਿਸੂਸ ਕਰਨ ਵਾਲਾ ਤੇਜ ਹੁੰਦਾ ਟੌਪ 'ਚ ਬੈਠੀਏ ਅੱਖ ਨੂੰ ਦੇਖਣ ਨੂੰ ਨਹੀਂ ਲਾਈਟ ਹੈ ਮਹਿਸੂਸ ਹੋਣਾ ਬੜਾ ਤੇਜ ਹੈ ਗਰਮੀ ਮਹਿਸੂਸ ਹੁੰਦੀ ਅੱਖ ਨੂੰ ਨਹੀਂ ਦਿਦੀ ਹੁੰਦੀ ਜਿਹੜੀ ਅੰਦਰ ਮਹਿਸੂਸ ਹੋਣੀ ਹੈ ਜਿਹੜਾ ਰਸ ਮਿਲਣਾ ਅੰਦਰ ਰਸਤਾ ਤਾਂ ਹੋ ਸੂਰਜ ਰਸ ਮਿਲਣਾ ਗਿਆਨ ਮਿਲਣਾ ਦਿਮਾਗ ਦੇ ਤੋਂ ਗਿਆਨ ਤਾਂ ਦਿਮਾਗ ਦੇ ਵਿੱਚ ਹੋਈ ਸਮਝ ਆਉਣੀ ਹੈ ਜੋ ਮਸੂਦ ਹੋਣਾ ਬੁੱਝ ਕੇ ਉਹ ਅਸਰ ਦਿਲ ਦੇ ਉੱਤੇ ਜਾ ਕੇ ਪੈਂਦੇ ਅਸਰ ਕਿੱਥੇ ਪੈਂਦੇ ਦਿਲ ਦੇ ਉੱਤੇ ਸੂਰਜ ਪ੍ਰਤੀਜਣੀ ਸੂਰਜ ਜਿਹੜਾ ਹੈ ਅੰਦਰ ਸੂਰਜ ਵਰਗਾ ਤੇਜ ਹੈ ਤੇਰਾ ਚਿੱਤ ਨੂੰ ਤੇਜ ਹੋਰ ਕਰਦੀ ਏ ਉਹਦਾ ਪ੍ਰਕਾਸ਼ ਸੂਰਜ ਨੂੰ ਵੀ ਤੇਜ ਕਰਦੀ ਏ ਭਾਬੀ ਉਹਨੂੰ ਸੂਰਜ ਕਹਿਆ ਪਹਿਲਾਂ ਚਿੱਤ ਨੂੰ ਪਰ ਫਿਰ ਕੀ ਹੁੰਦਾ ਹੈ ਕੀ ਬਣ ਜਾਂਦਾ ਹੈ ਸੂਰਜ ਤੋਂ ਬਾਅਦ ਸੂਰਜ ਕੀ ਬਣਦਾ ਹੈ ਫਿਰ ਸੂਰਜ ਜਿਹੜਾ ਪਹਿਲਾਂ ਐਨਾ ਬਹੁਤ ਸੂਰਜ ਸੂਰਜੇ ਸੂਰਜ ਨੂੰ ਸੂਰਜਾਂ ਦਾ ਸੂਰਜ ਬਣਾ ਦਿੰਦੀ ਹੈ ਜਾਂ ਚੰਦ ਨੂੰ ਪ੍ਰਕਾਸ਼ ਆ ਨਵਾਂ ਚੰਦਰ ਚੰਦ ਇਹ ਜਿਹੜੇ ਹੋਰ ਚੰਦਰ ਮੈਂ ਇਹਨਾਂ ਨੂੰ ਗਲਦਣ ਵਾਲਾ ਕਰ ਦਿੰਦੀ ਹੈ ਨਵਾਂ ਭਾਨ ਭਾਨ ਨਵੋ ਤੇ ਤੇ ਉਹ ਕਿਹਾ ਜਾਬ ਸਾਹਿਬ ਦੇ ਵਿੱਚ ਇਹ ਚੰਦਰਮਾ ਇਹ ਚੰਦਰਮਾ ਨੂੰ ਵਿਚਾਰਨ ਦੇਣ ਵਾਲਾ ਹੁੰਦਾ ਸੋ ਸਾਰੇ ਸੂਰਜ ਚੰਦਰਮਾ ਹੀ ਰਹਿ ਜਾਂਦਾ ਫਿਰ ਚੰਦ ਪ੍ਰਕਾਸ਼ ਨਹੀਂ ਚੰਦ ਨੂੰ ਪ੍ਰਕਾਸ਼ ਕਰਦੀ ਮਨ ਨੂੰ ਪ੍ਰਕਾਸ਼ ਕਰਦੀ ਸੂਰਜ ਪ੍ਰਕਾਸ਼ ਮਨ ਪ੍ਰਕਾਸ਼ ਹੋ ਜਾਂਦਾ ਫਿਰ ਜਿਹੜੇ ਹੋਰ ਮਨ ਦੇ ਨਾਲ ਚੰਦਰਮਾ ਨੂੰ ਰੋਸ਼ਨੀ ਦੇਣ ਲੱਗ ਜਾਂਦਾ ਸੋ ਲੱਗੀ ਗੱਲ ਦੀ ਦੂਜੇ ਚੰਦਰਮਾ ਨੂੰ ਰੋਸ਼ਨੀ ਦੇਣ ਲੱਗ ਜਾਂਦਾ ਉਵੇਂ ਸੂਰਜ ਜਿਆਦਾ ਤੇਜ ਹੋ ਜਾਂਦਾ ਦੂਜਿਆਂ ਨੂੰ ਗਰਮੀ ਹੋਰ ਦੇਣ ਲੱਗ ਜਾਂਦੇ ਸੂਰਜ ਪ੍ਰਤੀਜ ਨੂੰ ਜਿਹਨਾਂ ਦੇ ਅੰਦਰ ਭੈ ਪੈਦਾ ਹੁੰਦੀ ਹੈ ਨਾ ਭੈ ਉਹਦੇ ਭੈ ਕਰਨ ਦਾ ਦੌਰੂ ਤੇਜ ਜਿਹੜਾ ਹੈ ਭੈ ਤੋਂ ਰਹਿਤ ਕਰਦਾ ਤੇਜ ਜਿਹੜਾ ਅੰਦਰਲਾ ਤੇਜ ਉਹ ਭੈ ਤੋਂ ਮੁਕਤ ਕਰਦਾ ਠੰਡ ਭੈ ਦਾ ਪਾਣਾ ਲੱਗਦਾ ਨਾ ਅੰਦਰਲਾ ਪਾਣਾ ਚੱਕਦਾ ਚਿੱਤੇ 'ਚ ਭੈ ਹੁੰਦੀ ਹੈ ਜਿਹੜੀ ਉਹ ਦੂਰ ਕਰ ਦਿੰਦਾ ਤੇਜ ਅਸ਼ਟ ਪੂਜੇ ਅਸ਼ਟ ਪੂਜੇ ਤੂੰ ਅੱਠ ਪੂਜਾਵਾਂ ਵਾਲੀ ਏ ਇਹੇ ਤੇਰੀ ਅੱਠ ਪੂਜਾਵਾਂ ਨੇ ਅੱਠ ਪਖ ਨੇ ਤੇਰੇ ਅੱਠ ਗੋਲ ਨੇ ਤੇਰੇ ਅਸ਼ਟ ਪੂਜੇ ਜੈ ਜੈ ਹੋਸੀ ਮਹਕਾ ਸੁਰ ਮਰਦਨ ਭਰਮ ਬਨਾਸਨ ਧਰਮ ਤੁਜੇ ਲਲ ਇਸ ਕਰਕੇ ਵੀ ਤੇਰੀ ਜੈ ਜੈ ਹੈ ਤੂੰ ਪਰਮ ਦਾ ਨਾਸ ਕਰਨ ਵਾਲੀ ਏ ਕੋਈ ਵੱਤ ਪਰਮ ਦਾ ਨਾਸ ਕਰਨ ਵਾਲੀ ਏ ਪਰਮ ਦਾ ਨਾਸ ਕਰਨ ਵਾਲੀ ਧਰਮ ਤੁਝੇ ਔਰ ਧਰਮ ਦਾ ਹੀ ਤੁਝਾ ਨੇ ਮੇਰਾ ਪਰਮ ਗਿਆ ਉਹ ਭਾਗਾ ਜਬ ਰਾਮਨਾਮ ਚਿਥ ਲਾਗਾ ਪਰਮ ਦਾ ਨਾਸ ਕਰਨੇ ਗਿਆਨ ਭਿਆ ਤਾਂ ਕਰਮੇ ਨਾਸ ਕਰਮ ਦਾ ਨਾਸ ਹਣਾ ਗਿਆਨ ਨਾਲ ਹੁੰਦਾ ਪਰਮ ਦਾ ਨਾਸ ਹੁੰਦਾ ਕਦੇ ਨਾ ਹੁੰਦਾ ਪਰਮ ਦਾ ਨਾਸ ਨਾਮ ਨਾਲ ਹੁੰਦਾ ਨਾਮ ਨਾਲ ਬਿਨਾ ਕਰਨਾਂ ਦੇ ਸੁਣ ਵਾਲੇ ਲੋਕ ਜਿਹੜਾ ਤੇਰਾ ਬਿਨਾ ਦਾ ਨਾਲ ਤੇ ਸੁਣ ਵਾਲਾ ਨਾਮ ਉਹਦੇ ਨਾਲ ਭਰਮ ਦਾ ਨਾਮ ਸੁਦਾ ਜਿਹੜਾ ਕੰਨਾਂ ਨਾਲ ਸੁਣ ਵਾਲਾ ਗਿਆਨ ਹੈ ਤੇ ਨਾਲ ਕਰਮ ਦਾ ਨਾਮ ਸੁਦਾ ਦੋਹੇ ਰੂਪ ਤੇਰੇ ਨੇ ਕਰਮ ਦਾ ਨਾਮ ਵੀ ਤੂੰ ਕਰਦੀ ਹੈ ਭਰਮ ਦਾ ਨਾਮ ਵੀ ਤੂੰ ਕਰਦੀ ਕੁੰਗਰੂ ਭਰਮ ਦਾ ਨਾਮ ਕੁੰਗਰੂ ਕਮੰਕਣ ਸ਼ਾਸਤਰ ਚ ਮੰਕਣ ਫਣਗਿਆ ਰ ਫੁਕਾਰਨ ਸੋ ਝਾਰ ਦੇ ਵਿੱਚ ਕੁੰਗਰੂ ਇੱਕ ਪਾਸੇ ਤਾਂ ਖੜਕਦੇ ਨੇ ਸ਼ਿਵਜੀ ਦੇ ਚੇਲੇ ਨੇ ਜਿਹੜੇ ਕੁੰਗਰੂ ਨਹੀਂ ਹੁੰਦੇ ਲਈ ਫਿਰ ਪਾਈ ਫਿਰਦੇ ਕੁੰਗਰੂ ਨੂੰ ਮੰਗਣ ਉਹਤੇ ਮੰਗਤੇ ਤਾਂ ਕੁੰਗਰੂ ਬਣੇ ਹੁੰਦੇ ਨੇ ਨਾ ਕੁੰਗਰੂ ਨੂੰ ਮੰਗਣ ਕੁੰਗਰੂ ਵਜਾਉਂਦੇ ਫਿਰਦੇ ਨੇ ਸ਼ਾਸਤਰਾਂ ਵਿੱਚ ਮੰਗਣ ਸ਼ਾਸਤਰ ਤੇਰੇ ਸ਼ਾਸਤਰ ਚਮਕਦੇ ਨੇ ਉਹਨਾਂ ਦੇ ਕੁੰਗਰੂ ਵਜਾਉਂਦੇ ਨੇ ਫਣੀਆਂ ਰੁਫਕਾਰ ਨਹੀਂ ਧਰਮ ਤੁਜੇ ਫਣੀਆਂ ਰੁਫਕਾਰ ਫਣੀਆਂ ਰੋ ਉਹਨਾਂ ਦੇ ਗਾਲਿ ਚ ਫੁਕਕਾਰਦੇ ਨੇ ਤੂੰ ਧਰਮ ਤੁਜੇ ਆ ਉਹਨਾਂ ਦਾ ਸੱਪੇ ਧਰਮ ਹੈ ਸੱਪ ਉਹਨਾਂ ਦੀ ਧਰਮ ਤੇ ਆ ਹੈ ਸਭ ਉਹ ਸਾਰੀ ਜ਼ਮੀਨ ਚੱਕੀ ਖੜਾ ਆਈ ਸਕਦੀ ਹੈ ਉਹਨਾਂ ਦੀ ਸੱਪ ਨੇ ਧਰਤੀ ਦਾ ਭਾਰ ਚੱਕਿਆ ਹੋਇਆ ਕਰਾਮਾਤ ਹੈ ਬਸ ਇੰਤੋਂ ਜ਼ਿਆਦਾ ਨਹੀਂ ਹੈ ਹੋਰ ਕੁਝ ਨੋ ਕੋ ਧਰਮ ਨੂੰ ਸੱਪ ਨੂੰ ਧਰਤੀ ਦਾ ਭਾਰ ਚੁਕਾਤਾ ਥੋੜੀ ਕਰਾਮਾਤ ਹੈ ਬੋਲ ਦੇ ਸਿੰਗ ਤੇ ਧਰਤੀ ਚੁਕਾਤੀ ਥੋੜੀ ਕਰਾਮਾਤ ਹੈ ਬਸ ਇੰਤੋਂ ਜ਼ਿਆਦਾ ਨਹੀਂ ਹੈ ਹੋਰ ਕੁਝ ਨਹੀਂ ਹੈ ਜੇ ਮੁਕਤੀ ਪੁੱਛਿਆਗਾ ਮੁਕਤੀ ਤਾਂ ਸਭ ਨੂੰ ਚਾਹੀਦੀ ਹੈ ਮੁਕਤੀ ਰਹੀ ਹੈ ਸਾਡੇ ਕੋ ਆ ਹੈਗੀ ਤਾਂ ਸਾਡੇ ਕਾ ਪਰ ਧਮਾਕਾ ਕਰ ਰਹਾ ਯਾਰ ਇਹਨੂੰ ਬਿਨੈ ਧਮਾ ਲੈ ਖੜਾ ਹਾਂ ਸ਼ਸਤਰ ਚ ਮੰਕਣੀ ਫਣੇਰ ਫੰਕਾਰ ਨਹੀਂ ਧਰਮ ਤੁਝੇ ਧਰਮ ਤੁਝੇ ਤੂੰ ਤੋ ਜਾ ਉਸ ਗੱਲ ਨੂੰ ਨਹੀਂ ਕੋਈ ਮੰਨ ਰਿਹਾ ਦੇਖੋ ਸਭ ਧਰਤੀ 'ਚ ਅਕੀਸਾੜਾ ਕੋਈ ਨਹੀਂ ਬੰਦੋ ਸ੍ਰਿਸ਼ਟੀ ਸਾਰੀ 'ਚ ਬੋਰ ਦੇ ਚੱਕੀ ਖਾਲਾ ਕੋਈ ਨਹੀਂ ਬੰਦੋ ਪਰਮੇਸ਼ਰ ਇੱਕ ਆ ਸਾਰੇ ਬੰਦਦੇ ਦੁਨੀਆ ਦੀ ਬੰਦਦਾ ਤਾਂ ਮਤੋ ਜੇ ਇਸ ਗੱਲ ਤੇ ਆ ਦੁਨੀਆ 'ਚ ਸਾਰੀਆਂ ਬੰਤਾਂ ਇਹ ਤੇਰੀ ਗੱਲ ਨੂੰ ਬੋਲਦੀਆਂ ਨੇ ਤੇਰੀ ਧਰਬਤੂ ਜਾ ਉਹਨਾਂ ਦੀ ਧਰਬਤੂ ਜਾ ਕੋਈ ਨਹੀਂ ਹੋਰ ਕਿਸੇ ਦੀ ਤੇਰੇ ਦੁਜਾ ਜਿਹੜੀ ਧਰਬ ਦੀ ਫੈਰ ਆਈ ਉਹਦੇ ਥੱਲੇ ਹੀ ਖੜੇ ਨੇ ਸਾਰੇ ਤਸਿਆ ਗੀਨ ਐ ਬਕਰ ਸੁਣੀ ਸੁਣਾਈ ਗੱਲ ਸਾਰੇ ਕਹਿ ਰਹੇ ਨੇ ਜੇ ਤੇਰਾ ਜੋ ਝੜਨਾ ਘੜਿਆ ਹੋਇਆ ਉਹ ਨਹੀਂ ਕਿਸੇ ਨੇ ਹਲਾਇਆ ਕਹਤਾ ਹੋਵੇ ਮੇਰਾ ਬੱਕਦੀ ਜੀ ਦੋਰ ਹੋੜ ਇੱਕ ਹੋਰ ਪੈਦਾ ਹੋ ਗਿਆ ਅ ਸਟਾਰਟ ਪ੍ਰਹਸਨ ਸ੍ਰਿਸ਼ਟੀ ਨਿਵਾਸਨ ਦੁਸ਼ਟ ਪ੍ਰਨਾਸਨ ਚਕਰ ਗਤੇ ਜਿਸ ਵਕਤ ਤੂੰ ਹੱਸਦੀ ਹੈ ਨਾ ਪੈਜ ਨਹੀਂ ਹੱਸਦੀ ਔਰ ਸਟੋਰ ਪ੍ਰਹਾਸਨ ਮਿਰਬਾ ਹੋ ਗਿਆ ਸਦਗੜ ਦਾ ਸ ਹਸ ਹਸਾ ਵੀ ਜੜਾ ਦੇ ਨਾ ਉਹ ਜਿਵੇਂ ਪੈ ਹੈ ਨਹੀਂ ਤੇਰਾ ਸਾਰੇ ਚ ਦੁਸ਼ਟ ਪ੍ਰਨਾਸਨ ਚੱਕਰਗਤ ਜਿਹੜੇ ਦੁਸ਼ਟ ਨੇ ਦੁਸ਼ਟ ਕੌਣ ਨੇ ਅਸਲ ਦੇ ਵਿੱਚ ਦੁਸ਼ਟ ਜਿਹੜੇ ਸਾਰਿਆਂ ਦੇ ਉਗਣ ਸਾਰੇ ਦੁਸ਼ਟੇ ਨੇ ਇਹ ਉਗਣ ਹਾਰੇ ਦੁਸ਼ਟ ਨੇ ਕੇਸਰੀ ਪ੍ਰਵਾਹ ਹੈ ਸੁੱਧ ਸੁਨਾਹ ਹੈ ਅਗਮ ਅਥਾਹ ਹੈ ਇਕ ਕੇਸਰੀ ਪ੍ਰਵਾਹ ਹੈ ਕੇਸਰੀ ਤੇ ਸ਼ੇਰ ਤੇ ਸਵਾਰੀ ਕਰਨ ਵਾਲੀ ਹੈ ਤੂੰ ਤੇਰੀ ਤੇਰੀ ਜਿਹੜੀ ਸੁਨਾਹ ਪੈਣੀ ਹੋਈ ਹੈ ਨਾ ਸੁੱਧ ਹੈ ਸਭ ਤੋਂ ਸਤ ਦੀ ਸੁਨਾਹ ਅਗਮ ਅਥਾਹ ਹੈ ਇਕ ਅਗਮ ਅਥਾਹ ਤੇਰੀ ਜਿਹੜੀ ਹੈ ਨਾ ਬਰਤੀ ਉਹ ਬਰਖੀ ਬੁੱਧੀ ਤੇ ਪਰਿਆ ਬਰਖੀ ਬੁੱਧੀ ਨੂੰ ਨਹੀਂ ਸਮਝ ਤੇਰੀ ਜੈ ਜੈ ਹੋਸੀ ਮੈਂ ਕਾ ਸਰ ਮਰਦਨ ਆਦ ਕੁਮਾਰ ਅਗਾਧ ਵਰਤੇ ਅਗਾਧ ਵਰਤੀ ਹੈ ਆਦ ਕੁਮਾਰੀ ਹੈ ਤੂੰ ਆਦ ਕੁਮਾਰੀ ਹੈ ਅਗਾਧ ਇਸ ਕਰਕੇ ਵੀ ਤੇਰੀ ਜੈ ਜੈ ਆਇਆ ਸੁਰੂ ਤੇ ਆਦ ਕੁਮਾਰੀ ਕਹਿੰਦੇ ਨੇ ਤੈਨੂੰ